ਅੱਜ ਦੀ ਲੋਕ ਸੱਦ ਦੇ ਵਿੱਚ ਅਹਿਮ ਕਿਤਨਾ ਵਾ ਗੱਲਾਂ ਬਾਤਾਂ ਗੀਤ ਸੰਗੀਤ ਸੋਧ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਜੀ 1 ਵਜ ਦੇ 10 ਮਿੰਟ ਤੋਂ ਲੈ ਕੇ 1 ਵਜੇ ਤੱਕ ਪ੍ਰੋਫੈਸਰ ਅਮਰਜੀਤ ਸਿੰਘ ਉਹਣੀ ਗੱਲਬਾਤ ਕਰਨਗੇ ਜਿਨ੍ਹਾਂ ਨੇ ਇੱਕ ਵਾਰ ਪਹਿਲਾਂ ਨੋਟਵੰਦੀ ਤੇ ਗੱਲਬਾਤ ਕੀਤੀ ਸੀ ਅੱਜ ਪੰਜਾਬ ਦੀ ਰਾਜਨੀਤੀ ਤੇ ਗੱਲ ਕਰਨਗੇ ਵਰਜੇਨੀਆ ਤੋਂ ਪ੍ਰੋਫੈਸਰ ਨੇ ਉੱਥੇ 1 ਤੋਂ 2 ਵਜੇ ਤੱਕ ਆਪਣਾ ਖੁਦ ਦੀ ਅੱਪਾ ਅੱਜ ਗੱਲ ਕਰਨੀ ਹੈ ਆਪਣਾ ਮੁਲਾਂਕਣ ਵੀ ਅੱਜ ਕਰਨਾ ਇੱਥੇ ਅਸੀਂ ਜਿੱਥੇ ਬਾਹਰ ਬੈਠੇ ਆ ਪੰਜਾਬ ਵੱਲੋਂ ਝਾਕਦੇ ਪੰਜਾਬ ਦੇ ਲੋਕਾਂ ਨੂੰ ਅੱਖਾਂ ਕੱਢਦੇ ਆ ਤੁਸੀਂ ਆ ਨਹੀਂ ਕਰਦੇ ਤੁਸੀਂ ਉਹ ਨਹੀਂ ਕਰਦੇ ਸਾਡੀਆਂ ਅੱਖਾਂ ਥੱਲੇ ਸਾਡੇ ਇੱਥੇ ਹੁੰਦਿਆ ਬਹੁਤ ਕੁਝ ਹੋਈ ਜਾਂਦਾ ਤੇ ਅਸੀਂ ਉਹਨਾਂ ਲਈ ਇਕੱਠ ਵੱਟ ਕੇ ਖੜ ਜਾਂਦੇ ਆਪਣੇ ਸੱਚ ਦਾ ਆਪਣੇ ਇਮਾਨ ਦਾ ਆਪਣੇ ਰੁੱਤਵਿਆਂ ਦਾ ਆਪਣੇ ਕੈਰੇਕਟਰ ਦਾ ਅੱਜ ਮਲਾਂਕਣ ਕਰਨਾ ਹੈ ਤੇ ਖੁੱਲ ਕੇ ਗੱਲ ਕਰਿਓ ਸੱਚ ਸੱਚ ਸੱਚ ਕੂਕਦੇ ਲੋਕੋ ਸੱਚ ਦੇ ਨਾਲ ਤੁਸੀਂ ਕਿੰਨਾ ਕੁ ਖੜਦੇ ਆ ਤੇ ਕਿੱਥੇ ਖੜਨਾ ਚਾਹੀਦਾ ਇਸ ਦੀ ਗੱਲ ਕਰਨੀ ਹੈ ਅੱਜ ਆਪਣੇ ਬਾਰੇ ਗੱਲ ਕਰੀਆਂ ਪਨਾਵਾਲਿਆਂ ਨੂੰ ਦਿੱਤਾ ਆਪਾਂ ਆ ਉਹਨਾਂ ਨੂੰ ਅਕਲ ਨਹੀਂ ਉਹ ਆ ਨਹੀਂ ਕਰਦੇ ਉਹਨਾਂ ਨੂੰ ਅੱਜ ਆਪਣੀ ਗੱਲ ਕਰਨੀ ਸਾਡੇ ਸਾਹਮਣੇ ਆ ਜਿੱਥੇ ਕੁੱਲੀ ਗੁੱਲੀ ਜੁੱਲੀ ਦਾ ਰੌਲਾ ਹੈ ਉਹ ਲੋਕ ਕਿਵੇਂ ਸੱਚ ਦੇ ਨਾਲ ਖੜ੍ਹਣ ਫਿਰ 1842047 1550 ਹੋਵੋ ਕਹਿਮ ਅੱਜ ਫਿਰ krpradio.com ਤੇ ਸਦਾ ਪ੍ਰਸਾਰਣ ਸੁਣਦੇ ਹੋ ਤੇ ਨਾਲ ਹੀ ਐਪ ਡਾਊਨਲੋਡ ਕਰ ਸਕਦੇ ਹੋ ਜੇ ਦੋਨੇ ਗੱਲਾਂ ਰਹਿ ਜਾਣ ਤਾਂ ਲੋਕ ਸੱਤ ਦਾ YouTube ਦਾ ਜਿਹੜਾ ਅਕਾਊਂਟ ਹੈ ਤੁਸੀਂ ਸਾਰੇ ਪ੍ਰੋਗਰਾਮ ਸੁਣ ਸਕਦੇ ਹੋ ਤੇ ਨਾਲ ਹੀ ਨਿਮੀ ਡਾਲਾਜੀ ਦਾ ਨੰਬਰ ਹੈ 60444042 6044406462 info@carepiradio.com ਉਹਨਾਂ ਦੀ ਈਮੇਲ ਹੈ ਅਰਜੀਤ ਸਿੰਘ ਦਾ ਫੇਸਬੁਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਹਾਡਾ ਸੁਖ ਸੁਨੇਹਾ ਆਉਂਦਾ ਹੈ harjit.g@krpiaradio.com ਇਹ ਈਮੇਲ ਹੈ 18462471550 ਆਉਂਦੇ ਆ ਨੰਬਰ ਜਦ ਵੀ ਡਿੱਗੀਆਂ ਸ਼ਕਤਾ ਖਸਤਾ ਕਰ 12 ਦੀ ਬਾਤ ਤੁਰੀ ਰਸਤੇ ਵਿੱਚ ਦੀਵਾਰਾਂ ਬਣੀਆਂ 12 ਦੀ ਬਾਤ ਤੁਰੀ ਸ਼ਿਸ਼ਿਆ ਅਦਰ ਫੁਰਕੜ ਉੱਤੇ ਨੱਚਿਆ ਖੂਨ ਰਗਾ ਅੰਦਰ ਮੱਖਾਨੇ ਵਿੱਚ ਜਦ ਜ਼ਿੰਦਾ ਦਿਲ ਮਖਾਰਾਂ ਦੀ ਬਾਤ ਤੁਰੀ ਡੁੱਬਦੇ ਡੁੱਬਦੇ ਦਿਲ ਸੰਭਲੇ ਨੇ ਬੁਝਦੇ ਬੁਝਦੇ ਦੀਪ ਜਗੇ ਜਦ ਵੀ ਤੇਰੀਆਂ ਰੌਸ਼ਨ ਜ਼ੁਲਫਾਂ ਰੁਖਸਾਰਾਂ ਦੀ ਬਾਤ ਵੇਖੀਏ ਧਰ ਸਿਰ ਹੈ ਕੇਸ ਨੇ ਨਗਰੋ ਨਗਰੀ ਸ਼ਹਿਰੋ ਸ਼ਹਿਰੀ ਫਿਰ ਦਾਰਾਂ ਦੀ ਬਾਤ ਤੁਰੀ ਜੰਗਾਲੇ ਜੰਗਾਲੇ ਹਥਿਆਰਾਂ ਤਾਈ ਚਮਕਾਓ ਤੇਜ਼ ਕਰੋ ਮੁਰਖੇ ਪਾਤੇ ਖਲਿਆਣਾ ਵਿੱਚ ਦਾਰਾਂ ਦੀ ਬਾਤ ਤੁਰੀ ਕੌਣ ਆਯਾ ਹੈ ਮਕਤਲ ਅੰਦਰ ਕੰਬੇ ਹੱਥ ਜਲਾਦਾਂ ਘਰ ਘਰ ਫਿਰ ਫਿਰ ਘਰ ਘਰ ਵਿੱਚ ਸਿਰ ਲੱਥਾਂ ਦੀ ਜ਼ੇਦਾਰਾਂ ਦੀ ਬਾਤ ਤੁਰੀ ਫਿਰ ਘਰ ਘਰ ਵਿੱਚ ਸਿਰ ਲੱਥਾਂ ਦੀ ਜ਼ੇਦਾਰਾਂ ਦੀ ਬਾਤ ਤੁਰੀ ਇਹੋ ਜਿਹਾ ਪੰਜਾਬ 'ਚ ਹੋ ਰਿਹਾ ਹੁਣ ਡਾਕਟਰ ਜਗਤਾਰ ਜੀ ਪਰਵਾਰੇ ਤੁਹਾਡਾ ਸਾਰਿਆਂ ਦਾ 11:00 ਵਜੇ ਕੇ 16 ਮਿੰਟ ਹੋਏ ਆ ਜੀ ਜਿੱਥੇ ਵੀ ਬੈਠੇ ਹੋ ਧੰਨਵਾਦ ਜਸਟਨ ਟਰੂਡੋ ਨੇ ਅੱਜ ਦੇਸ਼ ਦੇ ਜਿਹੜੇ ਦੀ ਗੱਲ ਲੋਕਾਂ ਦੇ ਨਾਲ ਮਿਲਣ ਦੀ ਗੱਲ ਸ਼ੁਰੂ ਕੀਤੀ ਹੈ ਪਹਿਲੇ ਦਿਨ ਅੰਟੇਰੀਓ ਦੇ ਵਿੱਚ ਉਹ ਮਿਲ ਰਹੇ ਨੇ ਫਿਰ ਕਿਊਬੈਕ ਆਉਣਾ ਤੇ BC 'ਚ ਗੱਲ ਨਿਬੜਣੀ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੀਆਂ ਬੇਸਮੈਂਟਾਂ ਦੇ ਵਿੱਚ ਸਕੂਲਾਂ ਦੇ ਵਿੱਚ ਟਾਊਨ ਹਾਲ ਮੀਟਿੰਗਾਂ ਨੁਕੜ ਮੀਟਿੰਗਾਂ ਦੇ ਵਿੱਚ ਲੋਕਾਂ ਨਾਲ ਮਿਲੂ ਸੱਥਾਂ 'ਚ ਬੈਠੂ ਸਣੂ ਉਹਨਾਂ ਦੇ ਨਾਲ ਕੀ ਹੁੰਦਾ ਉਸਦੀ ਖਬਰ ਪੜ੍ਹ ਕੇ ਮੈਨੂੰ ਪਿਛਲੇ ਦੇਸ਼ ਦੀ ਮਸਕਟ ਦੀ ਇੱਕ ਗੱਲ ਯਾਦ ਆਈ 1.5 ਮਹੀਨੇ ਦਾ ਟੂਰ ਅਹਿਲਕਾਰਾਂ ਨੂੰ ਲੈ ਕੇ 40 ਕਾਰਾਂ ਦਾ ਕਾਫਲਾ ਜਿਹਦੇ ਵਿੱਚ ਸਾਰੀ ਉਹ ਨਾਲ ਹੁੰਦੀ ਸਾਰੇ ਦੇਸ਼ ਜੋ ਕੋ ਗੱਲ ਜਿਹੜੀ ਕਰਨੀ ਹੁੰਦੀ ਉੱਥੇ ਨਵੇੜਦਾ ਜਿਵੇਂ ਸੰਗਤ ਦਰਸ਼ਨ ਪੰਜਾਬ ਦੇ ਵਿੱਚ ਚੱਲਦਾ ਇਸ ਤਰ੍ਹਾਂ ਅਸਲ ਗੱਲਾਂ ਹੁੰਦੀਆਂ ਉੱਥੇ ਕੋਈ ਰੋਕ ਟੋਕ ਨਾ ਹੁੰਦੀ ਪਰੇ ਦੇ ਵਿੱਚ ਲੋਕ ਇਕੱਠੇ ਹੁੰਦੇ ਮੂਰੇ ਬਾਡੀਗਾਰਡ ਨਾ ਹੁੰਦੇ ਨਾ ਕੋਈ ਬੈਰੀਕਾਰਡ ਟੇੜ ਲੱਗੇ ਹੁੰਦੇ ਬੈਠ ਕੇ ਤੇ ਪਰਨਾ ਸੁਲਤਾਨ ਬਹਿੰਦਾ ਜਸਨ ਟਰੂਡੋ ਵੀ ਜਿਹੜੇ ਦੀ ਗੱਲ ਤਾਂ ਠੀਕ ਹੈ ਪਰ ਜਸਨ ਟਰੂਡੋ ਤੇ ਕੜਾਈ ਵੱਧ ਪੈਸਿਆਂ ਵਾਲੇ ਤੇਰੇ ਨਾਲ ਬੰਦ ਕਮਰੇਆਂ ਮੀਟਿੰਗਾਂ ਦੇ ਵਿੱਚ ਹੱਥ ਮਿਲਾਉਂਦੇ ਜ਼ੀਨਾ ਨੇ ਹਜ਼ਾਰਾਂ ਹੀ ਡਾਲਰ ਦੇ ਲਿਆ ਉਹਨਾਂ ਨੇ ਤੇ ਤੋਂ ਕੰਮ ਲੈਣਾ ਹੋਰ ਕਿਤੇ ਚੰ ਮੰਨੂ ਨਹੀਂ ਉਹ ਗੱਲ ਦੇ ਸੁਣ ਪਹਿਲਾਂ ਤੇ ਸਿੱਧੀ ਗੱਲ ਕਰਨੀ ਹੈ ਮੈਂ ਤੇ ਇੱਕ ਇਸ ਨਵੇਂ ਸਾਲ ਤੇ ਬਹਾਮਸਤ ਆਗਾ ਖਾਨ ਦੀ ਇੱਕ ਆਪਣੀ ਆਈਲੈਂਡ ਖਰੀਦੀ ਹੋਈ ਹੈ ਆਪਣੀੋਂ ਅਲੱਗ ਉੱਥੇ ਜਾ ਕੇ ਨਵਾਂ ਸਾਲ ਬਤਾ ਕੇ ਆਇਆ ਜਸਟਨ ਪਰਿਵਾਰ ਦੇ ਨਾਲ ਲਿਬਰਲ ਪਾਰਟੀ ਦਾ ਪ੍ਰੈਜ਼ੀਡੈਂਟ ਵੀ ਨਾਲ ਗਿਆ ਸੀ ਹੋਰ ਪੰਜ ਚਾਰ ਸੀ ਉਹ ਦੇ ਲਿਖ ਰਹੇ ਨੇ ਅਮੀਰ ਬੰਦੇ ਜਿਹੜਾ ਮੁੜ ਕੇ ਆਗਾ ਖਾਨ ਫਾਊਂਡੇਸ਼ਨ ਨੂੰ ਮਿਲੀਅਨਸ ਆਫ ਡਾਲਰ ਇਸ ਸਰਕਾਰ ਦੇ ਰਹੀ ਆਗਾ ਖਾਨ ਮਿਲ ਕੇ ਵੀ ਗਿਆ ਜਸਟਨ ਟ੍ਰੂਡੋ ਨੂੰ ਯਾਦ ਆ ਤੁਹਾਨੂੰ ਇਸਮਾਈਲੀ ਲੋਕਾਂ ਦਾ ਉਹ ਨੇਤਾ ਫਰਾਂਸ ਦੇ ਵਿੱਚ ਰਹਿੰਦਾ ਤੇ ਬਹਾਮਸਤ ਦੇ ਵਿੱਚ ਬਹੁਤ ਅਮੀਰ ਬੰਦਾ ਤੇ ਇੱਕ ਜੁੱਟ ਹੋ ਕੇ ਇਸਮਾਈਲੀ ਜਿਹੜੇ ਮੁਸਲਮਾਨ ਅਮੀਰ ਲੋਕ ਨੇ ਉਹ ਉਹਨੂੰ ਭੜਾ-ਤੜ ਡਾਲਰ ਦਿੰਦੇ ਆ ਪਰਿਵਾਰਾਂ ਤੋਂ ਪਰਿਵਾਰ ਹੀ ਉਹ ਪਰਿਵਾਰ ਪੁਰਾਉਂਦਾ ਅਗਾ khán ਹੁੰਦਾ ਲੀਡਰ ਗੱਲ ਦਾ ਰੇੜਕਾ ਬਹੁਤ ਪਿਆ ਸਫਲ ਹੋ ਗਈ ਬਣਾ ਦਿੱਤੇ ਫਰੀ ਲੈਂਡ ਦੀ ਗੱਲ ਚੱਲ ਰਹੀ ਆ ਰਸ਼ੀਆ ਵਾਲਿਆਂ ਨੇ ਉਹਨੂੰ ਬੈਨ ਕੀਤਾ ਹੈ ਵਿਦੇਸ਼ ਮੰਤਰੀ ਹੈ ਯੂਕਰੇਨ ਦੇ ਵਿੱਚ ਜੰਮੀ ਪਈ ਤੇ ਇਧਰ ਵੱਡੀ ਹੋਈ ਆ ਤੇ ਉਹ ਜਰਨਲਿਸਟ ਬਹੁਤ ਤੇ ਇਸrar ਪੱਤਰਕਾਰ ਬੈਠੀ ਆ ਤੇ ਸਾਡਾ ਤਾਂ ਇੱਥੇ ਪੰਚਾਇਤ ਟਿਕਦਾ ਦਾ ਕੰਮ ਆ ਮਾੜਾ ਜਿਹਾ ਉਹਦੇ ਨਾਲ ਇਹ ਗੱਲ ਸਰ ਜਾਂਦੀ ਹੈ ਗਾਂ ਤਰੱਕੀਆਂ ਰੋਕ ਲੀਂ ਇਸ ਤਰ੍ਹਾਂ ਗੱਲ ਬਣਦੀ ਹੈ ਕਿ ਕਿੱਥੋਂ ਜਿਸ ਤਰ੍ਹਾਂ ਕ੍ਰਿਸਟੀ ਕਲਰਕ ਕਰਕੇ ਦੇਖ ਲਓ ਸੂਬੇ ਦੀ ਮੁੱਖ ਮੰਤਰੀ ਬਣੀ ਹੋਈ ਹੈ ਨਾ ਲੋਕਾਂ ਦੇ ਵਿੱਚ ਰੱਛ ਕੇ ਠੀਕ ਆ ਸਾਡਾ ਘੇਰਾ ਵੀ ਛੋਟਾ ਪਰ ਫਿਰ ਵੀ ਬਹੁਤ ਕੁਝ ਹੈ ਜੇ 60 50 40000 30000 6 10000 ਇਹ ਸੁਣਦਾ ਹੈ ਬਹੁਤ ਵੱਡੀ ਗੱਲ ਹੈ ਕੱਲ ਦਾ ਰੇਡੀਓ ਦਾ 15 ਸਾਲ ਪਹਿਲਾਂ ਸ਼ੁਰੂ ਹੋਇਆ ਬਹੁਤ ਵੱਡੀ ਗੱਲ ਹੈ ਜਿਹੜੇ 70 70 60 7 ਸਾਲਾਂ ਦੀ ਆਰਗੇਨਾਈਜੇਸ਼ਨ ਉਹਨਾਂ ਦੀ ਗੱਲ ਬਾਕੀ ਵਿਦਵਤਾ ਪੜ੍ਹਾਈ ਉਹ ਸਾਰੇ ਉਥੋਂ ਹਲੇ ਅਸੀਂ ਸ਼ੁਰੂ ਦੇ ਵਿੱਚ ਆ ਉਹ ਪੱਕੇ ਨੇ ਪਰ ਫ੍ਰੀਲੈਂਡ ਬਹੁਤ ਤੇਜ਼ ਤਰਾਰ ਇਸ ਫ੍ਰੀ ਹੈ ਛੋਟਾ ਜਿਹਾ ਉਹਦਾ ਕੱਦ ਦਾ 5 ਫੁੱਟ 2 ਇੰਚ 10000 ਰੁਪਏ ਆ 10000 ਰੁਪਏ ਦੀ ਟੱਕੀ ਇਹ ਹੁਣ ਜਸਟ ਇਨਟਰੂਡ ਵੀ ਲੋਕਪ੍ਰੀਅਤਾ ਬਹੁਤ ਹੈ ਪਰ ਆ ਕੁਝ ਚੀਜ਼ਾਂ ਜਿਹੜੀਆਂ ਕਰ ਰਿਹਾ ਅਮੀਰ ਖਾਨਦਾਨ ਕਿੱਡੇ ਤਕੜੇ ਪਰਵਾਜ਼ ਤੋਂ ਆਇਆ ਪੈਸਾ ਤੇਲਾ ਬਹੁਤਾ ਫਾਊਂਡੇਸ਼ਨ ਬਾਪੂ ਦੀ ਬਹੁਤ ਵੱਡਿਆ ਕਾਹਦੇ ਨਹੀਂ ਬਹਾਮਸ ਤੁਰਿਆ ਸਰ ਆਪ ਕਿਤੇ ਆਪਣੀ ਜਗ੍ਹਾ ਚਲੇ ਜਾਵੇ ਜੇ ਇੰਨੇ ਪੈਸੇ ਢਿੱਲੇ ਵਾਲਾ ਬੰਦਾ ਪੰਗਾ ਲੈਣ ਦੀ ਕੀ ਲੋੜ ਆ ਜਿੱਥੇ ਮਰਜੀ 7 ਸਟਾਰ 5 ਸਟਾਰ ਹੋਟਲ ਕਰਾ ਲੋਕ ਕਹਿੰਦੇ ਸਾਰੀਆਂ ਗੱਲਾਂ ਪਾ ਕੇ ਤਾਂ ਗੱਲ ਨਹੀਂ ਨਾ ਬਣਦੀ ਦੂਜੇ ਬੰਨੇ ਟੋਰਾਂਟੋ ਦੇ ਇੱਕ ਮੈਂਸ਼ਨ ਦੇ ਵਿੱਚ ਲੱਖ ਲੱਖ 50 50 ਹਜ਼ਾਰ ਡਾਲਰ ਇਕੱਠਾ ਕਰ ਰਿਆ ਫਿਰ ਉਹ ਗੱਲ ਚੁਗਦੀ ਹੈ ਬਹੁਤ ਵਧੀਆ ਪੁਵੇਖ ਹੈ ਜਿਸਟਨ ਟਰੂਡੋ ਦਾ ਜੇ ਕੰਮ ਵਧੀਆ ਕਰ ਰਿਹਾ ਉਹ ਇਹ ਲੋਕ ਉਸ ਪਿਆਰ ਕਰਿਆ ਉਹਦਾ ਬਹੁਤ ਕ੍ਰਿਸ਼ਮਾ ਕ੍ਰਿਸ਼ਮਾਟ ਕੋ ਦਾ ਫੇਸ ਆ ਚਿਹਰਾ ਤੇ ਸਾਉ ਇਹਦੇ ਵਿੱਚ ਕੋਈ ਗੱਲ ਹੈ ਪਰ ਆਹ ਕੁਝ ਇੱਕ ਵਜ਼ਨ ਜਿਹੜਾ ਨਾਲ ਚੱਕ ਰਿਹਾ ਜੇ ਜਿਹੜੀ ਲਿਵਰੇਜ ਹੈ ਇਹ ਮਾਰ ਲੂ ਇਹ ਗਾਹਾਂ ਓਖੀ ਹੋ ਜਦ ਆਪ ਲੋਕਾਂ ਦੇ ਢਾਕ ਤੋਂ ਬੰਦਾ ਉਤਰਨ ਲੱਗ ਜਾਏ ਉੱਤਰਦਾ ਉੱਤਰ ਬੁੱਤਰਦਾ ਤਲਕ ਜਾਂਦੀ ਆ ਕਹਾ ਵੱਡੇ ਦੇ ਨਾਲ ਛੁੱਟੀਆਂ ਕੱਟਣੀਆਂ ਉਹਨਾਂ ਦੇ ਪ੍ਰਾਈਵੇਟ ਰੈਜ਼ਿਡੈਂਸਸ ਤੇ ਪ੍ਰਾਈਵੇਟ ਉਹਨਾਂ ਦੇ ਟਾਪੂਆਂ ਜਾ ਕੇ ਤੇ ਵੱਡਿਆਂ ਨਾਲ ਬਹਿ ਕੇ ਮੀਟਿੰਗਾਂ ਕਰਕੇ ਪੈਸੇ ਇਕੱਠੇ ਕਰਨੇ ਰਾਤ ਨੂੰ ਸ਼ੈਂਪਨ ਪੀ ਕੇ ਇਹ ਗੱਲਾਂ ਜਿਹੜੀਆਂ ਸੋਪਦੀਆਂ ਨਹੀਂ ਮਿਲੀਅਨਸ ਆਫ ਡਾਲਰ ਫਾਊਂਡੇਸ਼ਨਾਂ ਨੂੰ ਦੇਣੇ ਫੇਰ ਇਹ ਤਾਂ ਕਹਾਣੀ ਕਰ ਤਾਂ ਸਾਡੇ ਗਰੁੱਪ ਦੇ ਆਲੇ-ਦਲੇ ਪਰ ਉਹ ਆਪਣੇ ਲਈ ਲੜੀ ਜਾਂਦੇ ਆ ਤੁਹਾਨੂੰ ਆ ਬਣਾ ਸਾਨੂੰ ਆ ਬਣਾ ਫੌਮ ਲਈ ਨੂੰ ਫੇਰ ਥਾਪੀ ਦੇ ਲੈਣਗੇ ਜਦ ਆਊਗਾ ਲਿਆ ਹੋਵੇ ਪੰਜ 500 ਕੱਢੋ ਆਜੋ ਸਾਡੀ ਫੋਟੋ ਖਚਾਈਏ ਜਸਟਨ ਟੂਡੋ ਨਾਲ ਸਾਡੇ ਵਾਲਾ ਲਾਣਾ ਜਦੇ ਕੰਮ ਤੋਂ ਆ ਕੇ ਮੋਢੇ ਤੋਂ ਲੌਂਦਾ ਲਾਂਚ ਬੈਗ ਲੱਕ ਤੋਂ ਪਹੁੰਚ ਲੌਂਦਾ ਨਹਾ ਕੇ ਜੈਲ ਆ ਕੇ ਨਾਲ ਫੋਟੋ ਲੈ ਲੈਂਦਾ ਕੈਮਰੇ ਚ ਪਾ ਲੈਂਦਾ ਆਪਣੇ ਫੋਨ ਤੇ ਫਿਰ ਨਾਲ ਦੇ ਹੁੰ ਦੇਖੋ ਜਸਨ ਟੂਡੋ ਨਾਲ ਖੜਾ ਸਿਆਣੇ ਬਣ ਜੋ ਯਾਕਾਂ ਦਿਨ ਆਪ ਛੁੱਟੀ ਕੱਟਿਆ ਕਰੋ 500 ਚ ਵਪਾਰਕ ਸੰਦੇਸ਼ 11 ਵਜੇ ਕੇ 26 ਮਿੰਟ ਹੋਏ ਜੀ ਗ੍ਰੀਨ ਟੈਂਬਰ ਦੇ ਵਿੱਚ ਐਨਡੀਪੀ ਦਾ ਜਿਹੜਾ ਰੇਡ ਕਾ ਜੇ ਇਹ ਹੱਲ ਨਾ ਹੋਇਆ ਤਾਂ ਸਰੀ ਦੀਆਂ ਜਿਹੜੀਆਂ ਸੀਟਾਂ ਜਿੱਤ ਰਹੀ ਹੈ ਐਨਡੀਪੀ ਉਹ ਹਾਰ ਚੁੱਕ। ਸੁਣ ਲਿਓ ਹੁਣ ਜਿਹੜੇ ਚੌਧਰੀ ਸੁਣਦੇ ਆ ਵੱਡਿਆਂ ਨੂੰ ਭੇਜ ਦਿਓ ਸੁਨੇਹਾ। ਬਹੁਤ ਵਧੀਆ ਪੋਜੀਸ਼ਨ ਦੇ ਵਿੱਚ ਹੈਰੀ ਬੈਂਸੋਨੀ ਨੇ ਜਗਰੂ ਬਰਾਡ ਬਹੁਤ ਵਧੀਆ ਜਿੰਨੀ ਸਿੰਸ ਬਹੁਤ ਵਧੀਆ ਗੈਰੀ ਬੈਗ ਬਹੁਤ ਵਧੀਆ ਕਾਲੋ ਬਹੁਤ ਵਧੀਆ ਪਰ ਆਹ ਜਿਹੜਾ ਪਾਰਦਰਸ਼ੀ ਕੰਮ ਖਤਮ ਤੁਸੀਂ ਕਰ ਰਹੇ ਹੋ ਇਹ ਕਿੱਧਰ ਨੂੰ ਜਾਓ। ਇਹ ਗੱਲ ਕੀ ਇਹ ਜਦ ਓਪਨਲੀ ਸਮਾਂ ਰਹਿੰਦਾ ਸੀ ਜਦ ਪਤਾ ਸੀ ਸ਼ੂ ਹੈ ਮੰਨੂ ਮੈਂ ਹਟਣਾ ਹੈ ਤਾਂ ਉਹ ਕਹਿੰਦੀ ਓਪਨਲੀ ਦੇ ਮੈਸਟ ਅਪ ਡਾਊਨ ਕਰਦੀਆਂ ਲੋਕ ਆਪਣੀ ਮੈਂਬਰਸ਼ਿਪਾਂ ਬਣਾਉਂਦੇ ਉਹਦੇ ਬਾਅਦ ਨੋਮੀਨੇਸ਼ਨ ਹੁੰਦੀ ਜਿਹੜਾ ਜਿੱਤ ਜਾਂਦਾ ਨੋਮੀਨੇਸ਼ਨ ਚ ਉਹ ਕੈਂਡੀਡੇਟ ਹੁੰਦਾ ਇਹ ਸੱਚ ਤੇ ਹੱਕ ਦੀ ਗੱਲ ਕਰਨ ਵਾਲੀ ਪਾਰਟੀ ਦੀ ਗੱਲ ਕਰਦੇ ਜਿਹੜਾ ਕੋਈ ਤੁਹਾਡੇ ਨੇੜੇ ਹੈ ਉਹਦੇ ਤੁਸੀਂ ਮੈਂਬਰਸ਼ਿਪ ਅੰਦਰੋਂ ਬਣਾਵਾਲੀ ਤੇ ਦੂਸਰਾ ਲਈ ਹੁਣ 90 ਦਿਨਾਂ ਦਾ ਚੱਕਰ ਪੈ ਰਿਹਾ ਹੁਣ ਗੱਲਾਂ ਹੋਣੀਆਂ ਦੋ ਨਵੀਂ ਮੈਂਬਰਸ਼ਿਪ ਨੂੰ ਕਰਕੇ ਰੱਦ ਜਿਹੜੀਆਂ ਪੁਰਾਣੀ ਮੈਂਬਰਸ਼ਿਪ ਹੈ ਦੇ ਸਮੇਂ ਦੀ ਉਹਦੇ ਉਹੀ ਮੈਂਬਰ ਨੇ ਉਹ ਵੋਟਾਂ ਪਾਉਣ ਤੇ ਨੋਮੀਨੇਸ਼ਨ ਖੋਲੋ ਤੇ ਉਹਦੇ ਵਿੱਚ ਜਿਹੜਾ ਮਰਜੀ ਖੜੇ ਤੇ ਜਿਹੜਾ ਜਿੱਤ ਗਿਆ ਉਹ ਕੈਂਡੀਡੇਟ ਹੋਵੇ ਨੰਬਰ 1 ਜਾਂ ਨਮਿਆਂ ਦੇ ਮੈਂਬਰ ਬਣਾਉਣ ਦਿਓ ਤੇ ਤੁਹਾਡੀ ਜਿਹੜੀ ਪੋਜੀਸ਼ਨ ਕੌਂਸਲ ਹੈ ਇਦੇ ਵਿੱਚ ਸਾਰੀਆਂ ਜਿਹੜੀਆਂ ਰਾਈਡਿੰਗਸ ਦੇ ਵਿੱਚੋਂ ਇੱਕ ਇੱਕ ਬੰਦਾ ਹੁੰਦਾ ਉਹ 90 ਦਿਨਾਂ ਦੇ ਕਨਸਟੀਟਿਊਸ਼ਨ ਐਮਰਜੈਂਸੀ ਹੋਵੇ ਤੇ ਫਿਰ ਉਹਦੇ ਤਹਿਤ ਨੋਮੀਨੇਸ਼ਨ ਕਰਾਈ ਜਾਵੇ ਜਨਵਰੀ ਜਾਂ ਫਰਵਰੀ ਦੇ ਅਖੀਰ ਵਿੱਚ ਮਾਰਚ ਅਪ੍ਰੈਲ ਅਗਲੇ ਨੂੰ ਮਿਲੇ ਫਿਰ ਕੈਂਪੇਨ ਕਰ ਲੋ ਇਹ ਗੱਲ ਨਹੀਂ ਸੂਤ ਬਹਿਣੀ ਸਰ ਇਹ ਮਤਲਬ ਇਹ ਪਿਤਾ ਪੁਰਖੀ ਚੱਲ ਪਈ ਫਿਰ ਪਿਛਲੀਆਂ ਗੱਲਾਂ ਵੀ ਅਸੀਂ ਬਹੁਤ ਕਦੇ ਫੇਸਬੁੱਕ ਤੇ ਕਦੇ ਬਾਹਰ ਆ ਕੇ ਤੇ ਕਦੇ ਰੇਡੀਓ ਤੇ ਗੱਲਾਂ ਕਰਦੇ ਆ ਪੰਜਾਬ 'ਚ ਇਹ ਹੁੰਦਾ ਇਹ ਹੁੰਦਾ ਪਿਤਾ ਪੁਰਖੀਆਂ ਗੱਲਾਂ ਆ ਤਾਂ ਪਹਿਲਾਂ ਸੂਹ ਹਮਲਉ ਫਿਰ ਉਹ ਆਪਣਾ ਨੇੜੇ ਦਾ ਲਾਉ ਉਹ ਕਹਾਣਾ ਨੇੜੇ ਦਾ ਇਹ ਕੀ ਕਹਾਣੀ ਤੇ ਉਹਦਾ ਬੁੱਲ ਨਹੀਂ ਗਿਰਿਆ 15 ਸਾਲ ਹੋ ਗਏ ਚਾਰ ਚਾਰ ਪੰਜ ਪੰਜ ਦਾ ਗਰੁੱਪ ਆ ਕੇ ਨਿਕਲੀ ਗਿਆ ਮੁੜੀ ਗਿਆ ਹੁਣ ਨਵੇਂ ਆ ਗਏ ਉਦੋਂ ਨਵੇਂ ਆ ਗਿਆ ਅਸ਼ੀਰ ਵਾਲੇ ਡੰਡਾ ਡੁੱਕ ਗਏ 5 7 ਵੈਲੂਸ਼ਨ ਆਲੇ ਦਾਲੇ ਹੀ ਰੱਖੇ ਆ ਤੈਨੂੰ ਬਣਾ ਦੂੰ ਤੈਨੂੰ ਬਣਾ ਦੂੰ ਤੈਨੂੰ ਬਣਾ ਦੂੰ ਆਹ ਗੱਲ ਹੋਈ ਇੱਕ ਇਹ ਹੁੰਡੀ ਐਡੀ ਭੈੜੀ ਸੀ ਜੇ ਕੋਈ ਨਮਾ ਜਿਹੜਾ ਲੜਨ ਵਾਲਾ ਉਹ ਆਪਣੇ ਮੈਂਬਰ ਬਣਾਉਂਦਾ ਇੱਥੇ ਪਾਰਟੀ ਨੂੰ ਦੱਸਣਾ ਪੈਣਾ ਸੀ ਸਿਟਿੰਗ ਐਮਐਲਏ ਨੂੰ ਸਿਟਿੰਗ ਐਮਐਲਏ ਨੇ ਸਟੈਪ ਡਾਊਨ ਨਹੀਂ ਸੀ ਕਰਨਾ ਹੁਣ ਉਹਨੇ ਆਪਣੀ ਮਰਜ਼ੀ ਦਾ ਬੰਦਾ ਕੈਂਡੀਡੇਟ ਰਚਨਾ ਜੀ ਨੇ ਸ਼ਹਿਦ ਉਹ ਚੁਣ ਲਿਆ ਤੇ ਇਹ ਵੀ ਗੱਲਾਂ ਹੋਈਆਂ ਪਤਾ ਵੀ ਲੱਗਿਆ ਮੈਂ 1.5 ਮਹੀਨਾ ਪਹਿਲਾਂ ਵੀ ਕਿਹਾ ਸੀ ਵੀ ਲੁਕਮੀ ਮੈਂਬਰਸ਼ਿਪ ਬਣ ਰਹੀ ਹੈ ਗ੍ਰੀਨ ਟੰਬਰ ਚ ਹੁਣ ਨਮਾ ਜੇ ਕੋਈ ਜਨਵਰੀ ਦੇ ਅੱਧ 'ਚ ਅੱਜ ਬਣਾਉਣ ਲੱਗਦਾ ਉਹਦੀ ਅਪ੍ਰੈਲ ਦੇ ਅੱਧ ਤੱਕ 90 ਦਿਨ ਨਹੀਂ ਪੂਰੇ ਹੁੰਦੇ ਉਹ ਜਦ ਤੱਕ ਨੋਮੀਨੇਸ਼ਨ ਲੇਟ ਹੋ ਜਾਣੀਆਂ ਤੇ ਬੰਦੇ ਰਹਿ ਜਾਣੇ ਨੇ ਹੁਣ ਦੋ ਗੱਲਾਂ ਹੋਣੀਆਂ ਚਾਹੀਦੀਆਂ ਜੇ ਐਨ ਡੀ ਪੀ ਦੀ ਸਾਖ ਕਾਇਮ ਰੱਖਣੀ ਜਾਂ ਤਾਂ ਪ੍ਰੋਵਿੰਸ਼ੀਅਲ ਜਿਹੜੀ ਤੁਹਾਡੀ ਕਾਉਂਸਲ ਹੈ ਉਹ ਓਵਰਰੂਲ ਕਰੇ ਤੁਹਾਡੇ ਕਨਸਟੀਟਿਊਸ਼ਨ ਨੂੰ ਵੇ ਨਵੇਂ ਬੜਾਓ ਮੈਂਬਰ ਜਿਹਨੇ ਵੀ ਲੜਨਾ ਹੈ ਤੇ ਫਿਰ ਓਪਨ ਪਾਰਦਰਸ਼ੀ ਖੁੱਲੀ ਨੋਮੀਨੇਸ਼ਨ ਹੋਵੇ ਉਹਦੇ ਜਿਹੜਾ ਜਿੱਥੇ ਵੀ ਉਹ ਤੁਹਾਡਾ ਲੀਡਰ ਪਰ ਜਾਂ ਓਪਨ ਕਰੋ ਤੇ ਉਹਦੇ ਵਿੱਚ ਨਵੇਂ ਬੰਦੇ ਖੜੇ ਹੋਣ ਤੇ ਉਹ ਜਿੱਤ ਜਾ ਇਸ ਤਰ੍ਹਾਂ ਹੋਣਾ ਚਾਹੀਦਾ ਬਾਕੀ ਮਰਜ਼ੀ ਤੁਹਾਡੀ ਐ ਪਹਿਲਾਂ ਫੋਟਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਮਾੜਾ ਲੀਡਰ ਤਾੜੀਆਂ ਮਾਰਦਾ ਫਿਰ ਗਿਆ ਕ੍ਰਿਸ਼ਟੀ ਕਲਾਰਕ ਦਾ ਦੁੱਖ ਗਈ ਹੁਣ ਬਹੁਤ ਇੱਕ 1.5 ਪੁਆਇੰਟ ਦਾ ਫਰਕ ਹੈ ਬਹੁਤ ਵਧੀਆ ਕੈਂਡੀਡੇਟ ਨੇ ਔਰ ਕੰਮ ਬਹੁਤ ਵਧੀਆ ਚੱਲ ਰਿਹਾ ਤੇ ਹੋ ਸਕਦਾ ਵਧੀਆ ਚੱਕਰ ਦਿੱਤੀ ਜਾਵੇ ਪਤਾ ਨੀ ਕੌਣ ਕਿਹੜੀ ਗਵਰਨਮੈਂਟ ਬਣੇਗੀ ਤਾਂ ਵਕਤ ਹੈ ਪਰ ਤੁਸੀਂ ਪਾਰਦਰਸ਼ੀ ਕਹੌਣ ਵਾਲੀ ਕਾਮਿਆਂ ਤੇ ਹੱਕ ਵਾਲੀ ਪਾਰਟੀ ਅਜਿਹਾ ਕੁਝ ਹੋਊ ਉਹ ਗਲਤ ਸਿਗਨਲ ਜਾਂਦਾ ਗ੍ਰੀਨ ਟਿੰਬਰ ਦੇ ਵਿੱਚ ਰਹਿਣ ਵਾਲੇ ਤੇ ਜਾਂ ਐਨਡੀਪੀ ਦੇ ਜਿਹੜੇ ਸਿਆੜੇ ਪੁਰਾਣੇ ਬੰਦੇ 40-45 ਸਾਲ ਦੇ ਤੁਰੇ ਆਉਂਦੇ ਆ ਉਹ ਕਾਇਮ ਹੋਊ ਤਾں ਗੱਲ ਬਣਨੀ ਐ ਜੇਟਵੇ ਪੀਜ਼ਾ ਪ੍ਰੋਗਰਾਮ ਦੇ ਸਪਾਂਸਰ 604 590 333 654 599 333 ਪਹਿਲੀ ਲੋਕੇਸ਼ਨ ਆ ਜਿਹੜੀ ਉਹ ਨਿਊਟਨ ਚ ਦੂਸਰੀ ਗੈਲਫਰਡ ਦੇ ਵਿੱਚ 148 ਤੇ 148 ਤੇ ਤੇ ਫਰੇਜ਼ਰ ਦੇ ਸੰਨ ਚ ਐ ਤੇ ਜਿਹੜੀ ਲੋਕੇਸ਼ਨ ਨਿਊਟਨ ਵਾਲੀ ਉਹ 76 ਤੇ ਆ ਤੁਹਾਨੂੰ ਪਤਾ ਜੇਟਵੇ ਪੀਜ਼ਾ .com ਤੇ ਤੁਸੀਂ ਸਾਰਾ ਮੈਨੂ ਦੇਖ ਸਕਦੇ ਹੋ ਆਰਡਰ ਕਰ ਸਕਦੇ ਹੋ ਟੇਕ ਆਊਟ ਆ ਪੀਜ਼ਾ ਦੇ ਨਾਲ ਭਾਰਤੀ ਖਾਣੇ ਵੀ ਡੇਟ ਤੇ ਪੀਜ਼ਾ OSSwindows 6045975033@osswindows.com 26 ਸਾਲ ਹੋ ਗਏ OSSwindows ਤੁਹਾਡੀ ਸੇਵਾ ਦੇ ਵਿੱਚ ਮਲਟੀ ਫੈਮਿਲੀ ਟਾਊਨ ਹਾਊਸ ਕਾਂਡੋ ਤੇ ਕਸਟਮ ਮੇਡ ਘਰ ਜਿੰਨੇ ਵੀ ਨੇ ਜਾਂ ਵੱਡੀ ਸਬ ਡਿਵੀਜ਼ਨ ਇੱਕ ਘਾ ਦਾ ਦੋ ਹੈ ਆਪਣੇ ਏਰੀਆ ਦੇ ਸਿੰਧ ਪੱਤਰ ਤੇ ਅਵਾਰਡ ਵਿਨਿੰਗ ਵਿੰਡੋਜ਼ ਨੂੰ ਵੇਖਣ ਦੇ ਲਈ ਸਾਰੀ ਕੰਪਨੀ ਦੀ ਜਾਣਕਾਰੀ ਲਈ osswindows.com ਨੂੰ ਵਿਜ਼ਿਟ ਕਰੋ ਗਗਨ ਸਿੰਘ 604 349 13 13 ਡਾਲਰ ਪੰਜਾਬ ਨੂੰ ਭੇਜਣਿਆਂ ਜਾਂ ਪੈਸਿਆਂ ਦੇ ਇੱਧਰ ਡਾਲਰ ਬਣਾਉਣਿਆਂ ਤਾਂ ਗਗਨ ਸਿੰਘ ਨਾਲ ਪੰਜਾਬ ਗੱਲ ਕਰੋ ਇੱਕ ਰੇਟ ਪੈ ਰਿਹਾ ਪੰਜਾਬ ਦੇ ਵਿੱਚ ਉੱਥੇ ਜਿਹੜੇ ਪੀਆਰ ਉਹ ਤੁਹਾਡੇ ਜੇ ਉੱਥੇ ਅਕਾਊਂਟ ਕਿਸੇ ਦੇ ਖੋਲੇ ਆ ਜਦੋਂ ਚ ਪੈਸੇ ਜਾਂਦੇ ਆ ਤੇ 2-3 ਲੱਖ ਰੁਪਈਆ ਜੇ ਇਕੱਠਾ ਚਲ ਗਿਆ ਪੈਨ ਕਾਰਡ ਮੰਗਣ ਲੱਗ ਗਏ ਇੱਕ ਬੈਂਕ ਦੇ ਵਿੱਚ ਕਿਸੇ ਵਿਆਹ ਲੜਕੀ ਦਾ ਹੋਣਾ ਸੀ ਉਦੇ ਨਾਮ ਤੇ ਪੈਸੇ ਟਰਾਂਸਫਰ ਹੋ ਗਏ ਹੁਣ ਪੈਨ ਕਾਰਡ ਮੰਗਦੇ ਆ ਪੈਸੇ ਰੋਕੀ ਬੈਠਿਆ ਉਧਰੋਂ ਵਹਿ ਤਰਿਆ ਹੋਇਆ ਹੈ ਉੱਥੇ ਬਹੁਤ ਔਖਾ ਹੋਇਆ ਹੋਇਆ ਹੈ ਆਮ ਲੋਕਾਂ ਨੂੰ ਪਤਾ ਕਰਕੇ ਪੈਸੇ ਇਧਰ ਉਧਰ ਕਰੋ ਗਗਨ ਸਿੰਘ 604 349 13 13 ਨੰਬਰ ਹੈ ਪੰਜਾਬ ਫੋਰੈਕਸ ਤੇ ਨਿਊ ਕੰਟਰੀ ਅਪਲੈਂਸਸ 64500 ਰੰਮੇ 6890 135 32 ਖੱਟ ਪਰ ਐਮਨੀ 60% ਦੇ ਕਰੀਬ ਜਿਹੜੀਆਂ ਅਪਲੈਂਸਸ ਤੁਸੀਂ ਆਫ ਲੈ ਸਕਦੇ ਹੋ ਸਸਤੀਆਂ ਲੈ ਸਕਦੇ ਹੋ ਤੇ ਚੇਬੋ ਦੇ ਚਪਿਆ ਹੋ ਸਕਦਾ ਪਰ ਨਿਊ ਕੰਟਰੀ ਅਪਲੈਂਸਸ ਕੰਮੋਂ ਸਾਰੀਆਂ ਕਰਦੀਆਂ ਜੇ ਝਰੀਟ ਦਾ ਰੌਲਾ ਨਹੀਂ 100 ਚੋਂ 60 ਡਾਲਰ ਬਚਣਗੇ 6045938690 ਸਾਈ ਜ਼ਹੂਰ ਸਨ ਮਾਰਵੀ ਦਾ ਇੱਕ ਵਧੀਆ ਗੀਕ ਚ ਜਿਸ ਦੀ ਵੀਡੀਓ ਬਣੀ ਆ ਮਿਊਜ਼ਿਕ ਵੀ ਬਹੁਤ ਵਧੀਆ ਹੈ ਦਿਨ ਵੀ ਬਹੁਤ ਵਧੀਆ ਹੈ ਸਾਈ ਜੀ 11 ਵਜ ਕੇ 40 ਮਿੰਟ ਹੋਏ ਆ ਜੀ ਖਬਰਾਂ ਦੀ ਗੱਲਬਾਤ ਜੇ ਸ਼ੁਰੂ ਕਰਾਂ ਤਾਂ ਉਹਦੇ ਵਿੱਚ ਦੁਨੀਆ ਦੀਆਂ ਖਬਰਾਂ ਦੇ ਡੋਨਲਡ 트ੰਪ ਨੂੰ ਇੱਕ ਮੁਸ਼ਕਲ ਜਿਹੜੀ ਲੋਕਾਂ ਦੇ ਮਨ ਦੇ ਵਿੱਚੋਂ ਇਹ ਕੱਢਣ ਵੀ ਪੈਣੀ ਹੈ ਇੱਕ ਜਿਹੜਾ ਗਲਤ ਪ੍ਰਵਾਹ ਚੱਲ ਗਿਆ ਕਿ ਰਸ਼ੀਆ ਮੈਨੂੰ ਬਲੈਕਮੇਲ ਨਹੀਂ ਕਰ ਸਕਦਾ ਆਪਣੇ ਫਾਇਦੇ ਦੇ ਬਹੁਤ ਟਿਪੀਕਲ ਇੱਕ ਸਿਚੁਏਸ਼ਨ ਹੋ ਗਈ ਜਿਹੜੀ ਨੈਸ਼ਨਲ ਸਿਕਿਉਰਿਟੀ ਐ ਜਾਂ CIA ਐ FBI ਐ ਜਿੰਨੀਆਂ ਵੀ ਇੰਟੈਲੀਜੈਂਸ ਏਜੰਸੀ ਨੇ ਚਾਰਾਂ ਨੇ ਜਿਹੜੇ ਦੋ ਪੇਜ ਬਣਾ ਕੇ ਦਿੱਤੇ ਜਿਹੜੇ ਪ੍ਰੈਸ ਦੇ ਹੱਥ ਲੱਗੇ ਵੀ ਉਹਦੇ ਨਿੱਜੀ ਵਿਤੀ ਜਾਣਕਾਰੀ ਤੇ ਹੋਰ ਚੀਜ਼ਾਂ ਜਿਹੜੀਆਂ ਡੋਨਲਡ 트ੰਪ ਦੀਆਂ ਰਸ਼ੀਆ ਵਾਲੇ ਹੈਕ ਕਰਗੇ ਜਾਂ ਉਹਨਾਂ ਦੇ ਕੋਲ ਹੈ ਦੇ ਵਿੱਚ ਡੋਨਲਡ 트ੰਪ ਨੂੰ ਬਲੈਕਮੇਲ ਨਾ ਕਰਦੇ ਰੰਪ ਫਦੀ ਅਗਲੀ ਜਿਹੜੀ ਲੜਾਈ ਹੋਣੀ ਹੈ ਉਹ ਅਮਰੀਕਾ ਅਮਰੀਕਨ ਲੋਕਾਂ ਨੂੰ ਇਹ ਦੱਸਣ ਦੀ ਹੋਣੀ ਹੈ ਕਿ ਮੈਨੂੰ ਬਲੈਕਮੇਲ ਨਹੀਂ ਕੋਈ ਕਰ ਸਕਦਾ ਖੜਾ ਹੋ ਗਿਆ ਦੇਖਣ ਨੂੰ ਬਹੁਤ ਛੋਟਾ ਲੱਗਦਾ ਇਸ ਦੇ ਵਿੱਚੋਂ ਹੋਰ ਮੁਸ਼ਕਲ ਕੋਈ ਨਿਕਲ ਸਕਦੀ ਕਿਉਂਕਿ ਹੁਣ ਵੱਡੇ ਦਾਵੇਦਾਰ ਨੇ ਦੋਨਾਂ ਦੇ ਸਬੰਧ ਈਵਨ ਆਵਾਮਾ ਦੇ ਸਮੇ ਵੀ ਪੁੱਤਨ ਦੇ ਨਾਲ ਵਧੀਆ ਯੂਕਰੇਨ ਦੇ ਮਸਲੇ ਦੇ ਵਿੱਚ ਕਰਾਈਮੀਆਂ ਦੇ ਮਸਲੇ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਅਸੈਂਬਲੀ ਦੇ ਵਿੱਚ ਇੱਕ ਫੋਟੋ ਦੇ ਵਿੱਚ ਹੱਥ ਕੱਢੀ ਖੜਾ ਬਰਾਕ ਓਬਾਮਾ ਪੁੱਤਨ ਹੱਥ ਨਹੀਂ ਕੱਢ ਰਿਹਾ ਮਿਲਾਉਣ ਨੂੰ ਉਹਦੇ ਬਲ ਬਹੁਤ ਬੈੜਾ ਝਾਕ ਰਿਹਾ ਇਸ ਗੱਲ ਦਾ ਹੁਣ ਵੱਡਾ ਰੇੜਕਾ ਜਿਹੜਾ ਉਹ ਪਹਿਸਕਦਾ ਹੈ ਕਿ ਲੋਕਾਂ ਨੂੰ ਮੈਂ ਕਿਵੇਂ ਦੱਸਾਂ ਕਿ ਮੈਂ ਬਲੈਕਮੇਲ ਨਹੀਂ ਹੋ ਸਕਦਾ ਬਾਕੀ ਹੋਰ ਜਿਹੜੀਆਂ ਬਾਹਰਲੀਆਂ ਖਬਰਾਂ ਹਨ ਉਸ ਦੇ ਵਿੱਚ ਤੁਰਕੀ ਦੇ ਵਿੱਚ ਪਿਛਲੇ ਦਿਨ ਤੋਂ ਬਾਅਦ ਜਿਹੜੇ ਹਮਲੇ ਹੋਏ ਬਹੁਤ ਗਸ਼ਟ ਜਿਹੜੀ ਕਰਫਿਊ ਵਰਗੀ ਹੈ ਮਿਲਟਰੀ ਹੈ ਜਿਹੜੀ ਤੇ ਖੜੀ ਹਮਲਾ ਨਾ ਹੋ ਜਾਏ ਇਸ ਦੇ ਡਰ ਦੇ ਵਿੱਚ ਤੇ ਅਗਲੇ 5 ਤੋਂ 10 ਸਾਲ ਦੇ ਲਈ ਰਾਜ ਕਰਨ ਲਈ ਇੱਕ ਰੈਫਰੈਂਡਮ ਕਰਵਾ ਰਿਹਾ ਰਾਸ਼ਟਰਪਤੀ 10 ਸਾਲ ਦੇ ਰਾਦਰ ਉਸ ਇਹ ਦੇ ਵਿਆਦ ਜੇ ਤੁਸੀਂ ਰਾਸ਼ਟਰਪਤੀ ਐਡਵਾਨ ਨੂੰ ਤੁਸੀਂ ਦੇਖਦੇ ਹੋ ਤਾਂ ਉਹ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਡਿਕਟਰਟਰ ਬਣ ਰਿਹਾ ਤਾਨਾਸ਼ਾਹ ਬਣ ਰਿਹਾ ਰਾਜ ਪਲਟੇ ਦੇ ਚੱਕਰ ਦੇ ਵਿੱਚ ਉਹਨੇ ਵਿਰੋਧੀ ਆਪਣੇ ਫੜ ਫੜ ਕੇ ਤੁਨ ਤੇ ਜੇਲ੍ਹਾਂ ਦੇ ਵਿੱਚ ਹੁਣ ਮੌਤ ਦੀ ਸਜ਼ਾ ਦੀ ਬਹਾਲੀ ਦੀ ਮੰਗ ਕਰ ਰਿਹਾ ਤੇ ਅਲਦਾਲੇ ਦਿਆਂ ਨੂੰ ਦੱਸ ਰਿਹਾ ਕਿ ਇਉਂ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣੀ ਹੈ ਕਹਾਣੀ ਪਰ ਆਪਣੇ ਉਸ ਦੇ ਜਿਹੜੇ ਹਾਲਤ ਨੇ ਉੱਥੇ ਉਹ ਸਾਜ਼ਗਰ ਨਹੀਂ ਨੇ ਉਰਦਾਂ ਦੇ ਨਾਲ ਬਹੁਤ ਕੱੜੀ ਲੜਾਈ ਹੈ ਤੇ ਲੋਕ ਵੀ ਦੁਖੀ ਹੋ ਰਹੇ ਨੇ ਤੁਰਕਿਸ ਜਿਹੜੇ ਤੁਰਕੀ ਦੇ ਲੋਕ ਨੇ ਤੁਰਕ ਨੇ ਜਿਹੜੇ ਉਹ ਕਹਿੰਦੇ ਅਸੀਂ ਦੁਖੀ ਹਾਂ ਸਰਕਾਂ ਸਾਨੂੰ ਪਿਛਲੇ ਕਰ ਰਹੀ ਹੈ ਇਹ ਹਾਲਾਤ ਠੀਕ ਨਹੀਂ ਹੋ ਰਹੇ ਅਮਰੀਕਾ ਨੇ ਦੱਸਿਆ ਕਿ ਤਾਲਿਬਾਨ ਦੇ ਨਾਲ ਲੜਾਈ ਦੇ ਵਿੱਚ ਇੱਤੀ ਜਿਹੜੇ ਸਿਵਿਲিয়ান ਜਿਹੜੇ ਉਹਦੇ ਵਿੱਚ ਮਾਰੇ ਗਏ ਨੇ ਤਾਲਿਬਾਨ ਦੀ ਜਿਹੜੀ ਲੜਾਈ ਕੁੰਦੂਸ ਦੇ ਵਿੱਚ ਚੱਲ ਰਹੀ ਹੈ ਤਾਂ ਉਸ ਵਿੱਚ ਨਵੰਬਰ 4 ਦੀ ਇਹ ਕਹਾਣੀਆਂ ਹੁਣ ਬਾਹਰ ਨਿਕਲੀ ਹੈ ਜਿਹਦੇ ਵਿੱਚ ਤਾਲਿਬਾਨ ਤੇ ਅਫਗਾਨ ਸਿਕਿਉਰਿਟੀ ਦੀ ਜਿਹੜੀ ਲੜਾਈ ਹੋਈ ਹੈ ਉਹਦੇ ਵਿੱਚ 35-35 ਦੇ ਕਰੀਬ ਲੋਕ ਮਾਰੇ ਗਏ ਦਾਸ਼ਾਂ ਪਈਆਂ ਨੇ ਬੰਦੇ ਕੋਲ ਬੈਠੇ ਐ ਤੇ ਇਹ ਲੋਕ ਤਾਲਿਬਾਨ ਤੋਂ ਔਖੇ ਸੀ ਤੇ ਅਫਗਾਨ ਦੀ ਮਿਲਟਰੀ ਦੇ ਨਾਲ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਦੇ ਵਿੱਚ ਹਾਲੇ ਵੀ ਜਿਹੜਾ ਕਤਲ ਹੋਇਆ ਸਿਆਹ ਰੰਗ ਦੀ ਮਾਸਟਰ ਸਰਜਨ ਡੈਬਰਾ ਦਾ ਬੰਦਾ ਹਾਲੇ ਤੱਕ ਲੱਭਿਆ ਨਹੀਂ 1 ਲੱਖ ਡਾਲਰ ਦਾ ਇਨਾਮ ਦੱਸਿਆ ਫੋਟੋਆਂ ਆ ਪਰ ਉਸ ਮਿੱਤਰ ਕੁੜੀ ਆ ਜਿਹੜੀ ਜੈਮੀ ਸਲਟਰ ਉਸ ਨੂੰ ਪੁਲਿਸ ਨੇ ਫੜ ਲਿਆ ਕਿ ਉਸਨੇ ਸਮਿਥ ਲਾਇਡ ਦੀ ਮਦਦ ਕੀਤੀ ਭੱਜਣ ਦੇ ਲਈ ਇਹ ਨਾਲ ਹੀ ਅ ਹੈ ਤੇ ਸਮਿਥ ਲਾਇਡ ਤੇ ਨਾਲ ਇੱਕ ਫੜਿਆ ਤੇ ਬੰਦਾ ਹਲੇ ਤੱਕ ਉਹ ਲੱਭਿਆ ਨਹੀਂ ਕਿ ਕਿੱਥੇ ਮਾਰਕੀਥ ਲਾਇਡ 41 ਸਾਲ ਦੀ ਉਸ ਉਮਰ ਹੈ ਹੁਣ ਇਸ ਸਮੇਂ ਇੱਕ ਤਰੰਜਨ ਬਲੋਂ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਗਿਆ ਸੀ ਕੁੜੀ ਮੁੰਡੇ ਦੀ ਲੋਹੜੀ ਉਸ ਸਮੇਂ ਜਦ ਮੁੰਡਿਆਂ ਨੂੰ ਅਸੀਂ ਸਾਹਮ ਸਾਂ ਤੇ ਕੁੜੀਆਂ ਨੂੰ ਮਾਰਦੇ ਸਾਂ ਉਸ ਸਮੇਂ ਦੋਨੇ ਧੀ ਤੇ ਪੁੱਤ ਦੀ ਲੋਹੜੀ ਇਕੱਠਿਆਂ ਮਨਾਉਣ ਦਾ ਤਰੰਜਨ ਦਾ ਇੱਕ ਬਹੁਤ ਵੱਡਾ ਉਦਮ ਸੀ ਤੇ ਜਿਸ ਨੂੰ ਭਾਈਚਾਰੇ ਨੇ ਬਹੁਤ ਪਿਆਰ ਕੀਤਾ ਐਵੇਂ ਘਮਣ ਤੇ ਉਸ ਦੀਆਂ ਬਹੁਤ ਤੇ ਕਮਿਊਨਿਟੀ ਦੇ ਵੱਡੇ ਹੰਗਾਰੇ ਦੇ ਨਾਲ ਇਹ ਵਰਲਡ ਲੈਵਲ ਦਾ ਜਿਹੜਾ ਇਵੈਂਟ ਹੋਗਾ ਜਿਸ ਦੀ ਗੱਲ ਹੈ ਜਿਹੜੀ ਸਾਰੀ ਜਗ੍ਹਾ ਹੁੰਦੀ ਰਹੀ ਕਿ ਪ੍ਰਿੰਜਨ ਨਾਂ ਦੀ ਸੰਸਥਾ ਕੁੜੀ ਤੇ ਮੁੰਡੇ ਦੀ ਲੋਹੜੀ ਸਦੀ ਦੇ ਵਿੱਚ ਮਨਾ ਰਹੀ ਹੈ। ਐਮੀ ਸਾਰਾ ਮੇਰੇ ਨਾਲ ਹੁਣ ਗੱਲਬਾਤ ਕਰਨਗੇ ਇਹ ਵਾਰ ਦੀ ਲੋਹੜੀ ਕਾਦਾ ਹੋ ਰਹੀ ਹੈ ਇਹਦੇ ਵਿੱਚ ਕੀ ਹੋਣਾ ਹੈ ਬੀਬੀਆਂ ਦੀ ਬਹੁਤ ਵੱਡੀ ਇੱਕ ਮੁਸ਼ਕਲ ਹੁੰਦੀ ਹੈ ਕਿ ਬਹੁਤ ਬੀਬੀਆਂ ਬਾਹਰ ਖੜ ਜਾਂਦੀਆਂ ਤੇ ਅੰਦਰ ਖਾਲ ਪਰ ਜਾਂਦਾ ਹੈ। ਬਾਰੇ ਵੀ ਐਮੀ ਨੂੰ ਪੁੱਛਦੇ ਐਮੀ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿਸਟਰ ਗੇਲ ਥੈਂਕ ਯੂ ਸੋ ਮਾਚ ਫॉर ਹੈਵਿੰਗ ਮੀ ਇਨ T R P I ਰੇਡੀਓ ਦੇ ਸਾਰੇ ਨਿਊ ਇਅਰ ਸੋ ਫੇਰ ਸਾਲ ਲੰਘਦੇ ਦਾ ਕੁਝ ਨਹੀਂ ਪਤਾ ਲੱਗਦਾ ਜੀ ਫੇਰ ਦਾ ਸਮਾਂ ਆ ਗਿਆ ਤੇ ਗੱਲਾਂ ਹੋ ਰਹੀਆਂ ਕੁੜੀ ਮੁੰਡੇ ਦੀ ਲੋਹੜੀ ਦੀ ਗੱਲ ਹੋ ਰਹੀ ਹੈ ਪਹਿਲਾਂ ਇਹ ਦੱਸੋ ਜੀ ਕਿਹੜੇ ਸਾਲ ਪਹਿਲੀ ਵਾਰ ਆਪਾਂ ਮਨਾਈ ਸੀ ਕੁੜੀ ਤੇ ਮੁੰਡੇ ਅਹ ਕੁੜੀ ਦੇ ਮੰਡੇ ਦੀ ਲੋੜੀ ਗਿਰ ਸਾਹਿਬ 14 ਸਾਲ ਪਹਿਲਾਂ ਸ਼ੁਰੂ ਹੋਈ ਸੀ ਸੋ ਪਾ 13 ਪੂਰਾ ਕਰਕੇ ਹੋਣਾ ਇਸ ਦਿਲੇ ਜਦ ਵਿੱਚ ਸਾਲ ਚ ਲੋੜੀ ਮੰਨ ਰਹੀ ਹੈ ਟਾਈਮ ਸੀ ਜਦੋਂ ਅਸੀਂ ਗੱਲ ਕੀਤਾ ਪਤਾ ਹੀ ਲੱਗਿਆ ਅਸੀਂ ਪ੍ਰੀਲੀਮినਰੀ 스테जेस ਸੀ ਪੀਐਸਏ ਹੋਰ ਵੀ ਰਿਚ ਕਰੀਏ ਇਨਕਲੂਸਿਵ ਬਣਾਈਏ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਚਾਹੇ ਕਲਚਰਲ ਪਰਸਪੈਕਟਿਵ ਹੋਵੇ ਉਹਦੇ ਤੋਂ ਲੈ ਕੇ ਅੱਜ ਤੱਕ ਦਾ ਸਮਾਂ ਪਤਾ ਹੀ ਨਹੀਂ ਲੱਗਾ ਕਿਦਾਂ shot uh, 14 years de agaye anto time is just flying bilkul ji mummy ko mummy ko kharab ban gi 14 salan de vich te maa ban ke bahut farq maa ban ke phir pata lagda ve lohdi hor ki hai acha ji is saal da jehda event hai oh usnu dasso vich ittra hor hai kiven ho reha hai te venue kehda hai ਜ਼ਿਆਦਾ ਜਿਹੜਾ acommodation ਹੋ ਜਾ ਉਹਦੇ ਵਿੱਚ ਬੀਬੀਆਂ ਮੁੜਿਆਉਂਦੀਆਂ ਫਿਰ ਗੁੱਸੇ ਹੁੰਦੀਆਂ ਫਿਰ ਸਾਨੂੰ ਫੋਨ ਕਰਦੀਆਂ ਵੀ ਤੁਸੀਂ ਗੱਲ ਕਹੋ ਜੀ ਕਰੋ ਜੀ ਦੱਸੋ ਕਿਸ ਤਰ੍ਹਾਂ ਇਸ ਨੂੰ 15 ਜਨਵਰੀ ਨੂੰ 4:30 ਵਜੇ ਬਾਅਦ ਤੋਂਣੀ ਲੱਗ ਜਾਣੀ ਆ ਜਿੱਦਾਂ ਤੁਸੀਂ ਕਿਹਾ ਅੱਜ ਮੈਂ ਪopulation ਦੇ हिसाब ਨਾਲ ਪopularity ਦੇ हिसाब ਨਾਲ ਹਰੇਕ ਸਾਲ ਟਿਕਟਾਂ ਬਹੁਤ ਜ਼ਿਆਦਾ ਥੋੜੀ ਜਾਂਦੀਆਂ ਹੈਗੀਆਂ ਵੀ ਅਪੋਲੋਜਾਈਜ਼ ਪਰ ਦੇਖਿਆ ਜਾਵੇ ਹੋ ਜਾਂਦਾ ਪਹਿਲਾਂ ਥੋੜੀ ਆਰਗੇਨਾਈਜੇਸ਼ਨ ਆਪੇ ਕੱਢ ਲਈਏ ਜਿਨ੍ਹਾਂ ਨੇ ਵੀ ਆਉਣਾ ਹੈਗਾ ਇਹ ਨੂੰ ਇਹੀ ਗੁਜ਼ਾਰਿਸ਼ ਹੈ ਬੇਨਤੀ ਹੈ ਕਿ ਆਪਣੇ ਟਿਕਟਸ ਲੈਣਾ ਤੁਸੀਂ ਵੀ ਵੀ ਲੈਦਨੇ ਲੈ ਲਓ ਤਾਂ ਕਿ ਪਲੀਜ਼ ਫਿਰ ਤੁਹਾਨੂੰ ਵੀ ਨਾ ਫੋਨ ਹੋਣ ਤੇ ਸਾਨੂੰ ਨਾ ਬਹੁਤੇ ਲੋਕੀ ਗੁੱਸੇ ਹੋਣ ਤੇ ਤੁਸੀਂ ਟਿਕਾ ਨਹੀਂ ਦਿੰਦੇ। ਹੂੰ। ਸੋਤੂਣੀ ਜਾਣੀ ਪਹਿਲਾਂ ਬਾਹਰ ਧੂਣੀ ਤੇ ਵਧੀਆ ਅਸਲ ਫੰਕਸ਼ਨ ਹੁੰਦਾ ਤੇ ਉਸ ਤੋਂ ਬਾਅਦ ਫਿਰ ਅੰਦਰ ਜਾਣਾ ਫਿਰ ਕਿੱਕਲੀ ਕਲੀਅਰ ਦੀ ਜਿਹੜੀ ਪੈਣੀ ਆ ਅੰਦਰਲਾ ਕਿੰਨੇ ਵਜੇ ਅੰਦਰ ਜਾਣਾ ਹਾਲ ਦੇ ਤੇ ਕਹੇ ਜਿਹਾ ਸਟਾਲਸ ਹੋਣਗੀਆਂ ਤੇ ਕਿਹੜੀਆਂ ਆਰਗੇਨਾਈਜੇਸ਼ਨ ਨਾਲ ਨੇ ਕੀ ਕੀ ਹੋਣਾ ਫਿਰ ਹਾਲ ਦੇ ਅੰਦਰ। ਮਿਸਗੀਓ ਇਹ ਜਿਹੜੇ ਕੁੜੀ ਮੰਡੇ ਦੀ ਲੋੜੀ ਦਾ ਪ੍ਰੋਗਰਾਮ ਸਾਡੀ ਚੱਲ ਰਿਹਾ ਜਦੋਂ ਆਪਾਂ ਕਹਿੰਨੇ ਆ ਕਿ ਧੂਣੀ ਲੱਗ ਜਾਣੀ ਹੈਗੀ ਐ ਸੋ ਬਿਕਾਜ਼ ਵੈਦਰ ਦੇ ਹਿਸਾਬ ਨਾਲ ਕਿ ਬਹੁਤ ਜ਼ਿਆਦਾ ਠੰਡ ਹੁੰਦੀ ਪਾਣੀ ਹੁੰਦੀ ਹੈ ਲੈਡੀਆਂ ਨੇ ਅ ਕਲੋਥਿੰਗ ਜਿੱਦਾਂ ਜੈਕਟ ਜੁਗਤ ਨਹੀਂ ਪਾਣਾ ਚਾਹੁੰਦੇ ਆ ਆਪਣੇ ਸੂਟਾਂ ਦੇ ਉੱਤੇ ਸੋ ਜਿੱਦਾਂ ਜਿੱਦਾਂ ਥੱਲੇ ਪ੍ਰੋਗਰਾਮ ਧੂਣੀ ਦਾ ਚੱਲ ਰਿਹਾ ਉਹਦੇ ਨਾਲ ਨਾਲ ਉੱਪਰ ਵੀ ਪ੍ਰੋਗਰਾਮ ਚੱਲ ਰਿਹਾ ਸੋ ਇਹ ਨਹੀਂ ਕਿ ਜੇ ਥੱਲੇ ਪ੍ਰੋਗਰਾਮ ਚੱਲ ਰਿਹਾ ਤਾਂ ਉੱਪਰ ਕੁਝ ਨਹੀਂ ਹੋ ਰਿ ਜਿੱਦਾਂ ਜਿੱਦਾਂ ਥੱਲੇ ਪ੍ਰੋਗਰਾਮ ਚੱਲ ਰਿਹਾ ਉੱਪਰ ਸਟੇਜ ਤੇ ਉਹ ਪ੍ਰੋਗਰਾਮ ਜਿਹੜੇ ਉੱਪਰ ਸਟੈਜਾਂ ਕਾ ਕੇ ਆ ਉਹ ਹਾਲ 'ਚ ਵੀ ਨਾਲ ਨਾਲ ਪ੍ਰੋਗਰਾਮ ਚੱਲਦੇ ਹੈਗੇ ਆ ਗੁਰਦੁਆਰੇ ਆਰ ਸੋਸ਼ਲ ਕਲਚਰਲ ਬੋਥ ਸਾਈਡ ਆਰਗੇਨਾਈਜੇਸ਼ਨਸ ਨੇ ਇਸ ਕੀਤਾ ਹੈਗਾ ਅਗੇ ਜਿਵੇਂ ਜਿੱਤਨ ਦਾ ਕੱਲੇदाई ਕੁੜੀ ਮੁੰਡੇ ਲਈ ਲੋੜੀ ਦਾ ਪ੍ਰੋਗਰਾਮ ਹੁੰਦਾ ਤਾਂ ਇੰਨੇ ਸਾਲ ਮੇਬੀ ਸਭ ਤੋਂ ਨਹੀਂ ਸਿੱਖਟ ਹੋਣੇ ਪਰ ਇਹ ਸਾਰੀਆਂ ਆਰਗੇਨਾਈਜੇਸ਼ਨਸ ਤੇ ਕਮਿਊਨਿਟੀ ਹਲਕੇ ਇਸ ਤਰ੍ਹਾਂ ਸਪੋਰਟ ਕਰਦੇ ਕਰਕੇ ਸਾਰਿਆਂ ਦੇ ਹੌਸਲਾ ਵਸਾਈ ਨਾਲੇ ਪ੍ਰੋਗਰਾਮ ਇੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਸਾਡੀ ਇਹੀ ਆ ਕਿ ਬਹੁਤ ਸਾਰੀ ਆਰਗੇਨਾਈਜੇਸ਼ਨਸ ਹੈ ਕਿਹਾ ਬਹੁਤ سارے ਪ੍ਰੋਗਰਾਮ ਹੈ ਕਿਹਾ again program da maksad ehi nahi te ek din aajo ta tu si celebrate kar lo yes kudi munde da fark mitao na ta kudi kali important hai na ta munda important hai balanced mm. life chona bahut zaroori hega hun je main ke mam ਸਾਨੂੰ ਪਰਮਾਤਮਾ ਨੇ ਇੱਕ ਬlesing ਦਿੱਤੀ ਹੈ ਇੱਕ ਨਵਾਂ ਜੀਵ ਦਿੱਤਾ ਤੁਸੀਂ ਉਹਨੂੰ ਲਾਈਫ ਨੂੰ ਸੈਲੀਬ੍ਰੇਟ ਕਰੋ ਕਿ ਪਤਾ ਨਹੀਂ ਇੰਨੇ ਲੱਖ ਕਰੋੜਾ ਬੰਦਿਆਂ ਚ ਉਹ ਛੋਟਾ ਜੀਵ ਤੁਹਾਡੇ ਲਈ ਕਿਉਂ ਆਇਆ there ਵਾਰਨ ਦਾ ਕਿਸਦਾ oh there is a reason that oh banda cha oh bachcha twadi hi life twadi hi family ch aaya kyunki there is a higher purpose kuch na kuch ta hoga ki there is effort kachne ਬੱਚੇ ਦੀ ਲੋੜੀ ਮਨਾਓ ਇੱਕ ਨਮੀ ਸੈਲੀਬ੍ਰੇਸ਼ਨ ਦੀ ਨਮੀ ਨਿਊ ਬਿਗਨਿੰਗਸ ਪਹਿਲੇ ਸਾਲ ਦਾ ਪਹਿਲਾ ਪ੍ਰੋਗਰਾਮ ਹੈਗਾ ਪਹਿਲਾ ਸਿਹਾਰ ਹੈਗਾ ਸਾਡਾ ਐਂਡ ਵੈਰੀ ਰਿਚ ਵੈਰੀ ਟਰੈਡੀਸ਼ਨਲੀ ਕਲਚਰਲੀ ਰਿਚ ਪ੍ਰੋਗਰਾਮ ਹੈਗਾ ਸੋ ਜਦੋਂ ਆਪਾਂ ਕੋਈ ਫਰਕ ਸਾਰੀਆਂ ਜਿਹੜੀਆਂ ਬੁਰਾਈਆਂ ਸਿੱਟ ਦੇਣੀਆਂ ਹੈਗੀਆਂ ਨਿਊ ਬਿਗਨਿੰਗਸ ਸੈਲੀਬ੍ਰੇਟ ਕਰਨੀਆਂ ਤਾਂ ਉਹਦੇ ਇਸਮਾਲ ਤੋਂ ਉਹ ਤੋਂ ਰਿਚ ਹੋਰ ਚੀਜ਼ ਕੀ ਹੋ ਸਕਦੀ ਹੈ ਉਹਦੇ ਤੋਂ ਹੋਰ a meaning for life ki hove sekida so this is what keeps us going he said no ek zindagi jado ase program dekh rahe ha be assi ek chance hai ka naye saal di shuruaat naye positive new beginnings to karni hai afi energy phat a jande hai te energy di ta gall beh ja vaja hundi hai toda group to sa do ghante kalliyan hi nachi jandeo na tusi thakde ho khungruan di jutti le li to bhi jutti vi tayar hai ji te phrandi vi saareyan di tayar hai ਅਛਾ ਜੀ ਹੋਰ ਪਰਫਾਰਮੈਂਸ ਐ ਐਮੀ ਜੀ ਹੋਰ ਪਰਫਾਰਮੈਂਸ ਸੰਭਕੀਆਂ ਹੋਣੀਆਂ ਇੱਕ ਤਾਂ ਤਰਿੰਜਨ ਦਾ ਜਿਹੜਾ ਗਿੱਧਾ ਹੁੰਦਾ ਹੈ ਤਾਂ ਸਿਰੇ ਹੀ ਹੁੰਦਾ ਹੈ ਤੁਹਾਡਾ ਬਾਕੀ ਹੋਰ ਕੀ ਕੀ ਹੈ ਲਿਸੀ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਤੇ ਜਿਹੜੀਆਂ ਤਰਿੰਜਨੀਆਂ ਕੁੜੀਆਂ ਸਾਰੀਆਂ ਅਸੀਂ yeah uh, uh, but uh, we are very passionate about indian culture punjabi <coughs> culture especially giddha pakka boliyan wagera ta sade sade andar jin de vich hai giya so anything there's a beat we are up so be, mostly sade jehdi organization hai ya kudiyan taranjan diyan valon hi kiti jandiyan performances othe vich kafi choreograph items lagya giddha hega pangra hega especially jehde naye bachya ne lohri manoni hai ki families ne lohri manoni hai giya othe naal naal ਉਹਨਾਂ ਦੇ ਇੱਕ ਸੈਗਮੈਂਟ ਹੁੰਦੀ ਐ ਸਪੈਸ਼ਲੀ ਡੈਡੀਕੇਟਡ ਟੂ ਥਮ ਜਿਹੜੇ ਜਨੇ ਬੱਚਿਆਂ ਦੀ ਲੋਹੜੀ ਉਹਨੀਆਂ ਕੇ ਸਟੇਜ ਤੇ ਕੀਤਾ ਜਾਂਦਾ ਆ ਨਵੇਂ ਵਿਆਹ ਜੋੜੇ ਸੇਮ ਥਿੰਗ ਉਹਨਾਂ ਇੱਕ ਜੈਦੀ ਲੋੜੀ ਦਾ ਪ੍ਰੋਗਰਾਮ ਹੈ ਜਿੱਥੇ ਤਿੰਨ ਜਨੇ ਆਪਣੇ ਪਰਫਾਰਮੈਂਸਸ ਕਰਨੀਆਂ ਇੱਕ ਮਾਹੌਲ ਤੇ ਜਿਨ੍ਹਾਂ ਨੇ ਲੋਹੜੀ ਪਾਉਣੀ ਹੈਗੀ ਆ ਉਹ ਪਲੀਜ਼ ਜਰੂਰ ਉਹਨਾਂ ਨੇ ਪਾਰਟਿਸਪੇਟ ਕਰਨਾ ਹੈਗਾ ਤਾਂ ਕਿ ਨੂੰ ਲੱਗੇ ਕਿ ਬਿਲਕੁਲ ਇੰਡੀਆ ਨੂੰ ਮਨਾ ਰਹੀ ਆ ਤੇ ਸਾਡੇ ਲਈ ਇਸ ਸਾਲ ਦੀ ਬਹੁਤ ਸਪੈਸ਼ਲ ਲੋੜੀ ਆ ਕਿਉਂਕਿ ਸਾਡੀ ਟ੍ਰਿੰਜਨ ਦੇ ਬੇਬੀ ਬੋਏ ਹੋਇਆ ਸੋ ਸਾਡੇ ਲਈ ਇਹ ਕੀ ਡਬਲ ਅਸੀਂ ਆਪਣੀ ਪਰਸਨਲ ਫਰੈਂਡ ਦੀ ਲੋੜੀ ਮਨਾਣੀ ਹੈਗੀ ਅਤੇ ਉੱਥੇ ਨਾਲ ਨਾਲ ਅਸੀਂ ਹੋਰ ਬਹੁਤ ਸਾਰੇ ਬਾਕੀ ਬੱਚਿਆਂ ਦੀ ਵੀ ਲੋੜੀ ਮਨਾਣੀ ਹੈਗੀ ਆ ਤੇ ਅਖੀਰ ਦੇ ਵਿੱਚ ਫੋਨ ਨੰਬਰ ਦੇਖੇ ਜਾਓ ਜੀ ਤੇ ਕੋਈ ਹੋਰ ਜਾਣਕਾਰੀ ਅਖੀਰ ਚ ਰਹ ਜਵੇ 1 ਮਿੰਟ ਹੋਰ ਹੈ ਤੁਹਾਡੇ ਆ ਜਨਕੀ ਤੇ ਜੀ ਸਾਰਿਆਂ ਨੂੰ ਪਤਾ ਹੀ ਹੈ ਤੁਹਾਡਾ ਬਹੁਤ ਬਹੁਤ ਕੇਆਰਪੀਆ ਰੇਡੀਓ ਦੀ ਸਾਰੀ ਮੈਨੇਜਮੈਂਟ ਤੇ ਟੀਮ ਦਾ ਬਹੁਤ ਬਹੁਤ ਧੰਨਵਾਦ ਹਰ ਇੱਕ ਵਾਰ ਤੁਸੀਂ ਸਾਥ ਜਿੰਨੇ ਹੈਗੀ ਆ ਆਪਣੇ ਕੁਰੀ ਮੁੰਡੇ ਨੂੰ ਲੈ ਕੇ ਆਓ ਜੋੜੇ ਨੂੰ ਜੋ ਵੀ ਤੁਸੀਂ ਕਰਨਾ ਆਪਣੀ ਬੀ ਔਨ ਟਾਈਮ ਜੇਨੇਰੇਟ ਇਨਫੋਰਮੇਸ਼ਨ ਹੋ ਚਾਹੀਦੀ 6124586 she such are she ਕਰ but up 4580 te vi phone kar sakde hai par tusi kise vi uh, video startup ni tickets par inquiry kar sakde hai emily dhanwad tusi sada galwat karke jane ho te is 4:30 ਵਜੇ ਤੁਹ ਨਹੀਂ ਲੱਗ ਜਾਣੀ ਤੇ ਅੰਦਰ ਹਾਲ ਬੈਂਕਟ ਹਾਲ ਦੇ ਵਿੱਚ ਤੇ ਬਾਹਰ ਪੂਰਾ ਉਤਸ਼ਾਹ ਦੇ ਨਾਲ ਸਾਰੇ ਪਹੁੰਚੇ ਤੇ ਇਹ ਲੋੜੀ ਨੂੰ ਬਣਾਇਓ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਮਿਸਟਰ ਗੇਲ ਵੀ ਸੀ ਯੂ ਥੈਂਕ ਯੂ ਬੈਸਟ ਥੈਂਕ ਰੀਨਾ ਕੋਰ ਸੇਖੋ ਕੈਲੀਫੋਰਨੀਆ ਦੇ ਵਿੱਚ ਇਹ ਪਰਿਵਾਰ ਸਾਡਾ ਸੁਣਦਾ ਉਹਨਾਂ ਦੀ ਬੇਟੀ ਰੀਨਾ ਕੋਰ ਅੱਜ ਜਨਮ ਦਿਨ ਮੁਬਾਰਕ ਹੋਵੇ ਰਣੀਤੀ ਨੂੰ ਉਹਦਾ ਜਨਮ ਦਿਨ ਵਪਾਰਕ ਸੰਦੇਸ਼ ਮਹਿਕ ਰੈਸਟੋਰੈਂਟ 94 ਤੇ ਸਕਾਟ ਤੇ ਨਮੀ ਮੈਨੇਜਮੈਂਟ ਥੱਲੇ ਖੁੱਲ ਗਿਆ ਜੀ ਮਹਿਕ ਰੈਸਟੋਰੈਂਟ ਦਾ ਬਹੁਤ ਨਾਮ ਰਿਹਾ ਤੇ 94 ਰੈਵਨਿਊ ਤੇ ਸਕਾਟ ਤੇ ਰੈਸਟੋਰੈਂਟ ਤੁਸੀਂ ਜਾ ਕੇ ਖਾਣਾ ਖਾ ਸਕਦੇ ਹੋ ਤੇ ਵੀ ਕਰ ਸਕਦੇ ਹੋ ਖਾਸ ਖੁੱਲਣ ਦੇ ਸਮੇਂ ਓਪਨਿੰਗ ਤੇ ਖਾਸ ਰੈਇਤਾਂ ਨੇ ਜਿਸ ਦੇ 799 ਦੇ ਲਈ ਤੁਸੀਂ ਨੌਨ ਵੈਜ ਜਿਹੜੇ ਪਕੌੜੇ ਨੇ ਉਹ ਆਰਡਰ ਕਰ ਸਕਦੇ ਹੋ 6045853331 ਨੰਬਰ ਹੈ 045853331 ਮਹਿਕ ਰੈਸਟੋਰੈਂਟ ਅਮਨ ਖੜਕੜ 6048251314 aman.ca ਸਰੀ ਜਾਂ ਵੈਨਕੂਵਰ ਚ ਦਫ਼ਤਰ ਅਮਨ ਖੜਕੜ ਦੇ ਨਾਲ ਤੁਸੀਂ ਗੱਲਬਾਤ ਕਰਿਓ ਕੋਈ ਮੌਰਗੇਜ ਲੈਣੀ ਹੈ ਤਾਂ ਅਮਨ 6048251314 aman.ca ਪ੍ਰੋਫੈਸਰ ਅਮਰਜੀਤ ਸਿੰਘ ਗੱਲਬਾਤ ਸ਼ੁਰੂ ਕਰਦੇ ਹਾਂ ਉਦੋਂ ਪਹਿਲਾਂ ਅੰਦਾਜ਼ ਗੀਤ ਸੁਣਾਉਣਾ ਜੇ ਆਰ ਸੰਧੂ ਦਾ ਗੀਤ ਤੁਸੀਂ ਸੁਣ ਜੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਕਿ 12 ਵਜੇ ਦੇ 10 ਮਿੰਟ ਤੋਂ ਪ੍ਰੋਫੈਸਰ ਅਮਰਜੀਤ ਸਿੰਘ ਜੀ ਹੁਣੀ ਗੱਲਬਾਤ ਕਰਨਗੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਕਿ ਕਿਹੋ ਜਿਹਾ ਇਸ ਸਾਲ ਦੀ ਇਲੈਕਸ਼ਨ ਹੈ ਤੇ ਕਿਹੋ ਜਿਹਾ ਸਾਡਾ ਪਿਛਲਾ ਸਮਾਂ ਸੀ ਤੇ ਕਿਹੋ ਜਿਹਾ ਉਹਨਾਂ ਨੂੰ ਹੁਣ ਲੱਗਦਾ ਹੈ ਪਿਛਲੇ ਦਿਨੀ ਜਿਆ ਨੋਟਬੰਦੀ ਤੇ ਗੱਲ ਪ੍ਰੈਸਰ ਸਾਹਿਬ ਨੇ ਕੀਤੀ ਸੀ ਤੇ ਤੁਸੀਂ ਬਹੁਤ ਪਿਆਰ ਉਹਨਾਂ ਨੂੰ ਉਹਨਾਂ ਦੀ ਗੱਲਬਾਤ ਦਾ ਦਿੱਤਾ ਸੀ ਅੱਜ ਫੇਰ ਪੰਜਾਬ ਦੀ ਰਾਜਨੀਤੀ ਤੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਸਰ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਬਤੋ ਸਭ ਤੋਂ ਪਹਿਲਾਂ ਜੀ ਜੀ ਤੁਹਾਨੂੰ ਅਤੇ ਦੂਧ ਰਾਡੇ ਸੁਣ ਰਹੇ ਸਾਰੇ ਹੀ ਜਿਹੜੇ ਵੀਰ ਭੈਣਾਂ ਮਾਤਾਵਾਂ ਉਹਨਾਂ ਨੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ ਤੇ ਬਹੁਤ ਹੀ ਤਨਵਾਦ ਤੁਹਾਡਾ ਮੈਨੂੰ ਮੌਕਾ ਦਿੱਤਾ ਦੁਆਰਾ ਇਸ ਸਟੇਸ਼ਨ ਤੇ ਆਉਣ ਦਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤਨਵਾਦ ਜੀ ਪਰ ਸਮੇ ਲਈ ਅੱਛਾ ਜੀ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਗੱਲ ਕਰ ਰਹੇ ਸਾਂ ਕਿ ਜਦੋਂ ਦੇਸ਼ ਆਜ਼ਾਦ ਹੋਇਆ 70 ਤੱਕ ਤੇ 78 ਤੋਂ ਅੱਗੇ ਸਾਡੇ ਇਸ ਪੰਜਾਬ ਦੇ ਖਿੱਤੇ ਵਿੱਚ ਜਦ ਤੱਕ ਰੋਟਾ ਪੰਜਾਬ ਇਹਨਾਂ ਨੇ ਬਣਾਇਆ ਨੀ ਸੀ ਕਿਉਂਕਿ ਬਹੁਤਾਂ ਵੱਡਾ ਪੰਜਾਬ ਸੀ ਤੇ ਪੰਜਾਬੀ ਸੂਬੇ ਦੀ ਮੰਗ ਤੇ ਅਕਾਲੀ ਦਲ ਦਾ ਗਠਨ ਪੁਰਾਣਾ ਸੀ ਤੇ ਉਹਦੇ ਬਾਅਦ ਸੱਤਾ ਦੀ ਕਹਾਣੀ ਚੱਲ ਪਈ ਕਦੇ ਕਾਂਗਰਸ ਕਦੇ ਅਕਾਲੀ ਕਦੇ ਕਾਂਗਰਸ ਕਦੇ ਅਕਾਲੀ ਇਸ ਵਾਰ ਤੀਸਰਾ ਬਦਲ ਦੇ ਤੌਰ ਤੇ ਆਮ ਆਦਮੀ ਪਾਰਟੀ ਪੰਜਾਬ ਚ ਸਰਗਰਮ ਹੈ ਤੁਸੀਂ ਆਪਣੇ ਤੌਰ ਤੇ ਇਸ ਕਿਥੋਂ ਇਤਿਹਸ ਭੂਮੀ ਨੂੰ ਕਿਥੋਂ ਤੋੜਨਾ ਚਾਹੁੰਦੇ ਹੋ ਇਸ ਨੂੰ ਸ਼ੁਰੂ ਕਰੋ ਜੀ ਬਿਲਕੁਲ ਠੀਕ ਜੀ ਜੀ ਜਿਵੇਂ ਤੁਸੀਂ ਕਿਹਾ ਕਿ ਆਜ਼ਾਦੀ ਸਮੇ ਤੋਂ ਲੈ ਕੇ ਅਗਰ ਆਪਾਂ ਸਰਕਾਰਾਂ ਦੀ ਕਾਰਗੁਜ਼ਾਰੀ ਦਾ ਦੇਖੀਏ ਤਾਂ 47 ਤੋਂ ਲੈ ਕੇ 67 ਤੱਕ ਦਾ ਇਤਿਹਾਸ ਜਿਹੜਾ ਜਿਹੜੀ ਆ ਉਹ ਕਾਂਗਰਸ ਦੇ ਹਿੱਸੇ ਆਉਂਦਾ ਅਗਰ ਅਸੀਂ ਉਹਦੇ ਮੌਜੂਦਾ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਪਿੱਛੇ ਛਾਤ ਮਾਰੀਏ ਤਾਂ ਵੀ ਸਾਨੂੰ ਨਾ ਕਿਤੇ ਜੁੜੇ ਹੋਏ ਨੇ ਜਿਨ੍ਹਾਂ ਦਾ ਰਾਜਨੀਤਿਕ ਸਫ਼ਰ ਜਿਹੜਾ ਉਹ ਕਾਂਗਰਸ ਤੋਂ ਸ਼ੁਰੂ ਹੋਇਆ ਪਰ ਜਦੋਂ ਤੁਸੀਂ ਉਹਨੇ ਕਿਹਾ ਕਿ ਸੂਬੇ ਦੀ ਮੰਗ ਜਿਹੜੀ ਆ ਕਿਸੇ ਸੁਚੱਜੀ ਮੰਗ ਜਾਂ ਕਿਸੇ ਸਹੀ ਤੰਗ ਦੇ ਨਾਲ ਜਾਂ ਕਿਸੇ ਸੋਚ ਨਾਲ ਜੁੜੀ ਹੋਈ ਮੰਗ ਨਹੀਂ ਸੀ ਬਲਕਿ ਸੱਤਾ ਦੀ ਭੁੱਖ ਨਾਲ ਜੁੜੀ ਹੋਈ ਮੰਗ ਸੀ ਉਸ ਸੱਤਾ ਦੀ ਭੁੱਖ ਨਾਲ ਸੀ ਇਹ ਜਿਹੜੇ ਵੱਡੇ ਸਟੇਟ ਨੂੰ ਵੱਡੇ ਜਿਹੜੇ ਸਾਡੇ ਰਾਜ ਸੀ ਉੱਤੇ ਤੋਂ ਲੈ ਕੇ ਥੱਲੇ ਤੱਕ ਸਾਡਾ ਐਡਾ ਵੱਡਾ ਰਾਜ ਸੀ ਉਹਨੂੰ ਇਹਨਾਂ ਨੇ ਟੁਕੜਿਆਂ ਦੇ ਵਿੱਚ ਵੰਡ ਲਿਆ ਬਟ ਐਨੀਵੇ ਬਾਕੀ ਰਹੀ ਗੱਲ ਕਿ ਕਦਮਦਰ ਕਦਮ ਜਦੋਂ ਇਹਨਾਂ ਦੀ ਵੀ ਐਂਟਰੀ ਹੋਗੀ बवंजा, 51 55 ਤੋਂ ਲੈ ਕੇ ਜੇ ਆਪਾਂ ਦੇਖੀਏ ਐਂਟਰੀ ਸ਼ੁਰੂ ਹੁੰਦੀ ਆ ਤੇ ਹੋਂ ਤੱਕ ਵਾਰੀ ਜਿਹੜੀ ਬੰਨੀ ਹੋਈ ਆ ਦੋਹਾਂ ਸਰਕਾਰਾਂ ਨੇ ਚਾਰ ਵਾਰੀ ਰਾਸ਼ਟਰਪਤੀ ਰਾਜ ਲੱਗਣ ਤੋਂ ਇਲਾਵਾ ਸਾਨੂੰ ਹੋਰ ਕੋਈ ਵੀ ਪਾਰਟੀ ਨਜ਼ਰ ਨਹੀਂ ਆਉਂਦੀ ਔਰ ਅੱਜ ਦੀ ਡੇਟ ਦੇ ਵਿੱਚ ਜੇ ਕਰੰਟ ਇਵੈਂਟਸ ਨੂੰ ਆਪਾਂ ਦੇਖੀਏ ਹਰ ਰੋਜ਼ ਦੀਆਂ ਘਟਨਾਵਾਂ ਜੋtheta ਵਾਪਰ ਰਹੀਆਂ ਨੇ ਉਹਦੇ ਵਿੱਚ ਆ ਆਮ ਆਦਮੀ ਪਾਰਟੀ ਦੇ ਨੇਤਾ ਬਹੁਤ ਹੀ ਗੁਰੀ ਤਰ੍ਹਾਂ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਬੋਖਲਾ ਰਹੇ ਨੇ ਔਰ ਬਾਕੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਇਹ ਬੋਖਲਾਹ ਜਿਹੜੀ ਆ ਉਹ ਸ਼ਰਿਆਮ ਦੇਖੀ ਜਾ ਸਕਦੀ ਹੈ ਜੀ ਹਾਂ ਜੀ ਅੱਛਾ ਜੀ ਮੈਨੂੰ ਇਹੋ ਦੱਸਿਓ ਕਿ ਦੋਨੇ ਪਾਰਟੀਆਂ ਕਾਂਗਰਸ ਤੇ ਅਕਾਲੀ ਜੜ ਪਰ ਸਾਡੇ ਨਾਲ ਹੀ ਰਿਸ਼ਤੇਦਾਰੀਆਂ ਆਪਸ ਵਿੱਚ ਸਾਰੀਆਂ ਜੁੜਦੀਆਂ ਪਿਛਲੇ ਦਿਨੀ ਮੈਂ ਗੱਲ ਕਰਕੇ ਹਟਿਆ ਸੀ ਕਿ ਆਪਸ ਪਰਿਵਾਰ ਰਾਜੇ ਤੋਂ ਲੈ ਕੇ ਮਜੀਠੀਆ ਪਰਿਵਾਰ ਬਾਦਲ ਪਰਿਵਾਰ ਬਰਾਰ ਪਰਿਵਾਰ ਕੈਰੋਂ ਪਰਿਵਾਰ ਇਹਨਾਂ ਦੀਆਂ ਰਿਸ਼ਤੇਦਾਰੀਆਂ ਬਹੁਤ ক্লোਜ਼ ਆਪਸ ਵਿੱਚ ਮਿਲਦੀਆਂ ਜੀ ਜੇ ਤੁਸੀਂ ਦੇਖਦੇ ਆਂ ਜਦੋਂ ਪ੍ਰਤਾਪ ਸਿੰਘ ਕੈਰੋਂ ਲੈ ਕੇ ਹੁਣ ਤੱਕ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਵੀ ਇਹਨਾਂ ਦੇ ਵਿੱਚ ਹੀ ਘੁੰਮ ਰਹੀ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਕੈਰੋਂ ਆਂ ਜਾਂ ਹੈ ਤੇ ਜਾਂ ਹਰਚੰਨ ਬਸਤਾੜ ਇੱਕ ਜਾਂ ਹੋਰ ਕੋਈ ਜਿਹੜੇ ਜਿਹੜੇ ਬੰਦੇ ਆਪਣੇ ਸਿਨੀਅਰ ਮਿਨਿਸਟਰ ਨੇ ਪਰ ਬੇਸਿਕਲੀ ਇਹਨਾਂ ਦੇ ਕੋਲ ਹੀ ਹੈ ਤੁਹਾਨੂੰ ਲੱਗਦਾ ਹੈ ਪਰਿਵਾਰਵਾਦ ਦੀ ਜਕੜ ਦੇ ਵਿੱਚ ਹੈ ਪੰਜਾਬ ਬਿਲਕੁਲ ਬਿਲਕੁਲ ਜਦੋਂ ਤੁਸੀਂ ਹੁਣ ਦੇਖ ਲਓ ਆਜ਼ਾਦੀ ਦੇ ਇਹ 병 ਹਸਪਤਾਲ ਲੈ ਕੇ ਹੁਣ ਤੱਕ ਜਿੰਨੀਆਂ ਵੀ ਆ ਕੁਰਸੀਆਂ ਸੰਭਾਲਣ ਦੀਆਂ ਜਿਹੜੀਆਂ ਵਾਰੀਆਂ ਤਨਾਡ ਪਰਿਵਾਰਾਂ ਦੇ ਹਿੱਸੇ ਆਈਆਂ ਤਨਾਡ ਪਰਿਵਾਰਾਂ ਦੀ ਜੇ ਆਪਾਂ ਗੱਲ ਕਰੀਏ ਉਸ ਸਮੇਂ ਦੀ ਜਦੋਂ ਇਹਨਾਂ ਨੇ ਬਾਗਦੌਰ ਆਪਣੇ ਹੱਥਾਂ ਦੇ ਵਿੱਚ ਸੰਭਾਲੀ ਉਸ ਸਮੇਂ ਤੋਂ ਡਾਟਾ ਚੱਕਣਾ ਸ਼ੁਰੂ ਕਰਦੇ ਹੋ ਕਿ ਇਸ ਪਰਿਵਾਰ ਕੋਲੇ ਉਸ ਸਮੇਂ ਕਿੰਨੀ ਜਾਇਦਾਦ ਸੀ ਦੂਜੀ ਵਾਰੀ ਸਰਕਾਰ ਬਣਨ ਵੇਲੇ ਕਿੰਨੀ ਤੀਜੀ ਜਿਸ ਸਰਕਾਰ ਬਣਨ ਵਾਲੇ ਕਿੰਨੀ ਸੀਗੀ ਤਾਂ ਤੁਸੀਂ ਹੈਰਾਨ ਹੋ ਜਾਉਗੇ ਕਿ ਇਹਨਾਂ ਡਾਕਿਆਂ ਦੇ ਵਿੱਚ ਆਲਮੋਸਟ 586% ਵੰਡਾ ਹੋਇਆ ਜੀ ਇਹਨਾਂ ਦੀ ਕੰਪਲੀਟ ਜਗ੍ਹਾ ਤਿੰਨ ਚਾਰਾਂ ਹੁਣ ਬਾਕੀ ਵੀ ਲੀਡਰ ਨੇ ਬਾਕੀ ਵੀ ਨੇਤਾ ਨੇ ਸਿਰਫ ਚਾਰ ਪਰਿਵਾਰਾਂ ਤੱਕ ਹੀ ਬਾਗਦੋਰ ਕਿੱਦਾਂ ਰਹੇਗੀ ਜੀ ਉਹਦੇ ਪਿੱਛੇ ਜਿਹੜਾ ਛੜਯੰਤਰ ਕਿਹਾ ਕਿ ਰਿਸ਼ਤੇਦਾਰੀ ਦਾ ਹੁਣ ਅੱਜ ਦੇ ਸੰਦਰਭ ਅਗਰ ਅੱਜ ਦੀਆਂ ਚੋਣਾਂ ਦੇ ਵਿੱਚ ਮੈਂ ਦੋ ਮੁੱਦੇ ਤੁਹਾਡੇ ਨਾਲ ਸਾਂਝੇ ਕਰੂੰਗਾ ਆ ਜਿਛਲੇ ਹਫ਼ਤੇ ਕੈਪਟਨ ਅਮਰਿੰਦਰ ਦੀ ਅਮਰਿੰਦਰ ਸਿੰਘ ਨੇ ਲਾਸਟ ਸਵਾਲਾਂ ਦੇ ਜਵਾਬ ਦੇ ਵਿੱਚ ਉਸ ਰਿਪੋਰਟਰ ਨੂੰ ਇੱਥੋਂ ਤੱਕ ਕਹਿ ਦਿੱਤਾ ਸ਼ਰੀਆਮ ਕੈਮਰੇ ਦੇ ਉੱਤੇ ਕਿ ਅਗਰ ਲੋਡ ਪਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰੀ ਜਿਹੜੀ ਸਾਡੀ ਟੀਮ ਉਹਦੀ ਅਗਵਾਈ ਹੇਠ ਉਹਦੀ ਪਰਮਿਸ਼ਨ ਲੈ ਕੇ ਅਸੀਂ ਅਕਾਲੀਆਂ ਦੇ ਨਾਲ ਵੀ ਸਾਂਝ ਪਾ ਸਕਦੇ ਆ ਦੇਖੋ ਕਿੰਦੀ ਬੇਸ਼ਰਮੀ ਵਾਲੀ ਗੱਲ ਆ ਕੱਲ ਬਾਦਲ ਸਾਹਿਬ ਪੇਪਰ ਭਰਨ ਗਏ ਮਲੋਟ ਤੇ ਉੱਥੇ ਪੱਤਰਕਾਰਾਂ ਨੇ ਇਹੀ ਸਵਾਲ ਜਿਹੜਾ ਉਹਨਾਂ ਨੂੰ ਕਰ ਦਿੱਤਾ ਉਹ ਜਿਹੜੀ ਜੁੱਤੀ ਵਾਲੀ ਘਟਨਾ ਦੇਖੋ ਅਲਟੀਮੇਟਲੀ ਉਸ ਜੜ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਗਰ ਲੋੜ ਪਈ ਤਾਂ ਸਾਂਝੇ ਦੁਸ਼ਮਣ ਨੂੰ ਮਾਰਨ ਦੀ ਖਾਤਰ ਅਸੀਂ ਫੇਰ ਇਕੱਠੇ ਹੋ ਕੇ ਰਾਜ ਕਰ ਸਕਦੇ ਹਾਂ ਇਸ ਤੋਂ ਵੱਡੀ ਬੇਸ਼ਰਮੀ ਵਾਲੀ ਦੋਹਾਂ ਲੀਡਰਾਂ ਦੇ ਬਿਆਨ ਮੇਰਾ ਖਿਆਲ ਨਹੀਂ ਸਮੁੱਚੇ ਇਤਿਹਾਸ ਦੇ ਵਿੱਚ ਪੰਜਾਬ ਦੇ ਵਿੱਚ ਕਦੇ ਵਾਪਰੀ ਹੋਏ ਇਹ ਇਥੋਂ ਤੱਕ ਮਤਲਬ ਆਪਣੀਆਂ ਰਿਸ਼ਤੇਦਾਰੀਆਂ ਨੂੰ ਲੋਕਾਂ ਦੇ ਅੱਗੇ ਚਾਹੇ ਬਲੂੰਗੜਾ ਕਹੋ ਚਾਹੇ ਸ਼ੇਰ ਕਹੋ ਚਾਹੇ ਕੁਛ ਕਰ ਲਓ ਬਟ ਬਿਹਾਈਂਡ ਦਾ ਸੀਨ ਦੇ ਆਰ ਆਲਮੋਸਟ ਅਗਰ ਲੋੜ ਪਈ ਆਪਾਂ ਜੱਫੀਆਂ ਪਾ ਕੇ ਫੇਰ ਇਕੱਠੇ ਹੋ ਸਕਦੇ ਆ ਜੀ ਹਾਂ ਜੀ ਤੋਂ ਕਿ ਉਹਨੂੰ ਲੈਣ ਨੂੰ ਫਿਰਦੇ ਹੋ ਪੱਪੂ ਕਹਿੰਦਾ ਕੁਛ ਕਹਿੰਦਾ ਉਹ ਕਹਿੰਦਾ ਐ ਤਾਂ ਫਿਰ ਮੈਂ ਵੀ ਬਲੂੰਗੜਾ ਕਹਿੰਦਾ ਰਿਹਾ ਆਪਣੇ ਸੁਖਵੀਰ ਨੂੰ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਬਿਲਕੁਲ ਜੀ ਬਹੁਤ ਟਾਈਟ ਨਿਟਿੰਗ ਹੈ ਸਾਹਿਬ ਜੇ ਅੱਗੇ ਵੀ ਮੈਂ ਇੱਕ ਦਿਨ ਦੱਸ ਕੇ ਹਟਿਆ ਵੀ ਅਮਰਿੰਦਰ ਦੀ ਰਿਸ਼ਤਦਾਰੀ ਮਜੀਠੀਆ ਪਰਿਵਾਰ ਚ ਮਜੀਠੀਆ ਦੀ ਬਾਦਲ ਪਰਿਵਾਰ ਚ ਆ ਬਾਦਲ ਪਰਿਵਾਰ ਦੀ ਕੈਰੋਂ ਪਰਿਵਾਰ ਚ ਕੈਰੋਂ ਦੀ ਭਤੀਜੀ ਘਰ ਵਾਲੀ ਸੀ ਇੱਕ ਤੋਂ ਇੱਕ ਅੱਛਾ ਜੀ ਐਂ ਦੱਸਿਓ ਕਿ ਮੈਂ ਕਿਤੇ ਨਾ ਕਿਤੇ ਸਾਹਿਬ ਲੋਕਾਂ ਨੂੰ ਵੀ ਇਸ ਜ਼ਿੰਮੇਵਾਰ ਸਮਝਦਾ ਜਿਨ੍ਹਾਂ ਨੇ ਉੱਤਰ ਕਾਟੋ ਮੈਂ ਜਿਹੜਾ ਦੋਨੇ ਪਾਰਟੀਆਂ ਦਾ ਜ਼ੋਰ ਜਿਹੜਾ ਇੰਨਾ ਸਿਰ ਤੇ ਚੜਿਆ ਰਿਹਾ ਪਰ ਲੋਕਾਂ ਨੇ ਚੁਣਿਆ ਜੀ ਪੰਜ ਵਾਰ ਮੁੱਖ ਮੰਤਰੀ ਜੇ ਪ੍ਰਕਾਸ਼ ਸਿੰਘ ਬਾਦਲ ਬਣੇ ਵੋਟਾਂ ਲੋਕਾਂ ਨੇ ਪਾਈਆਂ ਫਿਰ ਇੰਨਾ ਸਮਾਂ ਲੋਕ ਕਿਵੇਂ ਗਲਤੀ ਦਾ ਸ਼ਿਕਾਰ ਹੁੰਦੇ ਰਹੇ ਤੇ ਮੁੜ ਮੁੜ ਇਹਨਾਂ ਨੂੰ ਚੁਣਦੇ ਕਿਵੇਂ ਰਹੇ ਫਿਰ ਆਪਣੇ ਇਹਦੇ ਵਿੱਚ ਮੈਂ ਜੀ ਜੀ ਤੁਹਾਡੇ ਨਾਲ ਇੱਕ ਗੱਲ ਹੀ ਜਿਹੜੀ ਸਭ ਤੋਂ ਵੱਡਾ ਯੋਗਦਾਨ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਜਾਂ ਹੁਣ ਦੇ ਸਮਾਜ ਦੇ ਵਿੱਚ ਪੈ ਰਿਹਾ ਮੈਂ ਇੱਕ ਗੱਲੋਂ ਦਿਲੋਂ ਧੰਨਵਾਦੀਆਂ ਉਹਨਾਂ ਖੋਜਕਾਰਾਂ ਦਾ ਜਿਨ੍ਹਾਂ ਨੇ ਇਹ ਸੋਸ਼ਲ ਮੀਡੀਆ ਦੇ ਜਿਹੜੇ ਸਾਧਨ ਨੇ ਸੋਸ਼ਲ ਮੀਡੀਆ ਦੇ ਸਾਧਨ ਨੇ ਜਿਹੜੇ ਉਹ ਸਮਾਂ ਆਪਾਂ ਇੰਦਰਾ ਗਾਂਧੀ ਤੱਕ ਦੇਖਦੇ ਹਾਂ ਬੀਜੇਪੀ ਦੀ ਸਰਕਾਰ ਤੱਕ ਦੇਖਦੇ ਹਾਂ ਤਾਂ ਜਿੰਨੇ ਵੀ ਸਾਧਨ ਸੀਗੇ ਜਿਹੜੇ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਉਣ ਵਾਲੇ ਸੀਗੇ ਚਾਹੇ ਉਹ ਰੇਡੀਓ ਸੀ ਚਾਹੇ ਟੈਲੀਵਿਜ਼ਨ ਸੀ ਉਹ ਪਹਿਲਾਂ ਤਾਂ ਸੀਮਤ ਸੀਗਾ ਸੀਮਤ ਹੋਣ ਤੋਂ ਬਾਅਦ ਉਹ ਜਿਸਸ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਹੁੰਦੀ ਸੀ ਉਹ ਉਹਨਾਂ ਸਾਧਨਾਂ ਨੂੰ ਆਪਣੀ ਪੌਪੂਲਾਰਿਟੀ ਦੇ ਸੀ ਆਪਾਂ ਸਾਰਿਆਂ ਨੇ ਇਹ ਵਰਤਾਰਾ ਦੇਖਿਆ ਕਿ 1984 'ਚ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲ ਵਕਰੀ ਹੈ ਕਿ ਅਸੀਂ ਪੰਜਾਬ ਵਾਲੇ ਨੇੜੇ ਸੀ ਸਾਨੂੰ ਉਹਨਾਂ ਸਿਧਾਂਤਾਂ ਦਾ ਪਤਾ ਸੀ ਸਾਨੂੰ ਉਹਨਾਂ ਵਿਵਹਾਰਾਂ ਦਾ ਪਤਾ ਸੀਗਾ ਤਾਂ ਕਰਕੇ ਅਸੀਂ ਉਹ ਸਾਝ ਕਿਸੇ ਹੋਰ ਰੂਪ 'ਚ ਪਾ ਰਹੇ ਸੀ ਲੇਕਿਨ ਬਾਕੀ ਦੇ ਸਾਰੇ ਬਾਕੀ 20-25 ਸਟੇਟਾਂ ਨੂੰ ਉਹਨਾਂ ਨੇ ਜੋ ਆਪਣੇ ਸਾਧਨ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਪਰ ਸਾਰਿਆਂ ਨੂੰ ਪਤਾ ਹੈ ਹੁਣ ਜਿਹੜਾ ਜ਼ਮਾਨਾ ਉਹ ਟੈਕਨੋਲੋਜੀ ਦਾ ਮਿਸਰ ਦੇ ਵਿੱਚ ਤੇ ਕੀ ਹੋਇਆ ਔਰ ਉਹਦੇ ਸਾਧਨ ਕੀ ਸੰਸਰ ਇਹਨਾਂ ਸਾਰੇ ਸਾਧਨਾਂ ਦੀ ਵਜ੍ਹਾ ਕਰਕੇ ਜਿਹੜੀ ਚੇਤਨਤਾ ਇੱਕ ਆਮ ਮਨੁੱਖ ਦੇ ਮਨ ਦੇ ਵਿੱਚ ਉਹ ਇੱਕ ਵੱਡਮ ਕਵੈਸਚਨ ਪੈਦਾ ਸ਼ੁਰੂ ਹੋ ਜਾਂਦੇ ਨੇ ਯਾਰ ਇਹ ਜਿਹੜੀ ਘਟਨਾ ਹੋਈ ਹੈ ਇਹ ਕਿਉਂ ਹੋਈ ਔਰ ਦੂਸਰੀ ਗੱਲ ਉਹਦੇ ਦੇ ਅਸੀਂ ਕੋਸ਼ਿਸ਼ ਕਰਦੇ ਹਾਂ ਰਾਈਟ ਅਵੇ ਕਾਰਨ ਕਾਰਨਾਂ ਦੀ ਵਜ੍ਹਾ ਕਰਕੇ ਅੱਜ ਜਿਹੜੀ ਮਨੁੱਖ ਦੀ ਸੋਚ ਆ ਉਹ ਚੇਤਨਣਾ ਔਰ ਪਹਿਲਾਂ ਨਾਲੋਂ ਜ਼ਿਆਦਾ ਪ੍ਰਗਟ ਰੂਪ ਦੇ ਵਿੱਚ ਉਹ ਜਿਹੜੀ ਤੇਜਿਤ ਹੋ ਕੇ ਪਬਲਿਕ ਆਸਾਰ ਜਾਂ ਪਬਲਿਕ ਬੇਅਬ ਦੇ ਰੂਪ ਦੇ ਵਿੱਚ ਅਸੀਂ ਉਹਨੂੰ ਅ ਦੇਖਦੇ ਆ ਇਸ ਵਜ੍ਹਾ ਕਰਕੇ ਉਹ ਜਿਹੜਾ ਸੁਨੇਹਾ ਬਾਕੀ ਜਨਤਾ ਤੱਕ ਬਾਕੀ ਗੱਲਾਂ ਦਾ ਬਹੁਤ ਜਲਦੀ ਪਹੁੰਚ ਜਾਂਦਾ ਆ ਇਹਦੀ ਵਜ੍ਹਾ ਕਰਕੇ ਹਰ ਇੱਕ ਜਿਹੜਾ ਗ੍ਰੇਡ ਆ ਕਿਸੇ politcal leader ਦਾ ਕਿਸੇ political personality ਦਾ ਉਹ ਹਮੇਸ਼ਾ ਇੱਕ ਕਹੋ ਬਈ ਬੇਬ ਦੇ ਰੂਪ ਦੇ ਵਿੱਚ ਇੱਕ ਚੇਤਨਤਾ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਉਹ ਇਕੱਠਾ ਹੁੰਦਾ ਔਰ ਇੱਕ ਬਲ ਜਿਹੜਾ ਉਹ ਪੂਰੇ ਸੰਸਾਰ ਦੇ ਵਿੱਚ ਪਲਾਂ ਦੇ ਵਿੱਚ ਹੀ ਫੈਲ ਜਾਂਦਾ ਹੁਣ ਇਹਨਾਂ ਲੀਡਰਾਂ ਕੋਲੇ ਉਹ ਚੁਆਇਸਿਜ਼ ਨਹੀਂ ਹੈਗੀਆਂ ਕਿ ਅਸੀਂ ਆਪਣੇ ਆਪ ਨੂੰ ਕਿਸ ਰੂਪ ਦੇ ਵਿੱਚ ਪ੍ਰਗਟ ਕਰੀਏ ਔਰ ਉਹਨਾਂ ਦਾ ਅਸਲੀ ਰੂਪ ਅਲਟੀਮੇਟਲੀ ਨਾ ਸਾਹਬਾਂ ਦੇ ਨਹੀਂ ਆਪੇ ਸਾਹਮਣੇ ਬਿਲਕੁਲ ਵਪਾਰਕ ਸੰਦੇਸ਼ਾਂ ਤੋਂ ਬਾਅਦ ਸਾਬ ਨਾਲ ਕੱਲੀ-ਕੱਲੀ ਪਾਰਟੀ ਦੀ ਗੱਲਬਾਤ ਸ਼ੁਰੂ ਕਰਨੀ ਹੈ ਕਾਂਗਰਸ ਅਕਾਲੀ ਤੇ ਆਮ ਆਦਮੀ ਪਾਰਟੀ ਉਹਨਾਂ ਦਾ ਕਿਹੋ ਜਿਹਾ ਸਮਾਰਿਆ ਤੇ ਗਾਂ ਨੂੰ ਕਿਹੋ ਜਿਹਾ ਸਮਾ ਉਹ ਆਪਣੀ ਅੱਖ ਦੇ ਨਾਲ ਵੇਖਦੇ ਆ ਕਾਂਗਰਸ ਤੇ ਕਿਉਂ ਜੇ ਦੂਸ਼ਨ ਲੱਗਦੇ ਆ ਅਕਾਲੀਆਂ ਤੇ ਕਿਉਂ ਜੇ ਤੇ ਆਮ ਆਦਮੀ ਪਾਰਟੀ ਤੇ ਕਿਉਂ ਜੇ ਤੋਂ ਬਾਅਦ ਵਾਪਸ ਗੱਲ ਕਰਦੇ ਪੰਜਾਬ ਦੀ ਰਾਜਨੀਤੀ ਤੇ ਗੱਲਬਾਤ ਚੱਲ ਰਹੀ ਹੈ ਪ੍ਰੋਫੈਸਰ ਅਮਰਜੀਤ ਸਿੰਘ ਜੀ ਨਾਲ ਪ੍ਰੈਸਰ ਕਰਨਾ ਹੋਵੇ ਇੱਕ ਪਾਰਟੀ ਦਾ ਕਾਂਗਰਸ ਤੋਂ ਸ਼ੁਰੂ ਕਰੀਏ ਕਾਂਗਰਸ ਦੀਆਂ ਸਰਕਾਰਾਂ ਦੇ ਪੰਜਾਬ ਦੇ ਵਿੱਚ ਕੀ ਚੰਗਾ ਹੋਇਆ ਕੀ ਮਾੜਾ ਹੋਇਆ ਤੁਹਾਡੇ ਸ਼ਬਦਾਂ ਦੇ ਵਿੱਚ ਜੇ ਆਪਾਂ ਅੱਜ ਦੀ ਰਾਜਨੀਤੀ ਨਾਲ ਰਿਲੇਟ ਕਰਨਾ ਚਾਹੀਏ ਤਾਂ ਸਭ ਤੋਂ ਜਿਹੜਾ ਆ ਆ گاਉਂ ਮੁੱਦਾ ਜਾਂ ਰਿਲੇਟ ਹੁੰਦਾ ਜਾ ਕੇ ਅ ਅਜੀਤੀ ਉਹ ਮੁੱਦਾ ਦਾ ਮੁੱਦਾ ਆਪਾਂ ਸਾਰਿਆਂ ਨੂੰ ਪਤਾ ਕਿ ਇਹਨਾਂ ਦੋਹਾਂ ਨੇ ਬਾਰੀ-ਬਾਰੀ ਗੇਮ ਚਲਾ ਕੇ ਆਪਣੀ ਵਾਗਡੋਰ ਸੰਭਾਲੀ ਰਾਜਨੀਤੀ ਦੀ ਲੇਕਿਨ ਉਸ ਖੇਡੀ ਹੋਈ ਰਾਜਨੀਤੀ ਦਾ ਇਵਜ਼ਾਨਾ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਨੂੰ ਭੁਗਤਣਾ ਪੈਣਾ ਹੁਣ ਲੇਖੋ ਕਿ 2004 ਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਹੀ ਵਾਲਾ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਸ਼ਾਤਰਤਾ ਦੇ ਨਾਲ ਆਪਣੀ ਵਿਧਾਨ ਸਭਾ ਦੇ ਵਿੱਚ ਉਹ ਜਿਹੜਾ ਐਕਟ ਬਣਾਇਆ ਜਿਹਨੂੰ ਆਪਾਂ ਕਹਿੰਦੇ ਕਿ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਬਣਾ ਦਿੱਤਾ ਹੁਣ ਇਹ ਗੱਲ ਸਾਨੂੰ ਸਮਝਣੀ ਪੈਣੀ ਆ ਸਾਰੇ ਸਰੋਤਿਆਂ ਨੂੰ ਅਤੇ ਸਾਰੇ ਪੰਜਾਬੀਆਂ ਨੂੰ ਕਿ ਇਹ ਜਿਹੜੇ ਮੁੱਦੇ ਨੇ ਚਾਹੇ ਉਹਦੇ ਚ ਸੁਪਰੀਮ ਕੋਰਟ ਇਨਵੋਲਵ ਹੈ ਜਾਂ ਨਹੀਂ ਹੈ ਚਾਹੇ ਅਸੀਂ ਕਹਿੰਨੇ ਆ ਸਾਡੀ ਜੁਡੀਸ਼ਰੀ ਬਹੁਤ ਵਧੀਆ ਜੀ ਉਹ ਸਰਕਾਰੀ ਪ੍ਰੈਸ਼ਰ ਤੋਂ ਪੜਿਆ ਪਰ ਕਈ ਫੈਸਲੇ ਇਹੋ ਜਿਹੇ ਜਾ ਉਸ ਰਾਜ ਨਾਲ ਸੰਬੰਧਿਤ ਫਾਈਲਾਂ ਜਿਹੜੀਆਂ ਉਹ ਬਾਹਰ ਕਿਉਂ ਆਉਂਦੀਆਂ ਨਹੀਂ ਹੁਣ ਉਸ ਸਮੇਂ ਤਾਂ ਕੈਪਟਨ ਸਾਹਿਬ ਬਤੌਰ ਮੁੱਖ ਮੰਤਰੀ ਰਾਤੋ ਰਾਤ ਪੰਜਾਬ ਟਰਮੀਨੇਸ਼ਨ ਬਣਾ ਕੇ ਜਿਹੜਿਆ ਉਹ ਦੇਸ਼ ਦੇ ਰਾਜ ਦੇ ਹੀਰੋ ਬਣ ਗਏ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਉਹ ਹਰਿਆਣਾ ਤੋਂ ਬਚਾ ਲਿਆ ਹਰਿਆਣੇ ਨੂੰ ਜਾਨ ਤੋਂ ਬਚਾ ਲਿਆ ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਉਹ ਜਾਨ ਤੋਂ ਬਚਾਉਣ ਤੋਂ ਪਹਿਲਾਂ ਕੈਪਟਨ ਸਾਹਿਬ ਤੁਹਾਡੀ ਪੜ੍ਹਾਈ ਲਿਖਾਈ ਮਰਜੀ ਸੀ ਜਾਂ ਤੁਸੀਂ ਅਨਪੜ੍ਹ ਸੀ ਜਾਂ ਤੁਸੀਂ ਮਤਲਬ ਤੁਹਾਨੂੰ ਪੰਜਾਬ ਦੀ ਸਮੱਸਿਆ ਨਹੀਂ ਸੀ ਪਤਾ ਜਾਂ ਤੁਹਾਨੂੰ ਪਾਣੀਆਂ ਦੀ ਤੁਸੀਂ ਫੋਟੋ ਖਿੱਚਵਾਈ ਸੀ ਆਪਣੀ ਕਹੀਂ ਫੜ ਕੇ ਇੰਦਰਾ ਗਾਂਧੀ ਦੇ ਨਾਲ ਸਾਰੇ ਪੰਜਾਬ ਦੇ ਅਖਬਾਰਾਂ ਦੇ ਵਿੱਚ ਫਰੰਟ ਪੇਜ ਤੇ ਤੁਸੀਂ ਲਵਾਈ ਸੀ ਉਦੋਂ ਮਤਲਬ ਤੁਸੀਂ ਅਨਪੜ੍ਹ ਸੀ ਜਾਂ ਤੁਹਾਨੂੰ ਪੰਜਾਬ ਦੀ ਪ੍ਰੋਬਲਮ ਬਾਰੇ ਨਹੀਂ ਸੀ ਪਤਾ ਜਿਹੜਾ ਤੁਹਾਨੂੰ ਬਾਅਦ ਦੇ ਵਿੱਚ ਲੋੜ ਪੈ ਗਈ ਕਿ ਟਰਮੀਨੇਸ਼ਨ ਆਫ ਜਿਹੜਾ ਆ ਵਾਟਰ ਜਿਹੜਾ ਉਹ ਤੁਹਾਨੂੰ ਪਾਸ ਕਰਨਾ ਪਵੇ ਲਓ ਦੂਸਰੇ ਪਾਸੇ ਅਕਾਲੀ ਹੁਣ ਅਕਾਲੀ ਕਹਿੰਦੇ ਜੀ ਅਸੀਂ ਸਾਰੀ ਦੀ ਸਾਰੀ ਜ਼ਮੀਨ ਰਾਤੋਂ ਰਾਤ ਬਪਾ ਉੱਥੇ ਪਟਵਾਰੀ ਬਿਠਾ ਕੇ ਰਾਤ ਨੂੰ 8-9 ਤੱਕ ਵਿਚਾਰੇ ਕੰਮ ਕਰ ਰਿਹਾ ਅਸੀਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜਦੋਂ ਤੁਸੀਂ ਉਹ ਹਰਿਆਣੇ ਵੱਲੋਂ ਦਿੱਤਾ ਹੋਇਆ ਚੈੱਕ ਜਿਹੜਾ ਹੁਣ ਤੁਸੀਂ ਵਾਪਸ ਕੀਤਾ ਜਦੋਂ ਤੁਸੀਂ ਉਹ ਲਿਆ ਆਪਣੀ ਪੰਜਾਬ ਸਰਕਾਰ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਇਆ ਉਦੋਂ ਤੁਸੀਂ ਕਿਸਾਨ ਨਹੀਂ ਸੀ ਉਦੋਂ ਤੁਹਾਨੂੰ ਪਾਣੀਆਂ ਦਾ ਪਤਾ ਨਹੀਂ ਸੀ ਉਦੋਂ ਤੁਹਾਨੂੰ ਇਹ ਨਹੀਂ ਸੀ ਪਤਾ ਕਿ ਜ਼ਮੀਨ ਖੱਲੇ ਜਾ ਰਿਹਾ ਪਾਣੀ ਜਾਂ ਜਦੋਂ ਅਸੀਂ ਕਿਸੇ ਹੋਰ ਨੂੰ ਸਟੇਟ ਨੂੰ ਤਾਂ ਸਾਡੇ ਰਾਜ ਦੇ ਕਿਸਾਨ ਨੇ ਉਹ ਭੁੱਖੇ ਮਰਨਗੇ ਸੋ ਇਹ ਜਿਹੜੀ ਖੇਡ ਆ ਦਾ ਅਲਟੀਮੇਟਲੀ ਪਤਾ ਹੁਣ ਲੋਕਾਂ ਨੂੰ ਚੇਤਨ ਰੂਪ ਦੇ ਵਿੱਚ ਲੱਗ ਗਿਆ ਔਰ ਇਹਨਾਂ ਦੀ ਇਹ ਜਿਹੜੀ ਗੇਮ ਆ ਉਹ ਗੇਮ ਜਿਹੜੀ ਬਾਰੋ-ਬਾਰੀ ਚਲਾਉਂਦੇ ਸੀ ਉਹਦਾ ਅਸਲੀ ਚਿੱਠਾ ਲੋਕਾਂ ਨੇ ਖੁਦ ਹੀ ਖੋਲਟਾ ਔਰ ਖੋਲਣ ਤੋਂ ਬਾਅਦ ਇਹ ਦੋਨੇ ਹੁਣ ਪਰੇਸ਼ਾਨ ਨੇ ਕਿ ਇਸ ਮੁੱਦੇ ਨੂੰ ਹੁਣ ਅੱਗੇ ਪਿਛਲੇ 4 ਮਹੀਨਿਆਂ ਦੇ ਅਖਬਾਰ ਪੜ੍ਹ ਕੇ ਦੇਖੋ ਦੋਹਾ ਬ ਮੁੱਖ ਮੰਤਰੀਆਂ ਵੱਲੋਂ ਕੈਪਟਨ ਪੁਆਇੰਟ ਮਿਲ ਜਵੇ ਦਲੀਲ ਵਿਧ ਦਲੀਲ ਵਿਧ ਲੌਜੀਕ ਜਿਹਦੇ ਵਿੱਚ ਇਹ ਕਹਿਣ ਕਿ ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁੱਦੇ ਨੂੰ ਦੇ ਵਿੱਚ ਹੱਲ ਕਰਾਂਗੇ ਤੁਹਾਨੂੰ ਕੋਈ ਨਹੀਂ ਮਿਲੇਗਾ ਸੋ ਇਹ ਜਿਹੜੀ ਕਾਂਗਰਸ ਨੇ ਅ 30 ਸੀਟਾਂ ਜਿੱਤ ਕੇ ਜਿਹੜੀ ਸ਼ੋਮਣੀ ਅਕਾਲੀ ਦਲ ਨੂੰ ਮਾਲਵਾ ਦੇ ਵਿੱਚ ਜਿਹੜੀ ਉਹ ਫਤਿਹ ਕੀਤਾ ਸੀਗਾ ਅ ਜਿੱਤ ਕੇ ਸ਼ੋਮਣੀ ਅਕਾਲੀ ਦਲ ਨੂੰ ਮਾਲਵਾ ਦੇ ਵਿੱਚ 19 ਸੀਟਾਂ ਤੇ ਸਮੀਟ ਲਿਆ ਸੀਗਾ ਕਾਂਗਰਸ ਪਾਣੀ ਦੇ ਮੁੱਦੇ ਨੂੰ ਹੁਣ ਕਿਹੜੇ ਰੂਪ ਦੇ ਵਿੱਚ ਲੋਕਾਂ 'ਚ ਲੈ ਕੇ ਜਾਈਏ ਹੁਣ ਜੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਜਾਂਦਾ ਹੈ ਤਾਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਆਪਣੇ ਮਾਲਵੇ ਇਲਾਕੇ ਦਾ ਹੁੰਦਾ ਠੀਕ ਹੈ ਸੋ 68 ਸੀਟਾਂ ਵਾਲਾ ਮਾਲਵਾ ਜਿਹੜਾ ਉਹ ਪੰਜਾਬ ਚ ਸਰਕਾਰ ਬਣਾਉਂਦਾ ਰਿਹਾ ਹਮੇਸ਼ਾ ਮਾਲਵੇ ਦਾ ਬਹੁਤ ਵੱਡਾ ਰੋਲ ਰਿਹਾ ਤੇ ਹੁਣ ਜਿਹੜਾ ਇਸ ਵਾਰੀ ਇਸ ਵਾਰੀ ਚੋਣਾਂ ਦੀਆਂ ਜਿਹੜੀਆਂ ਲੜੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਕਾਂਗਰਸ ਨੂੰ ਜਿਹੜਾ ਪਿਛਲੇ ਇਤਿਹਾਸ ਨੂੰ ਅਗਰ ਫੋਲ ਕੇ ਦੇਖੀਏ ਤਾਂ ਉਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਤੇ ਹੁਣ ਸੁਪਰੀਮ ਕੋਰਟ ਦੀ ਫਾਈਲ ਤੇ ਰਾਤੋ ਰਾਤ ਜਿਹੜਾ ਕੈਪਟਨ ਅਮਿੰਦਰ ਸਿੰਘ ਵੱਲੋਂ ਕੀਤਾ ਗਿਆ ਫੈਸਲਾ ਸੀਗਾ ਉਹ ਬਹੁਤ ਵੱਡਾ ਰੋਲ ਅਦਾ ਕਰੂਗਾ ਜੀ ਬਾਦਰ ਸਾਹਿਬ ਕਹਿੰਦੇ ਕਹਿੰਦੇ ਜੇ ਮੈਨੂੰ ਤੁਸੀਂ ਇਸ ਵਾਰ ਹਰਾਤਾ ਪਾਣੀ ਪੰਜਾਬ ਦਾ ਹਰਿਆਣਾ ਨੂੰ ਜਾਊ ਜਾਊਗਾ ਕੋਈ ਵੀ ਨਹੀਂ ਰੋਕ ਸਕਦਾ ਇਸ ਗੱਲ 'ਚ ਕਿੰਨਾ ਕੁ ਤਰਕ ਹੈ ਜਿਹੜੇ ਕਾਨੂੰਨੀ ਪੱਖ ਨੇ ਉਹ ਅਲਟੀਮੇਟਲੀ ਜਾ ਕੇ ਲਟਕ ਜਾਂਦੇ ਆ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਸਾਨੂੰ ਸਾਰਿਆਂ ਨੂੰ ਪਤਾ ਕਿ ਸੁਪਰੀਮ ਕੋਰਟ ਕਿੰਨੀ ਕੁ ਸੋਹਰਦਾ ਜਾਂ ਅਲਟੀਮੇਟਲੀ ਸੁਪਰੀਮ ਕੋਰਟ ਦੇ ਜੱਜ ਕਿੰਨੇ ਕੁ ਨਿਆਇਕ ਫੈਸਲੇ ਕਰਦੇ ਨੇ ਉਹ ਰੀਸੈਂਟ ਐਗਜ਼ਾਮਪਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਜਿਹਨੂੰ ਅਸੀਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕਹਿੰਦੇ ਕੇ ਇਨਕਾਰ ਕਰ ਦਿੱਤਾ ਕਿ ਜੀ ਇਹ ਜਿਹੜਾ ਜਿਹੜਾ ਰਿਟਨ ਲਾਈਨਾਂ ਨੇ ਉਹਦੇ ਮੁਤਾਬਕ ਜਿਹੜਾ ਆਪਣਾ ਨਜ਼ੀਬ ਜੰਗ ਸੀ ਉਹਦੀ ਹੱਥਸ਼ੇਪ ਆ ਜਿਹੜੀ ਉਹਦੀ ਜਿਹੜੀ ਉਹਨਾਂ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਆ ਉਹਦੇ ਵਿੱਚ ਅਸੀਂ ਕੋਈ ਦੀ ਰੋਲ ਨਹੀਂ ਨਿਭਾ ਸਕਦੇ ਅਜੇ ਪਰਸੋਂ ਦੀ ਇੱਕ ਐਗਜ਼ਾਮਪਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਆ ਰੀਸੈਂਟਲੀ ਜਦੋਂ ਨੋਟਬੰਦੀ ਦਾ ਫੈਸਲਾ ਆਇਆ ਤਾਂ ਕੇਟਰੀਵਾਲ ਨੇ ਸਰਕਾਰੀ ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਬਕਾਇਦਾ ਸੰਸਦ ਦੇ ਉਹ ਪਰਚੀਆਂ ਦਾਖਲ ਕੀਤੀਆਂ ਜ਼ਾਹਰ ਕੀਤੀਆਂ ਪ੍ਰੈਸ ਨੂੰ ਦਿਖਾਈਆਂ ਆਹ ਦੇਖੋ ਗੁਜਰਾਤ ਦੇ ਰਹਿ ਚੁੱਕੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਨੇ ਐਨੇ ਐਨੇ ਪੈਸੇ ਉਹਨਾਂ ਦੇ ਨਾਮ ਤੇ ਇਹਨਾਂ ਡੈਰੀਆਂ 'ਚ ਚੜੇ ਹੋਏ ਨੇ ਤੁਸੀਂ ਹੈਰਾਨ ਹੋਵੋਗੇ ਕਿ ਪਰਸੋਂ ਸੁਪਰੀਮ ਕੋਰਟ ਦੀ ਉਸ ਬੈਂਚ ਨੇ ਜਿਹੜੀ ਉਹਨੂੰ ਦੇਖ ਰਹੀ ਸੀਗੀ ਉਹਨੇ ਇਹ ਕਹਿ ਕੇ ਇਹ ਫੈਸਲਾ ਰੱਦ ਕਰ ਦਿੱਤਾ ਕਿ ਸਬੂਤਾਂ ਦੀ ਘਾਟ ਦੇ ਆਧਾਰ ਤੇ ਅਸੀਂ ਇਹ ਜਿਹੜੀ ਪਲੀਆ ਐਕਸੈਪਟ ਸਕਦੇ ਮਤਲਬ ਤੁਸੀਂ ਦੇਖੋ ਕਿ ਇਹ ਜਿਹੜੇ ਲੀਡਰ ਨੇ ਜਿਵੇਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਆ ਉਹ ਜ਼ਰੂਰ ਕਹਿੰਦੇ ਨੇ ਪਰ ਜਿਹੜਾ ਅਲਟੀਮੇਟਲੀ ਫੈਸਲਾ ਉਹ ਕਿਸੇ ਦੇ ਨਾ ਹੱਕ ਦੇ ਵਿੱਚ ਨਾ ਵਿਰੋਧ ਦੇ ਵਿੱਚ ਉਹ ਲਟਕ ਕੇ ਜਾ ਕੇ ਅੱਗੇ ਜਾ ਕੇ ਪਹਿਲਾਂ ਪਈਆਂ ਰਹਿੰਦੀਆਂ ਨੇ ਔਰ ਸਦਾ ਹੀ ਉਹ ਪਈਆਂ ਰਹਿੰਦੀਆਂ ਨੇ ਲੋਕ ਹਿੱਤ ਦੇ ਫੈਸਲੇ ਕਿਸੇ ਵੀ ਰੂਪ ਦੇ ਵਿੱਚ ਨਾ ਕੈਪਟਨ ਤੋਂ ਉਮੀਦ ਕਰਨੀ ਚਾਹੀਦੀ ਆ ਔਰ ਨਾ ਹੀ ਅਕਾਲੀ ਦਲ ਬਾਦਲ ਦੇ ਮੁੱਖ ਕਿ ਦੇਖੋ ਇੱਕ ਵਾਰੀ ਹੋਲ ਟਰਾਈ ਕਰਕੇ ਅਗਰ ਲੋਕ ਬੁੱਧੂ ਬਣਦੇ ਨੇ ਤਾਂ ਉਹਨਾਂ ਨੂੰ ਬਣਾ ਲਿਆ ਜਾਵੇ ਜੀ ਹਾਂ ਜੀ ਅੱਛਾ ਜੀ ਹੁਣ ਆਈਏ ਤੀਜੇ ਧਰਵਲ ਬਾਕੀ ਲੇਟਲੀ ਜਿਹੜੀ ਸਾਡੇ ਕਤਲੋਗਾਰਥ ਦੀ 78 ਤੋਂ 92 ਤੱਕ ਲੋਕਾਂ ਨੂੰ ਪਤਾ ਹੈ ਉਹ ਸਾਰਿਆਂ ਦੇ ਆ ਹੁਣ ਜਿਹੜੇ ਸੁਣ ਰਹੇ ਨੇ ਲੋਕਾਂ ਨੂੰ ਉਸ ਸਮੇਂ ਦਾ ਪਤਾ ਕਿਹੜੀ ਪਾਰਟੀ ਸੀ ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਕਨਸੈਪਟ ਲੋਕਾਂ ਦੇ ਵਿੱਚ ਇਹ ਆਮ ਬੰਦੇ ਦੀ ਪਾਰਟੀ ਆਮ ਬੰਦੇ ਹੀ ਇਹਦੇ ਤੇ ਕਾਬਜ਼ ਹੋਣਗੇ ਉਹਦੇ ਵਿੱਚ ਦੂਸਰੀਆਂ ਪਾਰਟੀਆਂ ਚੋਂ ਆ ਕੇ ਬੰਦਿਆਂ ਨੇ ਟਿਕਟਾਂ ਲੈ ਲਈਆਂ ਉਸ ਤੇ ਕੁਝ ਲੋਕ ਖੁਸ਼ ਨਹੀਂ ਹੈ ਕਿ ਕੁਝ ਜਿਹੜੇ ਪੁਰਾਣੇ ਕੰਮ ਕਰਦੇ ਆ ਉਹ ਬੰਦਿਆਂ ਨੂੰ ਟਿਕਟਾਂ ਨੇ ਮਿਲੀਆਂ ਉਹ ਘਰੇ ਬਹਿ ਗਏ ਇਹ ਗੱਲ ਚੱਲਦੀ ਹੈ ਪੰਜਾਬ ਦੇ ਪਾਣੀਆਂ ਦੇ ਬਾਰੇ ਕਿਸ ਦੀ ਵਾਰੋਂ ਨਹੀਂ ਦਿੱਲੀ ਦੇ ਵਿੱਚ ਬਿਆਨ ਦਿੰਦੇ ਪਾਣੀ ਚਾਹੀਦਾ ਪੰਜਾਬ ਚ ਆ ਕੇ ਕਹਿੰਦੇ ਆ ਜਾਣਾ ਨਹੀਂ ਚਾਹੀਦਾ ਆਮ ਆਦਮੀ ਪਾਰਟੀ ਦੀ ਗੁਜ਼ਾਰੀ ਹੈ ਤੋਂ ਲੈ ਕੇ ਪੰਜਾਬ ਚ ਆ ਕੇ ਦਾ ਜ਼ੋਰ ਫੜਨਾ ਤੇ ਪਿੰਡਾਂ ਦੇ ਵਿੱਚ ਲੋਕਾਂ ਦਾ ਉਹਨਾਂ ਦੇ ਨਾਲ ਤੁਰਨਾ ਇਹਨਾਂ ਦੇ ਵਾਅਦੇ ਇਹਨਾਂ ਵੱਲੋਂ ਕੀਤੀਆਂ ਬਹੁਤ ਚੀਜ਼ਾਂ ਜਿਹੜੀਆਂ ਕਹ ਰਹੇ ਨੇ ਕਿ ਅਸੀਂ ਬਹੁਤ ਜਲਦੀ ਕਰਦੇ ਤੇ ਲੋਕ ਆਸਬੰਦ ਬਹੁਤ ਨੇ ਬਹੁਤ ਵੱਡੀਆਂ ਆਸਾਂ ਜੇ ਇਹਨਾਂ ਦੀ ਸਰਕਾਰ ਬਣਦੀ ਆਸਾਂ ਕਿੰਨੀਆਂ ਪੂਰੀਆਂ ਹੋਣਗੀਆਂ ਇਹਦਾ ਦੀ ਗੁਜ਼ਾਰੀ ਬਾਰੇ ਦੱਸੋ ਜੀ ਆਮ ਆਦਮੀ ਪਾਰਟੀ ਅੱਜ ਜਿਹੜੀ ਸਿਚੁਏਸ਼ਨ ਦੇ ਵਿੱਚ ਅੱਜ ਵੀ ਘੜੀ ਦੇ ਵਿੱਚ ਪੰਜਾਬ ਹੈ ਉਹ ਬਹੁਤ ਦਰਦਨਾਕ ਔਰ ਬਹੁਤ ਹੀ ਮੰਦ ਖਾਲੀ ਦੇ ਵਿੱਚ ਡਸ ਨਾਟ ਕੋਈ ਵੀ ਨਵੀਂ ਸਰਕਾਰ ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਖੱਬੇ ਪੱਖੀਆਂ ਦੀ ਹੋਵੇ ਚਾਹੇ ਮੁੜ ਕੇ ਦੁਬਾਰਾ ਸਾਡੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਉਹਦੇ ਵਿੱਚ ਪੈਰ ਲਾਉਣਾ ਜਾਂ ਇਹਨਾਂ ਮੰਦ ਨੂੰ ਦੂਰ ਕਰਨਾ ਮੇਰੇ ਖਿਆਲ ਦੇ ਵਿੱਚ ਵਸੱਚ ਹੈ। ਦੂਜੇ ਪਾਸੇ ਆਪਾਂ ਅੱਜ ਦੀ ਸਥਿਤੀ ਸੰਦਰਭ ਦੇ ਵਿੱਚ ਦੇਖੀਏ ਦੇ ਲੋਕਾਂ ਦਾ view ਜਿਹੜਾ ਉਸ view ਦਾ ਕੁਦਰਤੀ ਵਰਤਾਰਾ ਪੰਜਾਬੀ ਦੇ ਵਿੱਚ ਇਕ ਕਹਾਵਤ ਆ ਕੇ ਹਾਰ ਕੇ ਜੇਤ ਨਾਲ ਲਾਈਆਂ ਤੇ ਜਿਹੜੀ ਸਿਚੁਏਸ਼ਨ ਅੱਜ ਦੀ ਪੰਜਾਬ ਦੀ ਆ ਉਹਨਾਂ ਕੋਲੇ ਕੋਈ ਚੁਆਇਸ ਹੀ ਨਹੀਂ ਹੈਗੀ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਆਏ ਆ ਕਿ ਅ ਕਾਟੋ ਮੈਂ ਚਲਾ ਅੱਜ ਦੀ ਵਾਰੀ ਤੂੰ ਕੱਲ ਦੀ ਵਾਰੀ ਤੂੰ ਪਰਸੋਂ ਵਾਰੀ ਤੂੰ ਹੁਣ ਉਹ ਮੁੱਦਾ ਤਾਂ ਬੇਜਾਨ ਹੋ ਗਿਆ ਲੋਕਾਂ ਨੂੰ ਪਤਾ ਲੱਗ ਅਗਰ ਮੇਰੇ ਤੇ ਕੱਲ ਨੂੰ ਕੋਈ ਡੰਡਾ ਚੜ੍ਹਦਾ ਤਾਂ ਮੈਂ ਤੈਨੂੰ ਬਚਾਉਣ ਲਈ ਖੜਾ ਅਗਰ ਅੱਜ ਤੇਰੇ ਤੇ ਕੋਈ ਡੰਡਾ ਵਰਦਾ ਤਾਂ ਕੱਲ ਨੂੰ ਚਿੰਤਾ ਨਾ ਕਰੀ ਮੈਂ ਤੇਰੀ ਟੇਕਰ ਕਰੂੰਗਾ ਸਾਡੇ ਕੋਲ ਅਨੇਕਾਂ ਐਗਜ਼ਾਮਪਲਸ ਪਈਆਂ ਨੇ ਇਹਦੀਆਂ ਖੇਤੀ ਸੰਕਟ ਨੂੰ ਲੈ ਲਓ ਕਿਸਾਨ ਪਰੇਸ਼ਾਨ ਖੇਤੀ ਪ੍ਰਧਾਨ ਸੂਬਾ ਹੋਵੇ ਔਰ ਸਾਨੂੰ ਹਰ ਸਾਲ ਅਖਬਾਰ ਦੀਆਂ ਦੇ ਨਾਲ ਅੰਦਰੋਂ ਰੁਗ ਪਿਆ ਜਾਂਦਾ ਜਦੋਂ ਪਤਾ ਲੱਗਦਾ ਕਿ ਅੱਜ ਕਿੰਨਾ ਨੇ ਜਾਨ ਲੈ ਲਈ ਅੱਜ ਚਾਰਾਂ ਨੇ ਜਾਨ ਲੈ ਲਈ ਅੱਜ ਮੈਚ ਛਾਲ ਮਾਰੀ ਅੱਜ ਸਲਫਾਸ ਖਾਲੀ ਅੱਜ ਕੁਝ ਹੋ ਗਿਆ ਖੇਤੀ ਪ੍ਰਧਾਨ ਸੂਬਾ ਹੋਵੇ ਔਰ ਸਾਡੇ ਰਾਜ ਦਾ ਮੁੱਖ ਮੰਤਰੀ ਖੁਦ ਕਿਸਾਨ ਪਰਵਾਰ ਨਾਲ ਸਮੰਧਿਤ ਹੋਵੇ ਔਰ ਤੁਸੀਂ ਪਿਛਲੇ ਛੇ ਮਹੀਨਿਆਂ ਦੇ ਅਖਬਾਰ ਚੱਕ ਦੇਖ ਲਓ ਇਹਨਾਂ ਦੋਨਾਂ ਪਿਓ ਪੁੱਤਾਂ ਦੇ ਵਿੱਚੋਂ ਕਿਸੇ ਇੱਕ ਦਿਨ ਵੀ ਕੋਈ ਇੱਕ ਖਬਰ ਮੈਨੂੰ ਐਸੀ ਸੁਣਾ ਦਿਓ ਜਿਹੜੀ ਇਹ ਕਹਿੰਦੀ ਹੋਵੇ ਨਾਲ ਇਸ ਪਰਿਵਾਰ ਨੂੰ ਇਸ ਪਰਿਵਾਰ ਦੇ ਮੁੱਖ ਮੰਤਰੀ ਨੂੰ ਇਸ ਪਰਿਵਾਰ ਦੇ ਉਪ ਮੁੱਖ ਮੰਤਰੀ ਨੂੰ ਕੋਈ ਦੁੱਖ ਹੋਇਆ ਹੋਵੇ ਤੁਹਾਨੂੰ ਇੱਕ ਵੀ ਨਹੀਂ ਮਿਲੂਗੀ ਪਤਾ ਨਹੀਂ ਇੱਕ ਕਿੱਦਾਂ ਦਾ ਮਤਲਬ ਸਮਾਚਾਰ ਚੱਲ ਰਿਹਾ ਪੰਜਾਬ ਦੇ ਕਿਸਾਨ ਦੇ ਉੱਤੇ ਦੂਸਰੇ ਪਾਸੇ ਆਈਏ ਨਸ਼ਾ ਨਸ਼ਟੇ ਦਾ ਮੁੱਦਾ ਖ਼ਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਹਾਲਾਂਕਿ ਇਸ ਸਮੇਂ ਦਾ ਜਿਹੜਾ ਮੁੱਦਾ ਉਹ ਬਾਕੀ ਦੀਆਂ ਪਾਰਟੀਆਂ ਵੀ ਆਪਣੇ ਆਪਣੇ ਰੂਪ ਦੇ ਵਿੱਚ ਅਠਾਰੀਆਂ ਨੇ ਪਰ ਜਿਸ ਰੂਪ ਦੇ ਵਿੱਚ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਨੇ ਉਠਾਇਆ ਔਰ ਉਠਾ ਕੇ ਲੋਕਾਂ ਜੇ ਆਪਾਂ 214 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਜਿਹੜਾ ਮੁੱਦਾ ਸੀਗਾ ਆਪਾਂ သိਏ ਤਾਂ ਇਸ ਮੁੱਦੇ ਤੇ ਸਰਕਾਰ ਦੀ ਦਲੀਲ ਸੀ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਪੈਦਾ ਹੀ ਨਹੀਂ ਹੁੰਦਾ ਅੱਜ ਰੀਸੈਂਟਲੀ ਅੱਜ ਹੀ ਸਵੇਰੇ ਮੈਂ ਦੇਖਿਆ ਉਹ ਮੇਰੇ ਮਿੱਤਰ ਵੀ ਨੇ ਮਤਲਬ ਕੀ ਕਿ ਜਿਹੜੇ ਨੌਜਵਾਨੀ ਆ ਉਹ ਨਾ ਸਿਰਫ ਨਸ਼ੇ ਤੋਂ ਤੰਗ ਆ ਬਲਕਿ ਜਿਹੜੀ ਬੇਰੋਜ਼ਗਾਰੀ ਆ ਉਹਦੇ ਤੋਂ ਵੀ ਤੰਗ ਆ ਆਰਥਿਕ ਬਦਹਾਲੀ ਜਿਹੜੀ ਆ ਕਿ ਕਿੱਦਾਂ ਬਿਲਡਿੰਗਾਂ ਜਿਹੜੀਆਂ ਪੰਜਾਬ ਦੀਆਂ ਗਿਰਵੀ ਰੱਖ ਕੇ ਲੋਨ ਲੈ ਲੈ ਕੇ ਪੰਜਾਬ ਸਰਕਾਰ ਜਿਹੜੀ ਉਹ ਆਪਣੇ ਖਰਚੇ ਚਲਾ ਰਹੀ ਆ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਡੀਏ ਪੱਤੇ ਹੋਰ ਬਕਾਇਆ ਨਹੀਂ ਦਿੱਤਾ ਜਾ ਰਿਹਾ ਰਿਟਾਇਰਮੈਂਟ ਤੋਂ ਬਾਅਦ ਜਿਹੜੇ ਆ ਆ ਬੰਦਿਆਂ ਨੂੰ ਲਾਭ ਮਿਲਦੇ ਨੇ ने ਉਹ ही पार्टियां ਨੇ ਕਿੰਨੀਆਂ ਹੀ ਪਾਰਟੀਆਂ ਦੀਆਂ ਜਿਹੜੀਆਂ ਪੇਮੈਂਟਸ ਉਹ ਪੈਂਡੀਆਂ ਪਈਆਂ ਉਹ ਸਾਰੀਆਂ ਚੀਜ਼ਾਂ ਜੁੜ ਕੇ ਇੱਕ ਆਸ ਬਣਾਉਂਦੀਆਂ ਨੇ ਸਾਰੇ ਲੋਕਾਂ ਨੂੰ ਕਿ ਸ਼ਾਇਦ ਯਾਰ ਇਸ ਰੂਪ ਦੇ ਵਿੱਚ ਜਿਸ ਰੂਪ ਦੇ ਵਿੱਚ ਅਸੀਂ ਔਰ ਉਹ ਜਿਹੜੀ ਨਵੇਂ ਹੋਣ ਦੀ ਪ੍ਰਕਿਰਤੀ ਆ ਜਾਂ ਹੋਰ ਕੋਈ ਜਿਹੜਾ ਮਤਲਬ ਸਾਧਨ ਉਹਨਾਂ ਦੇ ਸਾਹਮਣੇ ਨਜ਼ਰ ਨਹੀਂ ਆਉਂਦਾ ਤੇ ਕੋਈ ਨਹੀਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਐਸਿਆਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ छवि ਜਿਹੜੀ ਆ ਉਹ ਲੋਕਾਂ ਦੇ ਵਿੱਚ ਬਹੁਤੀ ਵਧੀਆ ਨਹੀਂ ਹੈ ਪਰ ਮੈਂ ਇਹ ਗੱਲ ਯਕੀਨਨ ਕਹਿ ਸਕਦਾ ਕਿ ਉਸ ਵੇਵ ਦੇ ਵਿੱਚ ਲੋਕ ਇਤਨੇ ਕੁ ਚੇਤਨਣੇ ਕਿ ਉਹ ਲੋਕ ਹਾਰਨਗੇ ਜਿਨ੍ਹਾਂ ਨੇ ਗਲਤ ਉਹ ਲੋਕ ਜਿੱਤਣਗੇ ਜਿਨ੍ਹਾਂ ਦੀ ਚੋਣ ਇਸ ਪਾਰਟੀ ਨੇ ਸਹੀ ਰੂਪ ਕੀਤੀ ਗਿਣਤੀ ਉਹਦੀ ਪਰਸੈਂਟੇਜ ਆਫ VOTER ਜਿਹੜੀ ਟੋਟਲ ਕੈਲਕੂਲੇਸ਼ਨ ਆਫ ਦੇ ਵਿੱਚ ਉਹ ਬਹੁਤ ਜ਼ਿਆਦਾ ਔਰ ਉਹ ਇਸ ਗੱਲ ਨੂੰ ਬਹੁਤ ਭਲੀ ਭੰਤ ਜਾਣਦਾ ਹੈ ਔਰ ਉਹਦਾ ਜਿਹੜਾ ਫੈਸਲਾ ਹੋਊਗਾ ਉਹ ਬਹੁਤ ਹੀ ਸੋਚਿਆ ਹੋਊਗਾ ਕਿਉਂਕਿ ਬਹੁਤ ਸਾਰੀ ਮਾਰ ਜਿਹੜੀ ਆ ਉਹ ਅਸਲੀ ਪਿਛਲੇ ਤਿੰਨ ਇਸ ਬਾਰੇ ਪੂਰਾ ਜਾਗਰੂਕਾ ਕਿ ਉਹਨੇ ਕਿਸ ਪਾਰਟੀ ਵੋਟ ਦੇਣਾ ਜੀ ਹਾਂ ਲੈ ਲਈ ਜੀ ਬਾਤ ਸੌਣਿਆ ਹੁਣੇ ਪ੍ਰੋਫੈਸਰ ਅਮਰਜੀਤ ਸਿੰਘ ਜੀ ਨਾਲ ਗੱਲਬਾਤ ਪੰਜਾਬ ਦੀ ਰਾਜਨੀਤੀ ਬਾਰੇ ਚੱਲ ਰਹੀ ਪੰਜਾਬ ਦੀ ਰਾਜਨੀਤੀ ਬਾਰੇ ਗੱਲਬਾਤ ਚੱਲ ਰਹੀ ਹੈ ਅੱਛਾ ਜੀ ਕੁਝ ਟੌਂ ਖਲੇ ਨੇ ਬਾਹਰ ਲੋਕਾਂ ਦੇ ਵੋਟਾਂ ਤਾਂ ਚਲੋ ਪੈ ਜਾਣਗੀਆਂ ਜੇਬ ਜੀਆਂ ਜਿਨ੍ਹਾਂ ਨੇ ਜੀ ਪਾਉਣੀ ਹੈ ਇੱਕ ਤਾਂ ਲੋਕਾਂ ਨੂੰ ਬਾਹਰ ਬੈਠਿਆਂ ਨੂੰ ਉਹ ਉਤਸ਼ਾਹ ਜਿਹੜਾ ਉਤਸ਼ਾਹ ਉਹ ਕਿਤੇ ਕਿਤੇ ਹਿੰਸਕ ਹੋ ਰਿਹਾ ਪਿਛਲੇ ਦਿਨੀ ਕਾਨਵਾਈ ਤੇ ਇੱਕ ਦੇ ਡੰਮਾਰੇ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵੱਲ ਕਿਸ ਨੇ ਜੁੱਤੀ ਭਗਾ ਮਾਰੀ ਹੁਣ ਉਹ ਸੇਮ ਬੰਦਾ ਲੰਬੀ ਤੋਂ ਉਮੀਦਵਾਰ ਬਣ ਰਿਹਾ ਤੇ ਅਮਰੀਕ ਜਨਾਲੇ ਦਾ ਉਹ ਭਾਈ ਹੈ ਟਕਸਾਲ ਦਾ ਮੁਖੀ ਹੈ ਜਿਹੜਾ ਇਹ ਇਹ ਟਕਸਾਲਾਂ ਦੇ ਦੀ ਸ਼ਰ ਪਤਾ ਹੈ ਕਿ ਜਿਆਦਾ ਉਸਨੇ ਹਮਲਾ ਕੀ ਫੜੜੀਆਂ ਵਾਲੇ ਤੇ ਹਲੇ ਤੱਕ ਉਸ ਨੂੰ ਫੜਨੀ ਹੋਇਆ ਇਹ ਜੀ ਇਹ ਜਿਹੜਾ ਹਿੰਸਕ ਹੋ ਰਿਹਾ ਹੈ ਕਿਸੇ ਗਲਤ ਪਾਸੇ ਦੀ ਸੂਚਨਾ ਤਾਂ ਨਹੀਂ ਦੇ ਰਿਹਾ ਤੁਸੀਂ ਇਸ ਨੂੰ ਬਿਲਕੁਲ ਜੀ ਵੈਸੇ ਤਾਂ ਆ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਨਿੰਦਾ ਕਰਨੀ ਚਾਹੀਦੀ ਹੈ ਕਿ ਕੋਈ ਵੀ ਹਿੰਸਕ ਰੂਪ ਜਿਹੜਾ ਚਾਹੇ ਕਿਸੇ ਤੇ ਵੀ ਆ ਉਹ ਖਾਸ ਕਰਕੇ ਚੋਣ ਜਾਬਤਾ ਲੱਗਣ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਵੋਟਰ ਦੇ ਹੱਥ ਦੇ ਵਿੱਚ ਜਿਹੜੀ ਤਾਕਤ ਹੈ ਕਿਸੇ ਵੀ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਉਹ ਹੈ ਕਿ ਤੁਸੀਂ ਇੱਕ ਸਰਟਨ ਟਾਈਮ ਤੋਂ ਬਾਅਦ ਜਿਹੜੀ ਆ ਉਹ ਆਪਣਾ ਵੋਟ ਦਾ ਅਧਿਕਾਰ ਵਰਤ ਕੇ ਉਸ ਸਰਕਾਰ ਨੂੰ ਲਾਂਬੇ ਕਰ ਸਕਦੇ ਹੋ ਇਹ ਇਥੇ ਸਭ ਤੋਂ ਵੱਡੀ ਸਮੱਸਿਆ ਹਜਿਚੀ ਇਹ ਹੈ ਕਿ ਤੁਸੀਂ ਪਿਛਲੇ 10 ਸਾਲ ਲੋਕਾਂ ਨੂੰ بار-बार ਆਪਣੀਆਂ ਸਰਕਾਰੀ ਸਾਧਨਾਂ ਨੂੰ ਵਰਤ ਕੇ ਆਪਣੀ ਸਰਕਾਰੀ ਫੋਰਸ ਨੂੰ ਵਰਤ ਕੇ ਸਰਕਾਰੀ ਜਿਹੜੀ ਪੈਸੇ ਨੂੰ ਵਰਤ ਕੇ ਆਰਥਿਕ ਸਾਧਨਾਂ ਨੂੰ ਵਰਤ ਕੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਕਹੀ ਜਾਂਦੇ ਹੋ ਕਿ ਅਸੀਂ ਵਿਕਾਸ ਕੀਤਾ ਅਸੀਂ ਵਿਕਾਸ ਕਰ ਰਹੇ ਹਾਂ ਅਸੀਂ ਵਿਕਾਸ ਦੇ ਢੇਰ ਲਾ ਦੇਾਂਗੇ ਅਸੀਂ ਦੇਸ਼ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਤੇ ਹੁਣ ਅਲਟੀਮੇਟਲੀ ਜਦੋਂ ਲੋਕ ਚੇਤਨ ਹੋਗੇ ਜਦੋਂ ਲੋਕ ਜਾਗਰੂਕ ਹੋਗੇ ਪਹਿਲਾਂ ਲੋਕ ਜਾਗਰੂਕ ਸੀ ਉਹਨਾਂ ਨੂੰ ਇਹ ਪਤਾ ਨੀ ਸੀ ਕਿ ਚੋਣ ਜਾਬਤਾ ਲੱਗਣ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ ਕਿ ਅਸੀਂ ਉਸ ਲੀਡਰ ਨੂੰ ਉਸ ਨੇਤਾ ਨੂੰ ਕੁਐਸਚਨਿੰਗ ਕਰ ਸਕਦੇ ਹਾਂ ਉਹ ਜਿਹੜਾ ਕੁਐਸਚਨਿੰਗ ਵਾਲਾ ਮਸਲਾ ਵਾ ਉਹ ਇਸ ਰੂਪ ਦੇ ਵਿੱਚ ਆ ਰਿਹਾ ਕਿ ਤੁਹਾਨੂੰ ਮੈਂ ਇਹ ਕਹਿੰਦਾ ਰਹਾ ਪੂਰੇ 10 ਸਾਲ ਕਿ ਮੈਂ ਤੁਹਾਡੀਆਂ ਨਾਲੀਆਂ ਪੱਕੀਆਂ ਕਰਤੀਆਂ ਮੈਂ ਤੁਹਾਡੀਆਂ ਪੈਨਸ਼ਨਾਂ ਲਾਤੀਆਂ ਮੈਂ ਤੁਹਾਡਾ ਆ ਕਰ ਦਿੱਤਾ ਪਰ ਅਲਟੀਮੇਟਲੀ ਹੋਇਆ ਕੁਛ ਵੀ ਨੀ ਔਰ ਤੁਸੀਂ ਉਹੀ ਡਾਇਲੌਗਸ ਉਹੀ ਵਾਲਾ ਮੁੱਦਾ ਆਪਣੀ ਚੋਣ ਰੈਲੀ ਤੇ ਵਿੱਚ ਵੀ ਕਹਿ ਰਹੇ ਹਾਂ ਕਿ ਹੁਣ ਤੱਕ ਤਾਂ ਵਿਕਾਸ ਕੀਤਾ ਹੀ ਆ ਜਿਹੜਾ ਹੁਣ ਅੱਗੇ ਹੋਰ ਕਰਾਂਗੇ ਉਹਦਾ ਤੁਸੀਂ ਮਤਲਬ ਕਿੰਤੂ ਪ੍ਰਾਂਤੀ ਨਹੀਂ ਕਰ ਸਕਦੇ ਉਹਦੇ ਤਾਂ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਸਾਹਮਣੇ ਪ੍ਰਸ਼ਨ ਪੈਦਾ ਹੁੰਦਾ ਔਰ ਪ੍ਰਸ਼ਨ ਕਰਦੇ ਆ ਹਰ ਇੱਕ ਨੇਤਾ ਨੂੰ ਲੋਕੀ ਕਰਨ ਲੱਗੇ ਨੇ ਕਿ ਪਾਈ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਚੈੱਕ ਤੁਸੀਂ ਭੇਜੇ ਸੀ ਉਹ ਤਾਂ ਰਸਤੇ 'ਚ ਹੀ ਰਹਿ ਗਏ ਸਾਡੇ ਪਿੰਡ ਤੱਕ ਤਾਂ ਪਹੁੰਚੇ ਤੇ ਅਗਰੋਂ ਤੁਹਾਨੂੰ ਦੇਵੇ ਤੇ ਅਲਟੀਮੇਟਲੀ ਗੁੱਸਾ ਤੇ ਆਉਣ ਰਹੀ ਹੈ ਤੇ ਦੂਸਰੀ ਗੱਲ ਜਿਹੜੀ ਹਿੰਸਾ ਵਾਲੀ ਘਟਨਾ ਜਿਹੜੀ ਬੀਤੇ ਹਫ਼ਤੇ ਹੋਈ ਆ ਉਹਦਾ ਲਿੰਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਉਹਨਾਂ ਘਟਨਾਵਾਂ ਦੇ ਨਾਲ ਬੰਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜੀ ਸਾਡੇ ਸਰੂਪ ਸਾਈਡ ਸਿਰਗੂ ਗੰਸਰ ਦੀ ਦੇ ਰੂਪਾਂ ਦੀ ਬੇਅਦਬੀ ਜਿਹੜੀ ਹੈ ਇੱਕ ਨਹੀਂ ਦੋ ਨਹੀਂ ਅਨੇਕਾਂ ਹੋਈਆਂ ਹੁਣ ਜੇਲ੍ਹ ਵਾਲੀ ਦੀ ਦੀ ਪੁਲਿਸ ਇੰਨੀ ਕੁ ਐਕਟਿਵ ਹੋ ਗਈ ਕਿ ਕਾਰ ਫੜ ਲਈ ਤੀਜਾ ਫੜ ਲਿਆ ਚੌਥਾ ਫੜ ਲਿਆ ਜਿਹੜੇ ਐਕਚੁਅਲ ਬੰਦੇ ਸੀ ਉਹ ਫੜੇ ਨਹੀਂ ਜਾ ਰਹੇ ਇਧਰ ਜਿਹੜੀਆਂ ਘਟਨਾਵਾਂ ਸੀ ਕਨੈਕਟ ਕਰੀਏ ਸਭੂ ਗ੍ਰਾਮ ਸਾਹਿਬ ਦੀ ਬੇਅਦਬੀ ਦੀਆਂ ਉਹਨਾਂ ਦੇ ਵਿੱਚ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦਾ ਸਿਆਸੀ ਰੰਗ ਐਸਾ ਉੱਭਰ ਰਿਹਾ ਪਤਾ ਮੈਂ ਬਿਲਕੁਲ ਹੱਕ ਨਹੀਂ ਇਸ ਗੱਲ ਦੇ ਵਿੱਚ ਕੋਈ ਵੀ ਜਿਹੜੀ ਪਾਰਟੀ ਜਾਂ ਕਿਸੇ ਵੀ ਪਾਰਟੀ ਦਾ ਵਰਕਰ ਹਿੰਸਾ ਦਾ ਰੂਪ ਲਵੇ ਜਾਂ ਆਉਣ ਲਵੇ ਪਰ ਇੱਕ ਸ਼ੱਕ ਹਰੇਕ ਦੇ ਮਨ ਦੇ ਵਿੱਚ ਆ ਕਿ ਉਹ ਜਿਹੜੇ ਗੈਂਗਸਟਰ ਜਿਹੜੇ ਇਹਨਾਂ ਨੇ ਹੁਣ ਤੱਕ 10 ਸਾਲਾਂ ਦੇ ਵਿੱਚ ਚਾਹੇ ਉਹ ਨਸ਼ੇ ਦੇ ਰੂਪ ਦੇ ਵਿੱਚ ਚਾਹੇ ਨਸ਼ਾ ਤਸਕਰੀ ਦੇ ਰੂਪ ਦੇ ਵਿੱਚ ਚਾਹੇ ਆਪਣੀ ਰੇਤਾ ਬਜਰੀ ਦੇ ਮਾਫੀਆ ਦੇ ਰੂਪ ਦੇ ਵਿੱਚ ਚਾਹੇ ਉਹ ਟਰਾਂਸਪੋਰਟ ਦੇ ਮਾਫੀਆ ਦੇ ਵਿੱਚ ਜਿਹੜੇ ਪਾਲੇ ਹੋਏ ਨੇ ਕਮਿਸ਼ਨ ਨੇ ਔਰ ਜਿਹੜੀਆਂ ਰਾਜ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਵੀ ਇਹ ਸ਼ੱਕ ਜ਼ਾਹਰ ਕੀਤਾ ਕਿ ਉਹ ਜਿਹੜੇ ਗੈਂਗਸਟਰ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਬਕਾਇਦਾ ਐਕਟਿਵ ਰਹੇ ਨੇ ਇਹਨਾਂ ਦੀ ਛਤਰਛਾਇਆ ਹੇਠ ਉਹ ਕੋਈ ਨਾ ਕੋਈ ਰੂਪ ਕੋਈ ਨਾ ਕੋਈ ਸਿਨਸਕ ਰੂਪ ਓ ਇਸ ਚੋਣ ਨੂ ਪ੍ਰਭਾਵਿਤ ਕਰਨ ਲਈ ਵਰਤ ਸਕਦੇ ਨੇ ਜੀ ਹ ਜੀ ਅੱਛਾ ਜੀ ਇੱਕ ਹੋਰ ਕੋਲ ਤਿੰਨ ਮਿੰਟ ਦਾ ਸਮਾਂ ਹੈ ਮੇਰੇ ਦੋ ਸਵਾਲ ਨੇ ਤੇ ਇੱਕ ਸਵਾਲ 1 ਮਿੰਟ ਦੇ ਵਿੱਚ ਮੈਨੂੰ ਇਸ ਦਾ ਜਵਾਬ ਦਿਓ ਕਿ ਜਦ ਗੱਲ ਪੰਜਾਬ 'ਚ ਚੱਲਦੀ ਹੈ ਤੇ ਉਸੇ ਸਮੇਂ ਇਲੈਕਟ੍ਰੋਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਐ ਐਮ ਉਹਦੀ ਟੈਂਪਰਿੰਗ ਦੀ ਗੱਲ ਚੱਲਦੀ ਹੈ ਮੂਲਾ ਬੰਦਾ ਕਹਿੰਦਾ ਉਹ ਤਾਂ ਸਰਵਰ ਜਿਹੜੇ ਨੇ ਵਾਈਟ ਹਾਊਸ ਦੇ ਡੈਮੋਕ੍ਰੇਟਸ ਦੀ ਕੰਪਾਰਟੀਆਂ ਦੇ ਹੈਕ ਕਰ ਲਏ ਉਹਨਾਂ ਨੇ ਇਹ ਤਾਂ ਮਸ਼ੀਨ ਹੈ ਕੁਛ ਨਹੀਂ ਇਹ ਹੋ ਸਕਦੀ ਜੀ ਹੈਕ ਜਿਹੜੀਆਂ ਮਸ਼ੀਨਾਂ ਹੀ ਇਹ ਜੇ ਟੈਂਪਰਡ ਹੋ ਸਕਦੀਆਂ ਈਵੀਐਮ ਜਿੰਨਾਂ ਦਾ ਸੰਬੰਧ ਜਿਹੜੀਆਂ ਮਸ਼ੀਨਾਂ ਇੰਡੀਆ ਦੇ ਵਿੱਚ ਨੇ ਉਹਨਾਂ ਨੂੰ ਇੰਡੀਵਿਜੂਅਲੀ ਪਰਸਨਲੀ ਫਿਜ਼ੀਕਲੀ ਟੈਂਪਰਡ ਕੀਤਾ ਜਾ ਸਕਦਾ ਪਰ ਜਿਹੜੀਆਂ ਮਸ਼ੀਨਾਂ ਆਪਾਂ ਇੱਥੇ ਵਿਦੇਸ਼ਾਂ ਦੀ ਧਰਤੀ ਤੇ ਯੂਜ਼ ਕਰ ਸਕਦੇ ਆ ਉਹਨਾਂ ਨੂੰ ਟੈਂਪਰਡ ਹੋ ਸਕਦਾ ਜੀ ਹੂੰ ਇਹ ਅਖੀਰ ਤੇ ਵਿੱਚ ਜਿਵੇਂ ਲੋਕਾਂ ਦਾ ਜਿਹੜਾ ਇਹ ਉਤਸ਼ਾਹ ਹੈ ਕਿਉਂਕਿ ਜੀ ਅਸੀਂ ਕਈ ਵਾਰ ਸਾਨੂੰ ਸਾਡਾ ਸੁਭਾਅ ਸਾਨੂੰ ਹੀਰ ਤਾਂ ਸੋਹਣੀ ਲੱਗਦੀ ਆ ਪਰ ਉਹ ਗਵਾਂਢੀ ਦੇ ਘਰੇ ਲੱਗਦੀ ਆਪਣੇ ਘਰੇ ਨਹੀਂ ਲੱਗਦੀ ਸੱਚ ਸਾਨੂੰ ਸੋਨਾ ਬਹੁਤ ਵਧੀਆ ਲੱਗਦਾ ਪਰ ਸੱਚ ਨੂੰ ਜਦ ਆਉਂਦੀ ਆ ਸੱਚ ਨੂੰ ਅਸੀਂ ਫਾਂਸੀ ਜਦ ਆਉਂਦੀ ਆ ਫਿਰ ਅਸੀਂ ਚੁੱਪ ਕਰ ਜਾਂਦੇ ਆ ਉਤਸ਼ਾਹ ਪਿੰਡਾਂ ਦਾ لوکاں نوں کہرنا بک بک پارٹیاں دے بندے چاہے کانگریس دے اکالیاں دے انہاں نوں کہرنا مینوں نہیں پتہ او اکٹھ کینا دا پر لوکاں دا ਵਿਦਰੋਹ اے اے ਵਿਦਰੋਹ لوکاں دا پارٹی دی کسے لئی وی جو عام آدمی پارٹی ਵਿਦਰੋਹ جیڑا لوکاں دا دونوں پارٹی دے لوک دکھی نیں او ووٹاں وچ بدل جائے گا لگدا تہانوں جیڑی ویو اج دی چل رہی اے اس ویو تو امید اے کیتی جا رہی ਕੇ ਬਹੁਮਤ ਜਿਹੜਾ ਉਹ ਬਹੁਤ ਹੀ ਸਹਿਜ ਹੀ ਸਹਿਜ ਹੀ ਆਮ ਪਾਰਟੀ ਦੇ ਹਿੱਸੇ ਆ ਜਾਏਗਾ ਪਰ ਹਜੇ ਬਹੁਤ ਦਿਨ ਨੇ ਸੋ ਅੱਜ ਦੀ ਘੜੀ ਦੇ ਵਿੱਚ ਹਜੀਰ ਜੀ ਕੋਈ ਸਮੀਕਰਨ ਬਣਾਉਣੀ ਜਾਂ ਕੋਈ ਸਮੀਕਰਨ ਸਾਂਝੀ ਕਰਨੀ ਮੇਰੇ ਖਿਆਲ ਦੇ ਵਿੱਚ ਟੂ अर्ਲੀ ਆ ਕਿਉਂਕਿ ਇਹ ਚੋਣਾਂ ਦਾ ਪ੍ਰਕਿਰਿਆ ਜਿਹੜੀ ਹੈ ਚੋਣਾਂ ਦਾ ਪ੍ਰਕਰਣ ਐਸਾ ਵਾ ਕਿ ਕੱਲ ਨੂੰ ਪਤਾ ਨਹੀਂ ਕਿਸ ਲੀਡਰ ਦਾ ਕਿਹੜਾ ਮੁੱਦਾ ਜਾਂ ਕਿਹੜੀ ਗਲਤੀ ਜਾ ਕਿਹੜਾ ਮਤਲਬ ਉਹਦਾ ਜਿਹੜਾ ਰੂਪ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਰੱਖ ਦੇਣਾ ਜਿਹੜਾ ਗੱਲ ਆਪਾਂ ਕਰਕੇ ਹਟਿਆ ਕਿ ਨਦੀਆਂ ਦਾ ਪਾਣੀ ਆ ਜਿਹੜਾ ਕਾਨੂੰਨ ਵਿਵਸਥਾ ਖੇਤੀ ਸੰਕਟ ਨਸ਼ਾ ਆਰਥਿਕ ਮਨਹਾਲੀ ਮਾਫੀਆ ਵਿਕਾਸ ਨੋਟਬੰਦੀ ਇਹ ਸਾਰੀਆਂ ਚੀਜ਼ਾਂ ਮੌਜੂਦਾ ਸਰਕਾਰ ਦੇ ਖਿਲਾਫ ਜਾਂਦੀਆਂ ਨੇ ਉਸ ਖਿਲਾਫ ਬਾਜ਼ੀ ਦੇ ਵਿੱਚੋਂ ਉਸ ਵਿਰੋਧ ਦੇ ਵਿੱਚੋਂ ਡੈਫੀਨਿਟਲੀ ਆ ਕਿ ਉਹ ਵਿਦਰੋਹ ਵੋਟਾਂ ਦਾ ਰੂਪ ਜ਼ਰੂਰ ਲਊਗਾ ਅੱਗੇ ਜੀ ਮੇਰਾ ਇਹ ਮੰਨਣਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਲੀਡਰ ਦੀ ਚੰਗਿਆਈ ਕਿਸ ਰੂਪ ਦੇ ਵਿੱਚ ਸਾਹਮਣੇ ਆਉਂਦੀ ਆ ਉਹਦੇ ਦੇਖਣ ਲਈ ਸਾਨੂੰ ਅਜੇ ਹੋਰ ਵਾਚ ਕਰਨਾ ਪਊਗਾ ਸਾਨੂੰ ਇੰਤਜ਼ਾਰ ਕਰਨਾ ਪਊਗਾ ਅਖੀਰ ਦੇ ਵਿੱਚ ਜੀ ਕਰਦੇ ਇਸ ਪੂਰਾ ਮੁਲਾਂਕਣ ਅਖੀਰ ਦੇ ਵਿੱਚ ਆਮ ਲਿਸਨਰ ਜਿਹੜੇ ਇੱਥੇ ਬੈਠੇ ਸੁਣਦੇ ਆ ਜਾਂ ਕਿਤੇ ਵੀ ਦੂਰ ਆਸਟ੍ਰੇਲੀਆ ਯੂਕੇ ਬੈਠੇ ਆ ਉਹਨਾਂ ਨੂੰ ਕਿਉਂਕਿ ਅਸੀਂ ਪਿੱਛੇ ਜੁੜੇ ਹੋયા ਬਹੁਤ ਲੋਕ ਜਾ ਰਹੇ ਨੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋ ਅਖੀਰ ਦੇ ਵਿੱਚ ਮਨ ਨੂੰ ਸਨੇਹਾ ਇੱਕੋ ਹੀ ਆ ਜੀ ਵੈਸੇ ਤਾਂ ਮੈਂ ਇਹਦੀ ਵੱਡੀ ਸ਼ਖਸੀਅਤ ਨਹੀਂ ਕਿ ਕੋਈ ਸਨੇਹਾ ਦੇ ਸਕਾਂ ਪਰ ਜਿਹੜਾ ਲੋਕਤੰਤਰ ਦਾ ਸਿਧਾਂਤ ਡਸ ਨਾਟ ਮੈਟਰ ਕਿ ਕਿਹੜੀ ਕਰੋ ਉਸ ਲੀਡਰ ਦਾ ਪਿਛੋਕੜ ਦੇਖੋ ਉਸ ਲੀਡਰ ਨੇ ਉਸ ਇਲਾਕੇ ਦੇ ਵਿੱਚ ਜਰ ਜਿਸ ਇਲਾਕੇ ਨੂੰ ਉਹ ਸੰਬੰਧ ਰੱਖਦਾ ਉਹਨੇ ਕਿਹੜੇ ਕਿਹੜਾ ਯੋਗਦਾਨ ਉੱਥੋਂ ਦੇ ਸਮਾਜ ਲਈ ਉੱਥੋਂ ਦੇ ਆਰਥਿਕ ਵਿਕਾਸ ਲਈ ਉੱਥੋਂ ਦੇ ਲੋਕਾਂ ਲਈ ਉਹਨੇ ਪਾਇਆ ਅਗਰ ਉਹਨੇ ਪਾਇਆ ਤਾਂ ਡੈਫੀਨਿਟਲੀ ਡਸ ਨਾਟ ਮੈਟਰ ਕਿਸ ਪਾਰਟੀ ਨੂੰ ਬਿਲੋਂਗ ਕਰਦਾ ਉਹਨੂੰ ਵੋਟ ਦਿਓ ਬਾਕੀ ਰਹੀ ਜਿਹੜੀ ਨਵੇਂ ਬਹੁਤਾ ਜ਼ਿਆਦਾ ਜਾਣਦੇ ਨੇ ਮੇਰੇ ਨਾਲੋਂ ਕਿ ਇਹ ਬੰਦਾ ਕਿਹੋ ਜਿਹਾ ਸੋ ਉਹਦੀ ਪਛਾਣ ਉਹਦੀ ਵਿਅਕਤੀਗਤ ਪਛਾਣ ਸੋਚ ਨੂੰ ਵੋਟ ਪਾਇਓ ਨਾ ਕਿ ਕਿਸੇ ਪਾਰਟੀ ਨੂੰ ਥੈਂਕ ਯੂ ਹਾਜੀ ਜੀ ਧੰਵਾਦ ਜੀ ਤੁਹਾਡੇ ਸਮੇਂ ਲਈ ਤੇ ਨੇ ਹਫਤੇ ਹੋਰ ਰਹਿੰਦੇ ਆ ਵੋਟਾਂ ਤੱਕ ਇੱਕ ਵਾਰ ਮੈਂ ਹੋਰ ਤੁਹਾਨੂੰ ਕਿਛ ਚ ਦਵਾਂਗਾ ਇੱਕ ਵੀ ਇੱਕ ਛੱਡ ਕੇ ਤੇ ਫਿਰ ਆਪਾਂ ਇਸ ਦਾ ਮੁਲਾਂਕਣ ਕਰਾਂਗੇ ਅੱਜ ਤੋਂ ਦੱਸਾਂ ਬਹੁਤ-ਬਹੁਤ ਥੈਂਕ ਜੀ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਦੇਸ਼ ਦੇਸ਼ ਸੁਣਿਆ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਫੈਸਰ ਅਮਰਜੀਤ ਸਿੰਘ ਜੀ ਹੁਣੇ ਗੱਲ ਕਰ ਰਹੇ ਸਨ ਕਿ ਨੇ ਮੁਲਾਂਕਣ ਕੀਤਾ ਪੰਜਾਬ ਦੀ ਰਾਜਨੀਤੀ ਦਾ ਵਪਾਰਕ ਸੰਦੇਸ਼ ਤੇ ਉਸ ਤੋਂ ਬਾਅਦ ਵਾਪਸ ਆ। ਕੁਵਾ ਜਿਵੇਂ 10 ਮਿੰਟ ਹੋਏ ਆ ਜੀ। ਨੌਜਵਾਨ ਮੁੰਡੇ ਸਾਡੇ ਜਿਹੜੇ ਇੱਥੇ ਦੇ ਜੰਪੜਾ ਲੈ ਉਹ ਗਾਇਕੀ ਨੇ ਤੇ ਗਾਉਂਦੇ ਵੀ ਵਧੀਆ ਹੈ। ਇਸ ਤਰ੍ਹਾਂ ਦਾ ਜਗਦੇਵ ਸਿੰਘ ਸੇਖਵਾ ਜਗਦੇਵ ਸਿੰਘ ਸੇਖੋਂ ਸਾਡਾ ਸਿੱਖ ਰਾਈਡਰਾ ਉਹਨਾਂ ਦਾ ਬੇਟਾ ਕਰਨ ਸੇਖੋਂ ਉਸ ਦਾ ਗੀਤ ਆਇਆ ਅੱਖ ਗੀਤ ਸੋਹਣਾ ਪਹਿਲੀ ਤਾਂ ਗੱਲ ਜਿਹੜੇ ਉਹਦੇ ਬੋਲ ਨੇ ਇੱਥੇ ਦੇ ਜੰਪੜ ਮੁੰਡੇ ਦੇ ਪੰਜਾਬੀ ਵਧੀਆ ਬੋਲਣੀ ਉਹ ਬਹੁਤ ਵਧੀਆ ਤੇ ਗੀਤ ਤੁਹਾਡੇ ਸਨਮੁਖ ਕੋ ਮੈਂ ਕਰਦਾ ਕਰਨ ਸੇਖੋਂ ਗਾਇਆ ਵਧੀਆ ਲਿਖਿਆ ਵਧੀਆ ਫਰਮਾਇਆ ਵਧੀਆ ਤੇ ਉੱਥੇ ਸੁਣਨ ਵਾਲਿਆਂ ਨੇ ਕੁਝ ਦਿਨਾਂ ਚੱਦਾ ਮਿਲੀਅਨ ਲੋਕਾਂ ਨੇ ਉਸ ਪਸੰਦ ਕੀਤਾ ਕਰਨ ਸੇਖੋਂ ਅਖਬੋਲ ਦੀ ਅੱਜ ਦੇ ਹਿੱਸੇ ਦੇ ਵਿੱਚ ਹੁਣ ਆਖਰੀ ਹਿੱਸੇ 'ਚ ਜਿਹੜੀ ਮੈਂ ਗੱਲ ਕਰਨੀ ਹੈ ਵੀਰਵਾਦ ਨੂੰ ਅਕਸਰ ਆਪਾਂ ਪਾਈਚਾਰੇ ਦੀ ਗੱਲ ਕਰਦੇ ਆਂ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਆ ਗਏ ਸਾਡੀਆਂ ਕੁਲੀ-ਗੁੱਲੀ ਜੁੱਲੀ ਜ਼ਰੂਰਤਾਂ ਪੂਰੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਅਸੀਂ ਜਦ ਮੌਲਣ ਲੱਗੇ ਤਾਂ ਰਾਜਨੀਤਿਕ ਅਖਾੜਿਆਂ ਦੇ ਵਿੱਚ ਸਮਾਜਿਕ ਸੱਭਿਆਚਾਰ ਸਾਰੇ ਪਾਸੇ ਅਸੀਂ ਪੈਰ ਪਸਾਰਨੇ ਸ਼ੁਰੂ ਕੀਤੇ ਜਦ ਮੇਜਰ ਜਿਹੜਾ ਬੇਸਿਕਲੀ ਚੀਜ਼ਾਂ ਹੋ ਹੁੰਦੀਆਂ ਇਹੀ ਨੇ 5-4 ਸਾਲ ਬਾਅਦ ਜਦ ਰੋਟੀ ਦਾ ਹੀਲਾ ਹੋ ਜਾਣਾ ਫਿਰ ਬੰਦਾ ਕਹਿੰਦਾ ਨਾ ਕਰਾਂ ਜਿਹੜਾ ਉਹਦਾ ਮਨ ਦੇ ਵਿੱਚ ਸ਼ੌਕ ਹੁੰਦਾ ਹੈ ਪਹਿਲੇ 5-7 ਸਾਲ ਇੰਨੇ ਮਿਹਨਤ ਦੇਨੇ ਉਸ ਨੂੰ ਸੁਰਤ ਨਹੀਂ ਰਹਿੰਦੀ 2-2 4-4 ਸਾਲ ਪੰਜਾਬ ਨਹੀਂ ਜਾ ਹੁੰਦਾ ਫਿਰ ਇੱਥੇ ਜਦ 4 ਪੈਸੇ ਬਣ ਜਾਂਦੇ ਐ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਅਲੱਗ-ਅਲੱਗ ਸ਼ੌਕ ਪੂਰਨੇ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਕੋਈ ਕਮੀ ਨਹੀਂ ਚਾਹੇ ਤੁਸੀਂ ਤਰੱਕੀਆਂ ਰਾਜਨੀਤਿਕ ਅਖਾੜੇ 'ਚ ਕਰਦੇ ਹੋ ਚਾਹੇ ਸੱਭਿਆਚਾਰ ਚੋਂ ਸਮਾਜਿਕ ਲੋਕਾਂ ਦੇ ਵਿੱਚ ਰਦੇ ਆਂ ਬਿਜ਼ਨਸ ਕਰਦੇ ਆਂ ਜਿਹੜਾ ਕੁਛ ਮਰਜ਼ੀ ਕਰੋ ਪਰ ਜਿਉ ਜਿਉ ਅਸੀਂ ਤਰੱਕੀਆਂ ਦੇ ਵੱਲ ਨੂੰ ਜਾਂਦੇ ਆਂ ਤਿਉ ਤਿਉ ਅਸੀਂ ਪਹਿਲੀਆਂ ਕਦਰਾਂ ਕੀਮਤਾਂ ਜਿਹੜੀਆਂ ਸਾਡੇ ਕੋਲ ਸਾਡੇ ਰਿਵਾਜ ਦੇ ਵਿੱਚ ਤੁਰੀਆਂ ਸੀ ਉਹ ਅਸੀਂ ਛੱਡਣੀਆਂ ਸ਼ੁਰੂ ਕਰ ਦਿੰਦੇ ਆਂ ਇੱਕ ਤੋਂ ਇੱਕ ਤਲਾਂਝਲੀ ਮਾੜੀਆਂ ਚੀਜ਼ਾਂ ਵੱਲੋਂ ਪ੍ਰੇਰਿਤ ਹੁੰਨੇ ਚੰਗੀਆਂ ਜਿਹੜੀਆਂ ਨੇ ਉਹਨਾਂ ਨੂੰ ਪਿੱਕ ਕਰਦੇ ਆਂ ਸੱਚ ਤੇ ਝੂਠ ਦੇ ਵਿੱਚ ਜਿਹੜਾ ਫਰਕ ਹੈ ਉਸ ਨੂੰ ਪરા ਵੇਗ ਦੇ ਵਿੱਚ ਇੰਨੇ ਹੜ ਦੇ ਵਿੱਚ ਤੇਜ਼ੀ ਦੇ ਵਿੱਚ ਜਿਹਦੇ ਵਿੱਚ ਪੈਸੇ ਦੀ ਗੱਲ ਸ਼ੌਹਰਦ ਦੀ ਗੱਲ ਆਪਾ ਦਿਖਾਉਣ ਦੀ ਗੱਲ ਚਾਹੇ ਗੱਡੀਆਂ ਨੇ ਘਰ ਨੇ ਪਾਰਟੀਆਂ ਨੇ ਲੋਕਾਂ ਦੇ ਨਾਲ ਬਹਿਣਾ ਉੱਠਣਾ ਵੱਡਿਆਂ ਛੋਟਿਆਂ ਚ ਕਰਕੇ ਜਿਉਂ-ਜਿਉਂ ਭਰਤਲ ਤੋਂ ਪੈਰ ਚੱਕੀ ਜਾਂਦੇ ਆ ਤਿਆਂ-ਤਿਆਂ ਅਸੀਂ ਜ਼ਿੰਦਗੀ ਦੇ ਵਧੀਆ ਚੀਜ਼ਾਂ ਦੇ ਪਤਨ ਵੱਲੋਂ ਮੁਰਦੇ ਜਾਂਦੇ ਆ ਔਰ ਚੰਗਾ ਜਦ ਹੁੰਦਾ ਉਹ ਸਾਰਿਆਂ ਨੂੰ ਮਾੜਾ ਚੰਗਾ ਲੱਗਦਾ ਜਦ ਮਾੜਾ ਹੁੰਦਾ ਤਾਂ ਸਾਰੇ ਉਸ ਗੱਲ ਦਾ ਰੌਲਾ ਪਾਉਂਦੇ ਔਰ ਸਚਾਈ ਅਸਲ ਤੋਂ ਅਸੀਂ ਪਾਸਾ ਮੋੜਦੇ ਹਾਂ ਕੁਝ ਵੀ ਹੋਵੇ ਹੋਇਆ ਉਹ ਚਾਹੇ ਉਹ ਕੋਈ ਯਥੇਵੰਦੀ ਬਣੀ ਚਾਹੇ ਕੋਈ ਰਾਜਨੀਤੀ ਚ ਗਿਆ ਚਾਹੇ ਕੋਈ ਬਿਜ਼ਨਸ ਸੈੱਟ ਹੋਏ ਭਾਈਚਾਰੇ ਦੇ ਵਿੱਚੋਂ ਹੀ ਮਦਦ ਉਸਨੂੰ ਮਿਲੀ ਪਰ ਉਸਨੂੰ ਥਾਂੇ ਰੱਖਣ ਲਈ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕਿਸੇ ਵੀ ਪਾਰਟੀ ਨੂੰ ਇਸੇ ਵੀ ਭਾਈਚਾਰੇ ਬਣੀ ਸਾਨੂੰ ਸਿੱਧਿਆਂ ਰੱਖਣ ਦੇ ਲਈ ਜਦੋਂ ਵਿੱਚ ਵਿਗਾੜ ਆਉਂਦਾ ਅਸੀਂ ਵਿਗਾੜ ਵਾਲੇ ਪਾਸੇ ਖੜ ਜਾਂਦੇ ਆ ਅਸੀਂ ਉਸ ਨੂੰ ਰੋਕਣ ਦਾ ਯਤਨ ਉਸ ਸੋਧਣ ਦਾ ਯਤਨ ਪਤਾ ਕਿਉਂ ਨਹੀਂ ਕਰਦੇ ਕਹਿੰਦਾ ਮੇਰੀ ਸਹੀ ਆ ਮੈਂ ਠੇਕਾ ਲਿਆ ਲੋਕਾਂ ਦਾ ਬਸ ਜਦ ਇਹ ਸੋਚ ਆ ਗਈ ਫਿਰ ਤੁਸੀਂ ਨਿਤ ਹੱਥ ਦੇ ਵਿੱਚ ਰੇਤੇ ਜਿਵੇਂ ਮੁਠੀ ਚ ਭਰਿਆ ਕਿਰਦੇ ਕਿਰਦੇ ਕਿਰਦੇ ਕਿਰ ਜਾਣਾ ਇੱਕ ਦਿਨ ਉੱਥੇ ਜਾ ਕੇ ਖੜ ਜਾਣਾ ਵੀ ਠੀਠ ਹੋ ਗਏ ਪੂਰੇ ਦਖਤ ਵਾਲੀ ਕਹਾਣੀ ਹੋ ਗਈ ਕਹਿੰਦਾ ਯਾਰ ਹੁਣ ਥੱਲੇ ਬੈਠਣਗੇ ਉਸ ਗੱਲ ਤੇ ਧਾਰਮਿਕ ਸਾਡੇ ਇਕੱਠਾਂ ਚ ਧਾਰਮਿਕ ਸਾਡੀਆਂ ਜਥੇਬੰਦੀਆਂ ਚ ਸੱਭਿਆਚਾਰ ਦੇ ਵਿੱਚ ਸਮਾਜ ਦੇ ਵਿੱਚ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਸਾਰੇ ਪਾਸੇ ਖਿਲਾਰ ਪੈ ਗਿਆ ਔਰ ਖਾਟੀ-ਪੱਟੀ ਜਿੱਥੇ 10 ਬੰਦੇ ਇਕੱਠੇ ਹੋ ਕੇ ਬਹਿ ਗੱਲਾਂ ਚੱਲਿਆ ਯਾਰ ਫਲਾਣੇ ਨੇ ਐ ਕਰਤਾ ਫਲਾਣੇ ਨੇ ਉਹ ਕਰਤਾ ਫਲਾਣੇ ਉਹ ਕਰਤਾ ਪਰ ਜਦਕਿ ਇਹ ਕੰਮ ਆਉਂਦਾ ਵੇ ਜੀਰ ਸਾਡੇ ਘਰ ਜੰਮੀ ਐ ਉਦੋਂ ਫਿਰ ਅਸੀਂ ਪਿੱਠ ਮੋੜਦੇ ਆਂ ਮਤਲਬ ਜਦੋਂ ਸੱਚ ਦੇ ਨਾਲ ਖੜਨਾ ਹੁੰਦਾ ਹੈ ਉਦੋਂ ਸਾਨੂੰ ਲੱਗਣ ਲੱਗ ਜਾਂਦਾ ਵੀ ਯਾਰ ਜਾਂ ਫਿਰ ਸੱਚ ਦੀ ਬਿਨਾ ਤੇ ਕਿਸੇ ਸਾਰਾ ਕੁਝ ਖੋਇਆ ਗਿਆ ਉਹਦੇ ਦਿਨ 10 ਦਿਨ ਬਸ ਹਮਦਰਦੀ ਆ ਤੇ ਉਹਦੇ ਬਾਅਦ ਬੰਦਾ ਰੋੜ ਜਾਂਦਾ ਕੋਈ ਵੀ ਆ ਕੇ ਗੁੱਟ ਨਹੀਂ ਫੜਦਾ ਕੁਝ ਜੇ ਰਹਿ ਜਾਂਦੇ ਆ 5-4 ਜਾਂ 5-4 ਤੋਂ ਵੀ ਕੋਈ ਜਿਹੜੇ ਬਿਲਕੁਲ ਬੁੱਕਲ ਦੇ ਦੋਸਤ ਹੁੰਦੇ ਆ ਉਹ ਫਿਰ ਆ ਕੇ ਦੁੱਖ ਸੁੱਖ ਚ ਖੜ ਜਾਂਦੇ ਸਭ ਤੋਂ ਵੱਡੀ ਗੱਲ ਹੈ ਮਨੁੱਖ ਦੀਆਂ ਕਦਰਾਂ ਕੀਮਤਾਂ ਦਾ ਅਸਰ ਜਾਣਾ ਪੈਸੇ ਥੇਲੇ ਦਾ ਨਾਲੇ ਪਤਾ ਜਦ ਵੀ ਇਸ ਪਲੈਨਟ ਤੇ ਇਸ ਧਰਤੀ ਤੇ ਅਸੀਂ ਸਦੀਵੀ ਨਹੀਂ ਅਸੀਂ ਥੋੜਾ ਸਮਾ ਹੀ ਹਾਂ 20-30 ਸਾਲਦਿਆਂ ਅਕਲ ਆਉਂਦੀ ਆ 50 ਸਾਲ ਦੇ ਤੋਂ ਬਾਅਦ ਗਰਾਫ ਥੱਲੇ ਨੂੰ ਗਿਰਦੇ ਜਾਂਦਾ ਸਾਲ ਆ 20 ਸਾਲਾਂ ਚ ਕੱਤਣਾ ਚੰਗਾ ਜਾਂ ਮਾੜਾ ਭਾਈ ਦੇ ਵਿੱਚ ਚੱਲ ਰਹੀ ਕੋਈ ਮਾੜੀ ਚੀਜ਼ ਨੂੰ ਰੋਠਲਣ ਦਾ ਜਿਹੜਾ ਯਤਨ ਕਰਦਾ ਬੰਦਾ ਉਹ چاہے ਕਿਸੇ ਪੱਖ ਦਾ ਹੋਵੇ ਉਹੋ ਟਾਰਗੇਟ ਹੋ ਜਾਂਦਾ ਜਦੋਂ ਨਿਸ਼ਾਨਾ ਬਣਦਾ ਉਹ ਤੇ ਨਿਸ਼ਾਨਾ ਸਿੱਧਿਆ ਜਾਂਦਾ ਜਿਹਦੇ ਨਿਸ਼ਾਨਾ ਲੱਗਦਾ ਉਹ ਕੱਲਾ ਰਹਿ ਜਾਂਦਾ ਉਹ ਵਿਖਰ ਜਾਂਦਾ ਇਕੱਟ ਜਾਂਦਾ ਉਹਦਾ ਕੱਬਰ ਹੋ ਜਾਂ ਕਲੇਸ਼ ਕਰਦਾ ਤੈ ਫਾਹਾ ਲੈਣਾ ਇਕੱਲੇ ਨੇ ਤੂੰ ਮਰਨਾ ਇਹਦੇ ਵਿੱਚ ਬਾਕੀ ਵੀ ਦੁਨੀਆ ਵਸਦੀ ਹੈ ਬਾਕੀ ਵੀ ਭਾਈਚਾਰਾ ਵਸਦਾ ਹੀ ਹੈ ਤੈ ਸਕੰਦਰ ਬਣਨਾ ਹੁਣ ਫਿਰ ਉਹਨੂੰ ਕਹਿਣ ਵਾਲੇ ਨੇ ਫਿਰ ਸੱਚ ਨੂੰ ਫਾਸੀ ਲੱਗਦੀ ਹੈ ਇੱਥੇ ਬੈਠੇ ਜਦ ਪਿਛਲੀਆਂ ਗੱਲਾਂ ਚੱਲਦੇ ਨੇ ਉਹ ਅਮਲੀ ਹੋ ਗਏ ਜੀ ਬੇਰਜਗਰ ਹੋ ਗਿਆ ਕੱਲੀ ਬੋਟਾਂ ਨਹੀਂ ਪਾਉਂਦੇ ਪਤਾ ਨਹੀਂ ਕਦਰਾਂ ਕੀਮਤਾਂ ਮੜ ਉੱਥੇ ਮਾੜੇ ਤਬਰਾਂ ਚ ਮਾੜੇ ਹੋਣ ਲੱਗੇ ਕੁੜੀਆਂ ਚਿੜੀਆਂ ਦੀ ਇੱਜ਼ਤ ਦਾ ਰੌਲਾ ਤੇ ਜਿੱਦਾਂ ਸਾਡੀ ਇੱਥੇ ਦੀ ਗੱਲ ਹੁੰਦੀ ਹੈ ਉਦੋਂ ਸਾਡੀ ਜੜੀਆਂ ਨੇ ਪ੍ਰਾਪਤੀਆਂ ਸਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਗਿਰੀਆਂ ਉਹਦੀ ਕਦੇ ਅਸੀਂ ਗੱਲ ਨਹੀਂ ਕਰਦੇ ਕਿਤੇ ਇੱਥੇ ਸ਼ੋਸ਼ਣ ਨਹੀਂ ਹੁੰਦੇ ਇਸ ਸਟੈਪ ਮਦਰ ਫਾਦਰਸ ਦੇ ਵਿੱਚ ਉਹਦੇ ਬਾਅਦ ਫਲੀਪ ਹੋਰਾਂ ਦੇ ਵਿੱਚ ਚਾਚੇ ਮਾਮੇ ਭੂਆ ਫੁਫਰਾਂ ਦੇ ਘਰਾਂ ਦੇ ਵਿੱਚ ਇੱਥੇ ਸਿਆਪੇ ਨਹੀਂ ਪੈਂਦੇ ਇੱਥੇ ਟੱਕੇ ਕਰਦੇ ਪਰਿਵਾਰ ਜੇ ਉੱਥੇ ਟਾਰਗੇਟ ਕਰਦੇ ਆ ਬਾਦਲ ਅਮਰਿੰਦਰੋਂ ਨਹੀਂ ਕਰਦੇ ਆ ਤੇ ਇੱਥੇ ਪਰਿਵਾਰਾਂ ਦਾ ੱਟਕਾ ਨਹੀਂ ਚੱਲਦਾ ਦੱਸੋ ਮੈਨੂੰ ਕਿਹੜਾ ਫੀਲਡ ਆ ਜਿੱਥੇ ਕੁਝ ਬੰਦਿਆਂ ਦੀ ਸਰਦਾਰੀ ਹੈ ਨਹੀਂ ਗੱਲ ਇਹ ਹੈ ਕਿ ਅਸੀਂ ਮਾਰਟਨ ਲੂਥਰ ਕਿੰਗ ਜੂਨੀਅਰ ਦੀ ਗੱਲ ਕਹਿਣੀ ਕੱਲ ਦੀ ਫੇਰ ਮੈਂ ਤੁਹਾਨੂੰ ਦੱਸਦਾ ਜੂਨੀਅਰ ਕੀ ਕਹਿੰਦਾ ਉਹ ਕਹਿੰਦਾ ਵੀ ਗੱਲ ਮਾਰੀਆਂ ਚੀਜ਼ਾਂ ਦਾ ਹੋਣਾ ਨਹੀਂ ਹੈ ਮਾਰੀਆਂ ਚੀਜ਼ਾਂ ਦੇ ਓਛਾਲ ਦਾ ਗੱਲ ਹੈ ਨਹੀਂ ਮਾੜੀ ਸਭ ਤੋਂ ਕਿਸਮਤ ਇਹ ਹੈ ਉਸ ਸਮੇਂ ਦੀ ਤਰਾਸ ਦੀ ਇਹ ਹੈ ਚੰਗੇ ਬੰਦੇ ਦਾ ਮਾੜੀ ਦੇ ਖਿਲਾਫ ਬੋਲਣਾ ਭਾਈਚਾਰਾ ਜਿਉਂ ਪ੍ਰਭਰ ਹੋਇਆ ਲੂੰਬਰ ਕਿਸਮ ਦੇ ਲੋਕਾਂ ਨੇ ਅੱਖਾਂ ਗੱਡ ਲੀਆਂ ਵੀ ਹੁਣ ਰਾਜਨੀਤੀ ਵੱਲ ਜਾਣਾ ਉਹਨਾਂ ਸੀ ਸਸਤਾਵਾ ਬਣਾਉਣੀਆਂ ਨੇ ਔਰ ਸਾਡੇ ਵੇਖਦੇ ਆ ਵੇਖਦੇ ਹੀੱਖਦੇ ਬੰਦੇ ਲੱਖਾਂ ਚ ਬਣੇ ਬੈਠੇ ਆ ਔਰ ਸਾਨੂੰ ਪਤਾ ਸਾਡੇ ਸਿਰ ਤੋਂ ਬਣੇ ਬੈਠਾ ਔਰ ਅਸੀਂ ਉਹਨਾਂ ਨੂੰ ਵਰਜਦੇ ਨਹੀਂ ਸਗੋਂ ਬਨ ਸੁਧ ਨੂੰ ਅਸੀਂ ਉਹਨਾਂ ਦੇ ਨਾਲ ਖੜਦੇ ਆ ਚੰਗੇ ਤੇ ਮਾੜੇ ਦਾ ਵਿਸ਼ਲੇਸ਼ਣ ਅਸੀਂ ਛੜਤਾ ਜਿੱਦੋਂ ਨੂੰ ਹਵਾ ਲੱਗੀ ਉਦੋਂ ਨੂੰ ਤੁਰ ਕੇ ਕਾ ਫੂਸ ਨੂੰ ਅਸੀਂ ਉੱਡੇ ਫਿਰਦੇ ਕੋਈ ਰੌਲਾ ਸਿਟੀ ਹਾਲ ਦਾ ਕੋਈ ਰੌਲਾ ਪ੍ਰਧਾਨ ਪੀ ਆਉਟਵਾ ਦਾ ਕੋਈ ਵਿਕਟੋਰੀਆ ਦਾ ਕੋਈ ਲੋਕਲ ਪੱਧਰ ਦਾ ਕਿਉਂ ਪੰਜ ਚਾਰ ਬੰਦੇ ਰਹਿ ਜਾਂਦੇ ਯਾਰ ਬਾਕੀ ਕਿੱਥੇ ਚਲੇ ਜਾਂਦੇ ਲੱਖ ਡੇਢ ਲੱਖ ਬੰਦੇ ਦਾ ਇਕੱਠਾ ਸੱਚ ਸੁਣਨ ਲਈ ਬਹੁਤ ਸਵਾਦ ਆਉਂਦਾ ਤੁਹਾਨੂੰ ਪਰ ਸੱਚ ਨਾਲ ਖੜਨ ਵੇਲੇ ਫਿਰ ਅਸੀਂ ਕਈ ਵਾਰ ਥਿਰਕ ਜਾਂਦੇ ਫਿਰ ਸਾਨੂੰ ਤੱਬਰ ਵਿਖਣ ਲੱਗਦਾ ਸਾਨੂੰ ਪਰਿਵਾਰ ਵਿਖਣ ਲੱਗਦਾ ਸਾਨੂੰ ਗਾਣਾ ਕਾਨੂੰਨ ਦੁਸ਼ਮਣੀ ਲੈਣੀ ਆ ਅਸੀਂ ਇਹਨਾਂ ਤੋਂ ਕੀ ਲੈਣਾ ਬਾਕੀ ਵੀ ਦੁਨੀਆ ਵਸਦੀ ਐ ਸਰੀਚ ਤੂੰ ਕੱਲਾ ਰਹਿਣਾ 1.5 ਲੱਖ ਬੰਦਾ ਵਸਦਾ ਉਹ ਵੀ ਚੁੱਪ ਐ ਸਾਡੀਆਂ ਕਦਰਾਂ ਕੀਮਤਾਂ ਸਾਡੇ ਹੱਥੋਂ ਔਰ ਸਾਨੂੰ ਪਤਾ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਕਿ ਸਾਡੇ ਸਿਰਾਂ ਤੇ ਚਵਾਰੇ ਪੈ ਰਹੇ ਨੇ ਸਾਡੇ ਕੋਲੋਂ ਇਹ ਚੀਜ਼ਾਂ ਹੋ ਰਹੀਆਂ ਸਾਡੀ ਖੂਨ ਪਸੀਨੇ ਦੀ ਕਮਾਈ ਸਾਡੇ ਢੱਬੇ ਵਿੱਚੋਂ ਖਿੱਚ ਕੇ ਇਹ ਬੰਦੇ ਉਹਦੇ ਤੇ ਰਾਜ ਕਰ ਰਹੇ ਨੇ ਇਹ ਆਪਣੌਂ ਚ ਮਾਰ ਨੇ ਉਹਦਾ ਫਾਇਦਾ ਸਰਕਾਰ ਦੇ ਦਰਬਾਰੇ ਲੈ ਰਹੇ ਨੇ ਪਰ ਅਸੀਂ ਕੇ ਕੱਢ ਲਾ ਕੋਈ ਵੀ ਕਾਰਨ ਹੋ ਸਕਦਾ ਜਦ ਬੰਦਾ ਕੱਲਾ ਰਹਿ ਜਾਂਦਾ ਨਾ ਉਹਦੇ ਤੇ ਹਮਲਾ ਹੋ ਜਾਂਦਾ ਜਾਂ ਕੱਲੇ ਬੰਦੇ ਨੂੰ ਵਿਰੋਧੀ ਆ ਕੇ ਦੱਬ ਲੈਂਦੇ ਆ ਕਿਸੇ ਕਾਰਨ ਚਾਹੇ ਉਹ ਫਾਈਨੈਂਸ਼ੀਅਲੀ ਚਾਹੇ ਫਿਜ਼ੀਕਲੀ ਚਾਹੇ ਲੋਕਾਂ ਵਾਲੇ ਪਾਸਿਓਂ ਚਾਹੇ ਵਕੀਲਾਂ ਵਾਲੇ ਪਾਸਿਓ ਉਹ ਬੰਦਾ ਜਦ ਕੱਲਾ ਰਹਿ ਕੇ ਟੁੱਟ ਜਾਂਦਾ ਛੋਕ ਕੁੱਕਦਾ ਫਿਰਦਾ ਸਾਰੇ ਸ਼ਹਿਰ ਚ ਲੋਕ ਨਹੀਂ ਖੜਦੇ ਨਾਲ ਕਿਸੇ ਦੇ ਹਫ਼ਤਾ 10 ਦਿਨ 15 ਦਿਨ 20 ਦਿਨ ਗੱਲ ਆਉਂ ਹੋ ਜਾਂਦੀ ਐ ਕੋਈ ਨਹੀਂ ਕਿਸੇ ਨੂੰ ਪੁੱਛਦਾ ਇੱਥੇ ਗੱਲ ਵੀ ਪੱਕੀ ਐ ਠੀਕ ਆ ਪਰ ਜ਼ਿੰਦਗੀ ਦੇ ਵਿੱਚ ਅਸੀਂ ਭੱਜੇ ਫਿਰਦੇ ਆ ਪਰ ਮਾਰਿਆਂ ਦੇ ਹੱਕ ਚ ਅਸੀਂ ਖਲੋਣੇ ਕਿਸੇ ਵੀ ਜਥੇਬੰਦੀ 'ਚ ਕਿਸੇ ਵੀ ਆਰਗੇਨਾਈਜੇਸ਼ਨ 'ਚ ਤੱਕਾ ਹੁੰਦਾ ਸਾਨੂੰ ਪਤਾ ਹੁੰਦਾ ਪਰ ਅਸੀਂ ਉਹਦੇ ਮੂਹਰੇ ਨਹੀਂ ਖੜਦੇ ਕਾਰਨ ਕੀ ਵੇ ਚੱਲ ਆਪਣੀ ਤਾਂ ਪ੍ਰਧਾਨਨਾ ਬਣਦੀ ਐ ਤੇਰਾ ਰੁਕਦਾ ਕੁੱਛ ਜਦ ਤਨ ਤੈਨੂੰ ਕੰਮ ਆ ਯਾਰ ਦੱਸੀ ਤਾ ਤੇਰਾ ਕੀ ਆ ਹੁਣ ਆਪਣੀ ਐਮਪੀ ਨਾਲ ਆੜੀ ਐ ਲੋਕਾਂ ਦੇ ਨਹੀਂ ਕੰਮ ਕਰਦਾ ਮੇਰੇ ਤਾਂ ਕਰਦਾ ਤੂੰ ਕਿਉਂ ਬੋਲਣਾ ਉਹਦੇ ਖਿਲਾਫ ਕਮਲਾ ਹੋ ਗਿਆ ਤੂੰ RAM ਨਾਲ ਬੈਠਿਆ ਕਰ ਸੁਣਦਾ ਕਿਉਂ ਨਹੀਂ ਉਹ ਤੈਨੂੰ ਵਿਕਟੋਰੀਆ ਜੇ ਨਹੀਂ ਲੈ ਕੇ ਗਏ ਹੁਣ ਸਾਰਿਆਂ ਦਾ ਠੇਕਾ ਲਿਆ ਤੈਨੂੰ ਤਾਂ ਲੈ ਗਿਆ ਉਹ ਹੁਣ ਕੀ ਬੋਲਦਾਂ ਫਰਾਂੇ ਜਗਾ ਹੋ ਗਿਆ ਤੈਨੂੰ ਕਰਦ ਤੈਨੂੰ ਦੱਸ ਕੀ ਚਾਹੀਦਾ ਕਿਸੇ ਨੂੰ ਡਰਾ ਲਿਆ ਕਿਸੇ ਨੂੰ ਥਮਕਾ ਲਿਆ ਕਿਸੇ ਨੂੰ ਸੋਨੇ ਦਾ ਬਿਸਕਟ ਮੂੰਹ ਚ ਦੇ ਲਿਆ ਔਕਾਤ ਵੇਖ ਕੇ ਓਨੇ ਕ ਔਕਾਤ ਦੀ ਗੱਲ ਕਰਨ ਤੇ ਸੱਚ ਕਦਰਾਂ ਕੀਮਤਾਂ ਮੁੱਕ ਰਹੀਆਂ ਇਹਨਾਂ ਭਾਸ਼ਣ ਨਹੀਂ ਦੇ ਰਿਹਾ ਯੂ ਤੁਹਾਡੇ ਨਾਲ ਮੈਂ ਜਿਹਾ ਭਾਈਚਾਰਾ ਵੀਰਵਾ ਨੂੰ ਗੱਲ ਕਰਦਾ ਹੁੰਦਾ ਐਨਾ ਸੋਚੋ ਵੀ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਡੇ ਵਿੱਚ ਇਸ ਹਨੇਰੀ ਦੇ ਵਿੱਚ ਅਸੀਂ ਵੇਖੋ ਸਾਖਰ ਦੁਨੀਆ 'ਚ ਜਿੱਥੇ ਟਿਪਸ ਤੇ ਕੰਮ ਹੈ ਜਿੱਥੇ ਬਿਨਾ ਸਪਾਰਸ਼ ਤੋਂ ਕੰਮ ਹੋਣੇ ਨੇ ਜਿੱਥੇ ਤੁਹਾਡਾ 2 ਸੈਂਟ ਬਣਦੇ ਆ ਸਰਕਾਰ ਚ ਹੈ 20 ਸੈਂਟ 50 ਸੈਂਟ ਲਾ ਕੇ ਚਿੱਠੀ ਭੇਜੇ 2 ਸੈਂਟ ਘਰੇ ਭੇਜੂ ਜਿੱਥੇ ਪੈਣੀ ਜੇ ਤੁਹਾਡੀ ਰਹਿੰਦੀ ਆ ਤਾਂ ਟੈਲਰ ਤੁਹਾਨੂੰ ਪੈਣੀ Đਊਗਾ ਜੇ ਪੈਣੀ ਲੈਣੀ ਆ ਤਾਂ ਪੈਣੀ ਲਊਗਾ ਸਰਕਾਰ ਦੇ ਦਰਵਾਜ਼ੇ ਤੁਹਾਡੇ ਬਣਦੇ ਕੰਮਾਂ ਨੂੰ ਕਿਸੇ ਦੀ ਲੋੜ ਨਹੀਂ ਘਰ ਦੇ ਵਿੱਚ ਤੁਹਾਨੂੰ ਹਥਿਆਰ ਅਸਲੇ ਰੱਖਣ ਦੀ ਲੋੜ ਨਹੀਂ ਜਵਾਕ ਜੱਲਾ ਘਰ ਵਾਲੀਆਂ ਆਦੀ ਰਾਤੋਂ ਕੋਈ ਝਾਕ ਨਹੀਂ ਸਕਦਾ ਤਾਂ ਕਿ ਹੈ ਜਦ ਮਾਰੇ ਪਾਸੇ ਖੜਦੇ ਜਦ ਮਾਰੇ ਵਾਲੇ ਪਾਸੇ ਖੜਨ ਉਹ ਢਿੰਗੋ ਜ਼ੋਰੀ ਦਾ ਪਤਾ ਹੈ ਲੋਕਾਂ ਨੂੰ ਪਤਾ ਉਹ ਫਰਾਣੇ ਬੰਦੇ ਨਾਲ ੱੱਕਾ ਹੋ ਗਿਆ ਜਦ ਭਾਣਾ ਵਾਪਰ ਗਿਆ ਜਦ ਹਉਆ ਹੋ ਗਿਆ ਫੇਰ ਅਸੀਂ ਆ ਕਰਦੇਾਂਗੇ ਉਹ ਕਰਦੇਾਂਗੇ ਪਰ ਸੱਪ ਦੀ ਲਕੀਰ ਨੂੰ ਡਾਂਗਾ ਮਾਰਦੇ ਆ ਪਰ ਸੱਪ ਜਾਨ ਲੰਘ ਜਾਂਦਾ ਸਭ ਕੋਸ਼ਿਸ਼ ਭਾਈ ਦੇ ਵਿੱਚ ਫਿਰਦੇ ਲੋਕਾਂ ਨੂੰ ਪਤਾ ਹੁੰਦਾ ਕਿੱਥੇ ਕੀ ਹੋ ਰਿਹਾ ਕਿੱਥੇ ਕਾਟੋ ਕਿਹੜੇ ਗੁੱਲਾਂ ਤੇ ਚੜਦੀ ਐ ਕਿਹੜਿਆਂ ਫੁੱਲਾਂ ਤੇ ਫੇਰਦੇ ਆ ਫੇਰ ਵੀ ਅਸੇ ਗੱਲ ਚੱਲਦੀ ਜਾਂਦੇ ਆ ਆਪਾਂ ਕੀ ਲੈਣਾ ਹੈ ਇਹ ਕੀ ਲੈਣਾ ਨੇ ਸਾਡਾ ਨਵੇੜ ਦਾ ਕੰਮ ਪਿੱਛੇ ਵੀ ਨਿਬੜ ਗਿਆ ਪਿਛਲਿਆਂ ਨੂੰ ਤਾਂ ਆਕਲ ਆ ਜੂ ਮੈਂ ਤੁਹਾਨੂੰ ਫੇਰ ਕਹਿਣਾ ਉਹ ਤਾਂ ਚਾਹੇ ਫੇਰ ਵੀ ਦਲਿਆਂ ਚ ਸੌਣ ਵਾਲੇ ਨੇ ਦਲਿਆਂ ਚ ਸੌਣ ਲੈਣਗੇ ਪਰ ਜਦ ਅਸੀਂ ਕਦਰਾਂ ਕੀਮਤਾਂ ਵਕਾ ਲੀਆਂ ਵੱਡਿਆਂ ਬੰਦਿਆਂ ਚ ਬਹਿ ਕੇ ਰਾਜਨੀਤਿਕ ਬੰਦਿਆਂ ਚ ਨਾਨ ਪੰਜਾਬੀ ਨਾਨ ਸਿੱਖਾਂ ਚ ਬਹਿ ਕੇ ਸਾਡੀ ਢੇਲੇ ਦੀ ਕਦਰ ਨਹੀਂ ਉੱਥੇ ਕਿਰੀ ਚਲੋ ਫਰਨੇ ਗੱਡੀ ਵੀ ਫਲਾਣੇ ਨਾਲ ਮੇਰੀ ਯਾਰੀ ਆ ਉੱਪਰ ਮੇਰੀ ਪੀਐਮ ਆਫਿਸ ਚ ਐਵਾ ਕੱਖ ਕਦਰ ਨਹੀਂ ਥੋੜੀ ਕਿਉਂਕਿ ਅਸੀਂ ਨਾਲਦਿਆਂ ਦੇ ਸੇਲੇ ਗੱਡ-ਗੱਡ ਕੇ ਉਹਨੂੰ ਦੱਸਤਾ ਵੀ ਅਸੀਂ ਕੱਖ ਸਾਡੇ ਕੁਛ ਪੱਲੇ ਦੀ ਸਾਨੂੰ ਇੱਕ ਤੋਹਰਾ ਮੇਰੇ ਸਿਰ ਤੇ ਲਾ ਦੇ ਸਾਰਿਆਂ ਨੂੰ ਵੇਚ ਦੂ ਮੈਂ ਜਦ ਅੰਦਰ ਬੜ ਕੇ ਗੱਲਾਂ ਇਹ ਜੀਆਂ ਅੰਦਰ ਕਰਕੇ ਕਰਨੀਆਂ ਤੁਹਾਨੂੰ ਕੀ ਦੇਣਾ ਕਿਸੇ ਨੂੰ ਇਹਨ ਜਰਨਲ ਥੋੜਾ ਉਹ ਮਲਾਂਕਨ ਅੰਦਰ ਬੈਠਾ ਬੰਦਾ ਕਰ ਲੈਂਦਾ ਵੀ ਬਸ ਇੰਨੀਓ ਕਹਾਣੀ ਸੀ ਬਸ ਇਹ ਜਿਹੜੀਆਂ ਖੁਰ ਰਹੀਆਂ ਸਾਡੀਆਂ ਕਦਰਾਂ ਕੀਮਤਾਂ ਨੇ ਇਹ ਸਾਨੂੰ ਉੱਥੇ ਲਿਜਾ ਕੇ ਖੜੀਆਂ ਕਰਨੀਆਂ ਦਾ ਨਾਲੇ ਇਹਦਾ ਕਦਰਾਂ ਕੀਮਤਾਂ ਖੁਰਨ ਦਾ ਕਾਰਨ ਕੋਈ ਨਹੀਂ ਨਾ ਸਾਨੂੰ ਕਿਸੇ ਤੱਕ ਕੋਈ ਗਰਜਾ ਇੱਥੇ ਨਾ ਕਿ ਸਾਨੂੰ ਕਿਸੇ ਤੱਕ ਆਣੀ ਹੈ ਨਾ ਕਿਸੇ ਨੂੰ ਕੋਈ ਇੱਥੇ ਨਾ ਕੋਈ ਕੋਈ ਹਮਲਾ ਕਰ ਸਕਦਾ ਪੁਲਿਸ ਸਾਰਾ ਕੁਝ ਹੈ ਇੱਥੇ ਰਹਿੰਦਿਆਂ ਹੋਣਿਆਂ ਵੀ ਅਸੀਂ ਜਰਵਾਣੇ ਦੇ ਹੱਕ 'ਚ ਖੜਦੇ ਇੱਕ ਘਟਨਾ ਨਹੀਂ ਬਹੁਤ ਘਟਨਾਵਾਂ ਨੇ ਜਿੱਥੇ ਭਾਈਚਾਰੇ ਨੇ ਗਲਤ ਬੰਦਿਆਂ ਦਾ ਸਾਥ ਦਿੱਤਾ ਔਰ ਸਾਰਿਆਂ ਨੂੰ ਪਤਾ ਹੁੰਦਾ ਵੀ ਸਾਡੇ ਸਿਰ ਤੋਂ ਆ ਚੀਜ਼ ਬਣੀ ਐ ਸਾਡੇ ਪੈਸਿਆਂ ਤੋਂ ਸਾਡੇ ਖੂਨ ਚੋਂ ਆ ਚੀਜ਼ ਨਿਕਲੀ ਆ ਦੇਖਦੇ ਦੇਖਦੇ ਏਕੇ ਨਾਲ ਸਾਰਿਆਂ ਨੂੰ ਪਤਾ ਹੁੰਦਾ ਫੇਰ ਵੀ ਉਹ ਗਾ ਚੱਲ ਤੇਰੀ ਤੈਂ ਕਿਉਂ ਕੋਈ ਕੰਮ ਹੋਊ ਸਰਕਾਰੀ ਦੁਆਰੇ ਕੰਮ ਹੋ ਤੂੰ ਫਾਜੇਗਾ ਜਾਂ ਜਿਹੜਾ ਕੋਈ ਬੋਲਦਾ ਨੂੰ ਡਰਾ ਲੈਨੇ ਆਪਾਂ ਹੋ ਰਹਣ ਦੇ ਪੰਗਾ ਪਾਵੇਂਗਾ ਘਾਬ ਉੱਡੇ ਉੱਗੇ ਆਉਂਦਾ ਘਰੇ ਬਹੁਤ ਔਖੇ ਨੇ ਵਕੀਲਾ ਦੇ ਪੈਸੇ ਦੇਣੇ ਕਿਉਂ ਸਾਨੂੰ ਸੱਚ ਸੁਣਨਾ ਵਧੀਆ ਲੱਗਦਾ ਕਿਉਂ ਸਾਨੂੰ ਸੱਚ ਦੇ ਨਾਲ ਖੰਨ ਤੋਂ ਅਸੀਂ ਇਨਕਾਰੀ ਹਾਂ ਇੰਨੀ ਵਧੀਆ ਸਾਡੀ ਕਮਿਊਨਿਟੀ ਸੀ ਕੱਲ ਸਿੰਘ ਦਾ ਦਿਨ ਲੰਘ ਕੇ ਜਾਵੇ ਬਾਬਾ ਸਿੰਘ ਲੋਪੋਂ ਸ਼ਹੀਦੀ ਦਾ ਓਏ ਮੁਠੀ ਪੰਜ ਸੈਂਟ ਘੰਟਿਆਂ ਤੇ ਕੰਮ ਕਰਨ ਵਾਲੇ ਜਿਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਹੱਦ ਤੱਕ ਅਦਾਲਤ ਦੇ ਵਿੱਚ ਸਿੰਘ ਨੇ ਗੋਲੀ ਮਾਰੀ ਔਰ ਸ਼ਹੀਦੀ ਲਈ ਸਾਡੇ ਪੂਰਵਜ ਇਹੋ ਜੇ ਸੀ ਜਿਹੜੀ ਕੌਮ ਦੇ ਵਿੱਚੋਂ ਅਸੀਂ ਆਏ ਆ ਜਿਹੜੇ ਗੁਰੂਆਂ ਦੀ ਅਸੀਂ ਜਿਹੜੇ ਸਾਡੇ ਨਾਦੀ ਜਿਹੜੇ ਪਿਓ ਨੇ ਉਹਨਾਂ ਨੇ ਸਾਨੂੰ ਸੱਚ ਤੇ ਖੜਨਾ ਸਿਖਾਇਆ ਉਹ ਜਦ ਭਾਗ ਸਿੰਘ ਬਦਲ ਸਿੰਘ ਉਹਨੇ ਸ਼ਹੀਦ ਕੀਤੇ ਬੇਲੇ ਨੇ ਤੇ ਗਵਾਹੀ ਦੇ ਵਿੱਚ ਹੱਪ ਟੈਂਸ਼ਨ ਉਹਨੂੰ ਰਿਹਾ ਕੀ ਇਕੱਲੇ ਭਾਵ ਕੀ ਵਿਚਾਰ ਲੋਕੋਂ ਕਹਦਾ ਰੌਲਾ ਸੀ ਸਾਰਿਆਂ ਦਾ ਵਾਰੀ ਪਖੜਾ ਲੋਕੋਂ ਕੇ ਨੂੰ ਇਹ ਪਤਾ ਸੀ ਵੇ ਰਗਾਂ ਮੈਂ ਫੜੂ ਭਾਈਚਾਰਾ ਮੇਰੇ ਨਾਲ ਖੜਾ ਕਾਂਬਾ ਗਾਟਾ ਮਾਰੂ ਗਰੇ ਉਹ ਪੰਜ ਪੰਜ ਸੱਤ ਸੱਦਾ ਸੈਂਟ ਘੰਟੇ ਦੇ ਕਮਾਉਣ ਵਾਲੇ ਬੰਦੇ ਘਰ-ਬਾਰ ਵੇਚ ਕੇ ਉਹਨਾਂ ਨੂੰ ਲੋਨ ਤੁਰੇ ਅੱਜ ਸਾਡੇ ਕੋਲ 10-10 ਮਿਲੀਅਨ ਦੇ ਘਰ ਪੰਜ-ਪੰਜ ਲੱਖ ਰਿਆ ਕਾਰਾ ਸਾਡੇ ਕੋਲ ਤੱਕ ਸਾਡੇ ਕੱਖ ਪੱਲੇ ਨਾ ਸਾਡੇ ਜਵਾਕ ਜੱਲੇ ਸਾਡੀ ਸੁਣਦੇ ਐ ਨਾ ਸਾਡੇ ਆਪਣਾ ਵजूद ਐ ਜਿੱਦੈ ਨੂੰ ਹਵਾ ਆਉਂਦੀ ਅੱਧੇ ਰੋਸੇ ਹੋਰੇ ਜਾਂਦੇ ਤੱਖਾਂ ਕਾਨਿਆਂ ਰਗੇ ਸੀ ਹੋਏ ਇਸ ਸਕੇ ਸਾਡੀਆਂ ਨੈਸਸਿਟੀਜ਼ ਪੂਰੀਆਂ ਨੇ ਅਸੀਂ ਕਦਰਾਂ ਕੀਤਾਂ ਸ਼ਰਤਾਂ ਅਸੀਂ ਮਾਰੇ ਨਾਲ ਖੰਨ ਲਾ ਕੇ ਔਰ ਖੜਦੇ ਆ ਲੋਕਾਂ ਦੇ ਆਪਣੇ ਮਲਾਂਕਣ ਦਾ ਦਿਨ ਹੈ ਅੱਜ ਗੱਲ ਕਰੀਏ ਕਿਹੜੇ ਕਾਰਨ ਨੇ ਕਰਕੇ ਅਸੀਂ ਹਰ ਜਗ੍ਹਾ ਬੁਕਾਉ ਹਰ ਜਗ੍ਹਾ ਬੁਕਾਉ ਹਰ ਜਗ੍ਹਾ ਬੁਕਾਉ ਕਿਉਂ ਨਹੀਂ ਅਸੀਂ ਪਾਰਦਰਸ਼ੀ ਹੋ ਕੇ ਕਿਉਂ ਨਹੀਂ ਅਸੀਂ ਅੱਖਰ ਹੋ ਕੇ ਚੰਦ ਤੇ ਮਾਰੇ ਦਾ ਫਰਕ ਤੇ ਮਾਰੇ ਮੂੰਹ ਤੇ ਕਹ ਜੇ ਤੂੰ ਮਾੜਾ ਭਾਈ ਚੰਗਾ ਹੋ ਐਨੀ ਕਹਿਣ ਦੀ ਜ਼ਰੂਰਤ ਸਾਡੇ 'ਚ ਕਿਉਂ ਨਹੀਂ ਸਾਡੇ ਪਹਿਆਂ ਦੇ ਵਿੱਚ ਸਾਡੀਆਂ ਸੱਤਾ 'ਚ ਸਾਡੇ ਬਜ਼ੁਰਗ ਸੋਨੇ ਰਗੇ ਬਜ਼ੁਰਗ ਸਾਡੇ ਚਿੱਟਿਆ ਦਾੜਿਆਂ ਵਾਲੇ ਖੜ ਕੇ 'ਚ ਕਹਿੰਦੇ ਅਸੀਂ ਚਾਚੇ ਭਤੀਜੇ ਭੂਆ ਦੇ ਪੁੱਤਾਂ ਮਾਮੇ ਨਾ ਤੂੰ ਗੱਲ ਤਾਂ ਇੱਥੇ ਅਸੀਂ ਸਾਰਾ ਕੁਝ ਗਵਾਇਆ ਅਸੀਂ ਕਰ ਰਹੇ ਨਾ ਗੱਲਾਂ ਬਾਤਲ ਦੀਆਂ ਤੇ ਅਮਰਿੰਦਰ ਦੀਆਂ ਰਾਜ ਬਦਲ ਦਿਆਂਗੇ ਅਸੀਂ ਆ ਲੈ ਉਹ ਪਹਿਲਾਂ ਆਪਣੇ ਵਾਲੇ ਨਾਲ ਦੇਖੋ ਥੋੜੇ ਵਾਲ ਦੇ ਕੀ ਹੋ ਰਿਹਾ ਆਪਣੇ ਕਦਰਾਂ ਕੀਮਤਾਂ ਦੇਖੋ ਉੱਥੇ ਦੀਆਂ ਕਦਰਾਂ ਕੀਮਤਾਂ ਵੇਖਣ ਵਾਲੇ ਸਾਡਾ ਕੀ ਬਣ ਰਿਹਾ ਇਸ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਸਾਡੇ ਸਾਹਮਣੇ ਤੱਕੇ ਹੋ ਰਹੇ ਨੇ ਬੰਦਿਆਂ ਤੇ ਗੋਲੀਆਂ ਚੱਲ ਰਹੀਆਂ ਨੇ ਸਾਡੇ ਬੰਦੇ ਤੱਕੇ ਹੋ ਕੇ ਗਰੀਬ ਬੰਦੇ ਡਿਪਰੈਸ਼ਨ 'ਚ दारूਾਂ ਪੀ ਪੀ ਮਰ ਰਹੇ ਨੇ ਅਸੀਂ ਵੱਡਿਆਂ ਬੰਦਿਆਂ ਦਾ ਫੇਰ ਸਾਦਨ ਤੁਹਾਡੇ ਹੱਕ ਚੋਂ ਤੁਹਾਡੇ ਢੱਗਾ ਚੋਂ ਕ੍ਰੌਂਜ ਕੇ ਮਿਲੀਅਨ ਡਾਲਰ ਅਗਲੇ ਆਪਣਾ ਨਾਮ ਬਣਾ ਰਹੇ ਨੇ ਫ੍ਰੀ ਤੁਹਾਡੇ ਨਾਮ ਤੇ ਹੋ ਕੇ ਉਹਨਾਂ ਨੂੰ ਅਕਸੈਪਟ ਕਰ ਰਹੇ ਚੀਜ਼ ਨਹੀਂ ਰਾਜਨੀਤੀ ਵਾਲੇ ਪਾਸੇ ਦੇਖ ਲਓ ਤੁਹਾਡੇ ਵੋਟਾਂ ਤੇ ਤੁਹਾਡੀਆਂ ਵੋਟਾਂ ਲੈ ਕੇ ਉੱਪਰ ਬੈਠੇ ਬੰਦੇ ਟਕੇ ਟਕੇ ਨੂੰ ਸਾਨੂੰ ਵੇਚਦੇ ਆ ਸਮਾਜਿਕ ਤੇ ਲੈ ਲਓ ਚਾਰ ਮੁਖ ਪੱਦਰ ਤੇ ਲੈ ਲੋ ਥੋੜੇ ਨਾਂ ਤੇ ਥੋੜੇ ਪੈਸੇ ਨਾਲ ਗੁਰੂ ਘਰ ਖੜੇ ਕਰਕੇ ਉਹ ਕਹਿੰਦੇ ਅੰਦਰ ਬਰਕਤਾਂ ਦਿਖਾ ਤੇਰੀਆਂ ਹੀ ਆ 500 ਤੀਆਂ ਇਹ ਸਾਡਾ ਨਾਂ ਤੇ ਸਕੂਲ ਬਣਾ ਕੇ ਧਰੋ ਜਾ ਜਾ ਕੇ ਤੁਸੀਂ ਲੋਕੋ ਜਵਾਕ ਲਿਆਉਂਦੇ ਰਹੇ ਸਕੂਲਾਂ ਚ ਕੋਲੋਂ ਤੁਸੀਂ ਘਰਾਂ ਤੇ ਮੌਰਗਾਂ ਲੈ ਲੈ ਅਦਾਰੇ ਬਣਾਉਂਦੇ ਰਹੇ ਦਿਖਾਓ ਪੁਰਾਣਿਆਂ ਚੋਂ ਕੱਢ ਕੇ ਕੋਈ ਆ ਕੇ ਮੈਨੂੰ ਫੋਨ ਕਰਕੇ ਕਹੋ ਉਹ ਫਰਾਨੀ ਸੰਸਥਾ ਦੇ ਵਿੱਚ ਮੈਂ ਪਹਿਲੇ ਦਿਨ ਸੀ ਤੇ ਮੈਨੂੰ ਮੈਂ ਅੱਜ ਵੀ ਹਾਂ ਕਰੋ ਇੱਕ ਬੰਦਾ ਫੋਨ ਏ 7424750 ਤੇ 30 ਸਾਲ ਪਹਿਲਾਂ ਮੈਂ ਫਰਾਨੀ ਜਥੇਬੰਦੀ ਬਣਾਈ ਸੀ ਫਰਾਨੀ ਆਰਗੇਨਾਈਜੇਸ਼ਨ ਫਰਾਨੀ ਮੈਂ ਚੀਜ਼ ਬੜਾਈ ਸੀ ਅੱਜ ਵੀ ਮੈਂ ਉੱਥੇ ਦੱਸੋ ਇੱਕ ਵੀ ਵਪਾਰਕਸ ਦੇਸ਼ਾ ਤੋਂ ਬਾਅਦ ਤੁਹਾਡੀਆਂ ਕਾਲ 18544247550 ਇਹ ਸਾਡੀਆਂ ਕਦਰਾਂ ਕੀਮਤਾਂ ਦਾ ਪਤਨ ਕਿਉਂ ਹੋ ਰਿਹਾ ਵਿਸ਼ਲੇਸ਼ਣ ਕਰਿਏ ਤੇ ਥੋੜੇ ਬੋਤੇ ਆਪਸ ਸੁਧਰੀਏ ਵਪਾਰਕ ਸੰਦੇਸ਼ ਗੱਲਬਾਤ ਚੱਲ ਰਹੀ ਹੈ ਜੀ ਕਿ ਅਸੀਂ ਕਿਉਂ ਕਰਦੇ ਜਾਂਦੇ ਆ ਜਿਹੜੀਆਂ ਕਮੀਆਂ ਸਾਡੇ 'ਚ ਆ ਰਹੀਆਂ ਨੇ ਤੇ ਉੱਤੇ ਪਿਛਲਿਆਂ ਨੂੰ ਅਸੀਂ ਅਕਲਾਂ ਦਿੰਨੇ ਆ ਤੇ ਸਾਡੇ ਘਰ ਦਾ ਜਿਹੜਾ ਵਿੜਾ ਉਹ ਭਖੜੇ ਦੇ ਨਾਲ ਭਰਿਆ ਪਿਆ ਤੇ ਪੈਰ ਸਾਡੇ ਨਿਤ ਲਊ ਲਹਾਨ ਹੁੰਦੇ ਆ ਤੇ ਅਸੀਂ ਭੁੱਲ ਰਹੇ ਹਾਂ ਅਸੀਂ ਡਬਲ ਫੇਸ ਸਾਡੀ ਡਿਵਿਡੀ ਗੱਲ ਆ ਸਾਡਾ ਦੋ ਚਿਹਰੇ ਸਾਡੇ ਕਦੇ ਕੋਈ ਕੱਢ ਲੈਨੇ ਕਦੇ ਕੋਈ ਕੱਢ ਲੈਨੇ ਆ ਔਰ ਜਿੱਥੇ ਭੋਰਾ ਵੀ ਗਰਜ ਨਹੀਂ ਤਲਵਿੰਦਰ ਸਿੰਘ ਜੀ ਲਾਈਨ ਨੰਬਰ 2 ਸਰਪਤਾ ਜੀ ਲਾਈਨ ਨੰਬਰ 3 ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਜੀ ਹਾਂ ਜੀ ਤੁਸੀਂ ਗੱਲ ਬੜੀ ਵਧੀਆ ਕੀਤੀ ਆ ਲੋਕ ਨਾ ਜਿੱਦਾਂ ਕਹ ਲੋ ਜਮੀਰ ਹੋ ਗਈ ਸਾਡੀ ਕੌਮ ਦੀ ਬਈ ਆਪਾਂ ਜਿਦਾ ਵੀ ਦਿਹਾੜੀ ਕਰਕੇ ਜਾਂ ਕੋਈ ਬਿਜ਼ਨਸਮੈਨ ਵੀ ਬਣਿਆ ਵੱਡਾ ਪਿੱਕਾ ਰੱਖ ਕੇ ਤੇ ਉਹ ਲੌਂਦਾ ਤਾਂ ਦਿਹਾੜੀ ਆ ਤੇ ਰੀਸ ਕਰਦਾ ਵੀ ਬਹੁਤ ਜਿੱਦਾਂ ਵੀ ਫਿਰ ਆਪਣੇ ਤੇ ਘੰਟੇ ਲਾਓ ਤੇ ਘਰ ਆਣ ਕੇ ਸੌਜੋ ਤੇ ਵਾਲੇ ਵਾਲੇ ਫਰਾਈਡੇ ਨੂੰ ਪਾਰਟੀ ਕਰ ਲਈ ਤੇ ਚਾਰ ਬੰਦੇ ਸਾਡੇ ਨਾਲ ਗਏ ਬਸ ਹੋਰ ਕੋਈ ਗੱਲ ਨਹੀਂ ਕਰਨੀ ਜਾਂ ਕਮਿਊਨਿਟੀ ਦੇ ਵਿੱਚ ਵਰਕ ਜਿਹੜੇ ਲੋਕ ਬਾਕੀ ਕਮੇਟੀਆਂ ਦੇ ਇਹ ਸਮੇਂ ਹਨਾ ਉਹ ਉਹ ਹਰ ਕਥਾ ਜਾਂਦੇ ਆ ਤੇ ਬ੍ਰਾਂਟੀਆਂ ਵਰਕ ਕਰਦੇ ਧਰਮ ਦੀ ਗੱਲ ਕਰਦੇ ਆਪਣਾ ਬੋਲਦਾ ਵੀ ਆ ਤੇ ਉਹਦੇ ਉੱਤੇ ਬਹੁਤ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਕੋਈ ਵੀ ਕਮੇਟੀ ਤੇ ਚਾਹੇ ਗੁਰਦੁਆਰੇ ਚੰਨਵਾਲਾ ਬਾਜਾ ਕਿਤੇ ਵੀ ਆ ਉਹਦੇ ਉੱਤੇ ਪ੍ਰੈਸ਼ਰ ਇੰਨਾ ਪਾਉਂਦੇ ਰਿਹਤੇ ਦਾ ਸੂੰ ਕੀ ਲੈਣਾ ਉਹਦੇ ਵਿੱਚੋਂ ਤੂੰ ਕੀ ਕੱਢਣਾ ਪਾਉਣਾ ਕਈਆਂ ਦੇ ਤਾਂ ਡਿਵੋਰਸ ਹੋ ਗਿਆ ਇਸ ਗੱਲ ਦੇ ਉੱਤੇ ਰਿਸ਼ਤੇਦਾਰ ਪ੍ਰੈਸ਼ਰ ਪਾਉਦੇ ਸਾਡੀ ਤੂੰ ਬਦਨਾਮੀ ਕਰਦਾ ਤੂੰ ਸਾਡੇ ਵਿਚਾਰ ਰੱਖਦਾ ਤੇ ਤੁਸੀਂ ਬਦਨਾਮੀ ਕਰਤੀ ਸਾਡਾ ਤਾਂ ਸੱਤਿਆਨਾਸ਼ ਹੋ ਗਿਆ ਸਾਨੂੰ ਲੋਕਾਂ ਦੇ ਵਿੱਚ ਨਹੀਂ ਛੱਡਿਆ ਤੂੰ ਉਹ ਏਡਾ ਦੇ ਲੋਕ ਪ੍ਰੈਸ਼ਰ ਦਿੰਦੇ ਆ ਉਹ ਕਹਿੰਦੇ ਵੀ ਆਪਣੀ ਰੋਟੀ ਖਾ ਕੇ ਸੌਂ ਜਵੇ ਤੇ ਬਸ ਹੋਰ ਕੋਈ ਗੱਲ ਨਹੀਂ ਬਈ ਉਹ ਬਸ ਸਾਡਾ ਨਾ ਹੋਵੇ ਇਹ ਗੱਲਬਾਤ ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਨਾ ਆਪਾਂ ਕੌਮ ਦੀ ਵੀ ਗੱਲ ਕਰਦੇ ਹੁੰਦੇ ਵੀ 2 4 ਕੌਮਾਂ ਲਈ ਲਈ ਹੁੰਦੇ ਆ ਉਹ ਉਹੋ ਹੀ ਬਹੁਤ ਸਹੀਦੀਆਂ ਪਾਉਂਦੇ ਉਹ ਕਈ ਲੋਕ ਹਨਾ ਕਹਿੰਦੇ ਵੀ ਨਹੀਂ ਜੀ ਇਹ ਆਪਣੇ ਪੰਜਾਬ ਦੀਆਂ ਗੱਲ ਕਰੋ ਉੱਥੇ ਬਖਰੇ ਰਾਜ ਦੀ ਨਾਲੋਂ ਕਾਲਾ ਦੌਰ ਚੋਂ ਕਾਲਾ ਦੌਰ মিডিਆ ਵੀ ਸਾਰੇ ਉਹ ਕਾਲਾ ਦੌਰ ਕਰੀ ਜਾਂਦੇ ਆ ਉਹ ਖਾੜ ਤੋਂ ਸੁਨਹਿਰੀ ਯੁੱਗ ਸਗਾ ਉਹ ਉਸ ਹਿਸਾਬ ਨੂੰ ਹੀ ਉਹ ਉਹ ਕਰਦੇ ਆ ਉਹ ਕਹਿੰਦੇ ਨੇ ਇਦਾਂ ਨਹੀਂ ਹੋ ਹੀ ਨਹੀਂ ਸਕਦਾ ਕੰਮ ਹੋ ਹੀ ਨਹੀਂ ਸਕਦਾ ਪੇਸ਼ਾ ਨੂੰ ਸੋਚ ਆ ਸਾਡੀ ਕਮੇਟੀ ਦੀ ਜਿਹੜਾ ਕਹਿ ਲੋ ਬਈ ਜਿਹਦਾ ਮੈਂ ਤਾਂ ਕਹਿੰਦਾ ਪਾਣੀ ਪੈ ਗਿਆ ਜਿਹਦਾ ਸਿੱਕ ਤੋਂਮ ਦੇ ਉੱਤੇ ਉਹ ਜਿਹਦਾ ਵੀ ਆਪਣੇ ਆਪਣੇ ਨਾਲ ਉਹ ਜੁੜੇ ਹੋ ਆ ਬਸ ਪਾਰਟੀਆਂਆਂ ਹੀ ਆ ਬਣਾਈਆਂ ਆ ਜਿਹੜਾ ਜਿਹਦਾ ਤੁਸੀਂ ਕਿਹਾ ਜੀ ਕੋਈ ਕਿਸੇ ਤੇ ਗੋਲੀ ਗਾਲੀ ਚੱਲਦੀ ਆ ਉਹ ਵਿਚਾਰੇ ਨੂੰ ਇਕੱਲੇ ਨੂੰ ਭੁਗਤਣਾ ਪੈਂਦਾ ਕੋਈ ਨਾਲ ਨਹੀਂ ਉਹਦੇ ਖੜਾ ਹੁੰਦਾ ਕਿਸੇ ਤੁਸੀਂ ਵਿਚਾਰ ਰੱਖਦੇ ਆ ਤੁਸੀਂ ਆਪਣੇ ਆਪ ਤੇ ਮਤਲਬ ਤੁਹਾਨੂੰ ਆਪਣੇ ਆਪ ਤੇ ਪਛਤਾਵਾ ਹੋਣਾ ਚਾਹੀਦਾ ਤੁਸੀਂ ਜੇ ਐਡਾ ਕਰੋਗੇ ਤਾਂ ਠੀਕ ਰਹੂ ਕਿ ਜੇ ਤੁਸੀਂ ਜਿੱਦਾ ਉਹ ਕੋਈ ਜੀਣਾ ਨਹੀਂ ਹੁੰਦਾ ਇਹ ਕਹਿਣਾ ਵੀ ਜੇ ਦੀ ਗੱਲ ਕੀਤੀ ਸੀਗੀ ਭਾਈ ਮੇਵਾ ਸਿੰਘ ਦੀ ਉਹ ਕੌਮ ਨੂੰ ਬਹੁਤ ਜਿੱਦਾ ਵੀ ਦੇ ਗਏ ਆ ਉਹ ਜਿੱਦਾ ਕਹ ਲਓ ਵੀ ਉਹਨੇ ਕੁਰਬਾਨੀ ਦਿੱਤੀ ਆ ਇੱਥੇ ਤੜੇ ਸਾਰੇ ਬੈਠੇ ਹੋ ਆ ਪਰ ਇੱਥੇ ਇਸ ਕਰਕੇ ਬੈਠੇ ਹੋ ਆ ਕਿਉਂਕਿ ਉਹਨੇ ਬਹੁਤ ਤਕੜੀ ਕੁਰਬਾਨੀ ਦਿੱਤੀ ਆਪਾਂ ਜਹਾਦ ਤਾਂ ਕਰਨਾ ਨਹੀਂ ਕਿਸੇ ਨੇ ਆਪਾਂ ਕਮਾ ਕਰਾ ਦੇ ਵਿੱਚ ਗਿੱਜਿਓ ਬੇ ਲਾਇ ਪੈਰ ਹੁੰਨੇ ਆ ਆਪਾਂ ਕਹਿੰਦੇ ਸਾਨੂੰ ਓਨੇ ਮਾਰਿਆ ਸੀਗਾ ਉਹ ਇਸ ਲਈ ਮਾਰਿਆ ਸੀ ਉਹ ਆਪਣੇ ਲਈ ਤਾਂ ਨਹੀਂ ਮਾਰਿਆ ਸੀ ਓਨੇ ਕਮਿਊਨਿਟੀ ਲਈ ਮਾਰਿਆ ਸੀ ਤੇ ਆਪਾਂ ਜਾਦ ਇਦਾਂ ਦੇ ਬੰਦਿਆਂ ਨੂੰ ਘਾਟੀ ਕਰਦੇ ਆ ਸ਼ੀਦਾ ਨੂੰ ਤੇ ਆਪਾਂ 7 ਜਨੈਲ ਸਿੰਘ ਪਿੰਡਰਾ ਵਾਲੇ ਦੇ ਵੀ ਨੁਕਸ ਕੱਢਣ ਲਾ ਪੈਨੇ ਆ ਤਾਂ ਇਸ ਕਰਕੇ ਮੈਂ ਇਹ ਕਹਿਣਾ ਵੀ ਕਮਿਊਨਿਟੀ ਦੇ ਵਿੱਚ ਤੁਸੀਂ ਕਰੋ ਕੰਮ ਪਰ ਥੋੜਾ ਜਿਹਾ ਕਮਿਊਨਿਟੀ ਦੇ ਵੀ ਟਾਈਮ ਕੱਢੋ ਜੀ ਜਿੰਨਾ ਹੋ ਸਕੇ ਕਰਦਾ ਬੰਦਾ ਜੋ ਵੀ ਹੈ ਆਪਣਾ ਜਿੱਦਾਂ ਕੋ ਖੜ ਕੇ ਗੱਲ ਕਰੋ ਜੀ ਸਸਰੀ ਗਾਲ ਧੰਨਵਾਦ ਜੀ ਸਸਾਂਡੇ ਜੀ ਲਾਈਨ ਨੰਬਰ 4 ਹਲੋ ਜੀ ਸਸਰੀ ਕਾਬ ਜੀ ਭਾਈ ਜੀ ਗੱਲਾਂ ਕਰਦੇ ਨੇ ਵੀ ਜਿਵੇਂ ਤੁਸੀਂ ਕਹਿੰਨੇ ਆ ਬਾਦ ਕੈਪਟਨ ਆਏ ਜੀ ਆਪਣੇ ਕੇਂਜਰੀਆ ਵਾਲਾ ਕਰਾਪਸ਼ਨ ਖਤਮ ਕਰ ਦੂ ਤੇ ਇੱਥੇ ਉਹ ਡਿਸਪੈਚਰਾਂ ਨੂੰ ਬੋਤਲਾਂ ਦਿੰਦੇ ਨੇ ਠੀਕ ਆ ਆਪਾਂ ਨੂੰ ਇਹ ਲੋਕ ਪਹਿਚਾਣ ਗਏ ਇਹਨਾਂ ਨੇ ਆਪਣਾ ਭੇਦ ਪਾ ਲਿਆ ਵੀ ਆਪਾਂ ਜਾਂ ਦੋ ਸੌ ਚੋ ਇੱਕ ਬੰਦਾ ਬੋਲਦਾ ਤੇ ਉਹ ਜਿਹੇ ਦੇ ਗੋਲੀਆਂ ਚੱਲ ਜਾਂਦੀਆਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਜਦੋਂ ਮੈਂ ਆਇਆ ਹੁਣ ਉੱਥੇ ਤਿੰਨ ਗੁਰਦੁਆਰਾ ਸਾਹਿਬ ਬੰਦਾ ਸਿੰਘ ਬਹਾਦਰ ਕਿਵੇਂ ਨਿਕਲਿਆ ਗੁਰਦੁਆਰਾ ਸਾਹਿਬ ਚੋਂ ਗਾਹ ਹੁਣ ਕੀ ਆ ਸੁਣੋ ਸਭ ਕੁਝ ਬਤਾਉ ਉਹਦੇ ਬਾਰੇ ਇਹ ਮਾਣੇ ਸਰਫ ਤੇ ਸਰਫ ਚੌਧਰ ਦੇ ਚੌਧਰ ਦੇ ਲਈ ਆਪਣੀ ਕੌਮ ਦੇ ਇਹ ਕੁਸ਼ਕ ਬੰਦੇ ਨਾ ਬਦਨਾਮ ਕਰਦੇ ਆ ਕੁਸ਼ਕ ਇਹ ਬੰਦੇ ਨੂੰ ਤੇ ਬਸ ਜਿਹੜੇ ਇੱਥੇ ਗੱਲਾਂ ਕਰਦੇ ਆਂ ਸੀਆਂ ਕਰਦਾ ਕਿਉਂ ਇੱਥੇ ਇੱਕ ਕੰਟ੍ਰੈਕਟ ਤੁਸੀਂ ਇੱਥੇ ਟਰੱਕਿੰਗ ਅੰਦਰ ਸੀ ਲੜਬੇੜਾ ਕਰਕੇ ਰੱਖਦਾ ਯਾਰ ਮਾੜੀ ਜੀ ਗੱਲ ਦੇ ਪਿੱਛੇ ਜੇ ਕੋਈ ਗੈਸਟ ਜਾਂਦੇ ਆ ਜੀ ਇਹਨਾਂ ਜਮਈ ਬਸ ਕੋਈ ਕਹਿ ਨਹੀਂ ਲੱਗਦਾ ਜੀ ਤਨਵਾ ਸੋਡਾ ਓਕੇ ਬਲੇ ਬਾਲ ਜੀ ਲਾਈਨ ਨੰਬਰ 5 ਹਲੋ ਹਨੂ ਸਸਿਗੋਈ ਸਸਿਕਾਲ ਜੀ ਕੋਈ ਮੈਕਲੋ ਜਿਹੜੀਆਂ ਸੈਵ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਆਜ ਸਾਰਾ ਕੁਝ ਜਿੰਮੇਦਾਰ ਬਾਹਰ ਨਾ ਪੈਂਦਾ ਰਹਾ ਤੇ ਜਿਹੜੇ ਆਪਣੇ ਲੋਕ ਹਲਟੇ ਦੀ ਗੱਲ ਕਰਨ ਜੇ ਤੁਸੀਂ ਫੈਨ ਵੀ ਸੋਸ਼ਲ ਰਿਲੀਜੀਅਸ ਵੈਲੀ ਦੇ ਹਲਟੇ ਗੱਲ ਕਰਨੀ ਫੇਸ ਉਹਨੂੰ ਪੇੜ ਜੀ ਆ ਮੁੰਡੇ ਕੁੜੀ ਦੀ ਲੋੜੀਆ ਕੱਲ ਨੂੰ ਇਕੱਠੇ ਆਪਣਾ ਆਪਣਾ ਹੈ ਮੁੰਡੇ ਵੀ ਵੀ ਕੁੜੀਆਂ ਵੀ ਆ ਵੀ ਤੇ ਫਿਰ ਪਰਸੋਂ ਕਹਿਣਗੇ ਕਿ ਲੋੜੇ ਗੇਮ ਹੈ ਜਦੋਂ ਵੀੰਦੀ ਹੋਣੀ ਚਾਹੀਦੀ ਦੇ ਮੁੰਡੇ ਕੁੜੀਆਂ ਵੀ ਨਹੀਂ ਕਹਿਣੀ ਚਾਹੀਦੀ ਇਹ ਕੋਈ ਡਿਸਕ੍ਰਿਮੀਨੇਸ਼ਨ ਹੈ ਇਹ ਆਪਣੇ ਇਹਨਾਂ ਨੂੰ ਪੈਸੇ ਮਿਲਦੇ ਉਹ ਲੋਕ ਜ਼ਿਆਦਾ ਪਰਸ ਹੈ ਜੋ ਐਕਟਿਵ ਹੈਗੇ ਰਏ ਹੁਣ ਜਿਹੜੀ ਵੀ ਆਪਣੇ ਅੱਗੇ ਸੋਸ਼ਲ ਆਰਗੇਨਾਈਜੇਸ਼ਨ ਸਿੰਘਾ ਉਹਨਾਂ ਨੂੰ ਖਾਦਮ ਕੀਤਾ ਜਾ ਰਿਹਾ ਸਿਸਟਮੈਟਿਕਲੀ ਚਾਹੇ ਖਾਪ ਚੀਜ਼ ਤੁਸੀਂ ਚਾਹੇ ਹੋਰ ਸੀਰ ਹੁਣ ਇਹ ਮੇਰਾ ਕੱਲ ਜਿਵੇਂ ਆਪਾਂ ਹੁਣ ਜਿਹੜਾ ਗੁਰਦਰਪ ਸਿੰਘ ਸਾਹਿਬ ਗਿਆ ਮੈਨੂੰ ਵੀ ਅਰੇਂਜ ਮੈਚ ਦੀ ਗੱਲ ਕਰੀਏ ਹਾਂ ਜੀ ਬੜੇ ਐਕਸਾਈਟਡ ਹੋਏ ਕਿਵੇਂ ਹਾਂ ਵੀ ਕਰਾਂ ਇੱਕ ਤੂੰ ਆਇਂ ਨੈਕਸਟ ਵੀਕ ਉਹ ਤੇ ਗਿਆ ਤੁਸੀਂ ਕੋਈ ਨਹੀਂ ਸੀ ਜਿਹੜੇ ਤੁਸੀਂ ਆਪਾ ਥੋਕੂ ਰੋਲਾ ਪਾਉਨੇ ਫਿਰ ਉੱਥੇ ਜਾ ਕੇ ਪੁਲਿਸ ਕਾਲ ਕਰਨਗੇ ਫਿਰ ਕਹਿਣਗੇ ਫਰਕ ਕੇ ਅੰਦਰ ਕਰੋ ਜੀ ਇਹ ਰੋਲਾ ਕਰੋ ਜੋ ਕਰੋ ਪਰ ਕੀ ਆਪਾਂ ਕਰ ਸਕੀ। ਥੈਂਕ ਯੂ ਜੀ ਹਦੀਪ ਸਿੰਘ ਦੀ ਲਾਈਨ ਨੰਬਰ 2 ਸ ਆਜੀ ਸਿੰਘ ਸੋ ਦਿਨ ਦੀ ਘਟਨਾ ਨਹੀਂ ਹਰ ਰੋਜ਼ ਤੁਹਾਡੇ ਮੱਦੇ ਨਜ਼ਰ ਕੁਛ ਨਾ ਕੁਛ ਆਉਂਦਾ ਅਸੀਂ ਉਸ ਵੱਲ ਪਿੱਠ ਪੋਣੇ ਆ ਅਸੀਂ ਆਏ ਉਹਨਾਂ ਚੋਂ ਆ ਜਿਨ੍ਹਾਂ ਤੇ ਜ਼ੁਲਮ ਤਾਂ ਕੀ ਹੁਣ ਤੱਕ ਕਿਸੇ ਦਾ ਜ਼ੁਲਮ ਸਹਿ ਨਹੀਂ ਸੀ ਸਕਦੇ ਕਦੇ ਆਪਣੇ ਆਪ ਨੂੰ ਸੋਚਿਆ ਤਾਂ ਕਰੋ ਘਰ-ਬਾਰ ਤੁਹਾਡਾ ਬਹੀਰ ਦੇ ਵਿੱਚ ਖਾਲਸੇ ਗੱਬੇ ਟੱਬਰਾਂ ਚ ਲਈ ਫਿਰਦੇ ਆ ਘੋੜੀਆਂ ਦੇ ਕਾਖੀਆਂ ਤੇ ਫਰਾਹ ਦੇ ਨਾਲ ਘੋੜਾ ਖੜਾ ਕੇ ਸੁੱਤੇ ਪਏ 12 ਵਜੇ ਕਲਕਾਰੀਆਂ ਪੈਂਦੀਆਂ ਬੰਨੀਆਂ ਹੋਈਆਂ ਦਿੱਲੀ ਦੀਆਂ ਇੱਜ਼ਤਾਂ ਹਰਦੇੋਂ ਜਾ ਕੇ ਚਨਾਹ ਦੇ ਕੰਢੇ ਛੱਡਣ ਜਾਇਓ ਹੁਣ ਸਾਡਾ ਸਾਰਾ ਕੁਝ ਹੀ ਹੋ ਰਿਹਾ ਤੇ ਅਸੀਂ ਜਦ ਜਮਾ ਹੀ ਸੌਖੇ ਹੋ ਗਏ ਜਦ ਉਹਨਾਂ ਦੇ ਚੋਲੇ ਮਸਤਾਨੇ ਸੀ ਘੋੜਿਆਂ ਦੇ ਛੋਲੇ ਉਹਨਾਂ ਦੇ ਮੂੰਹ 'ਚ ਪੈਂਦੇ ਉਹੀ ਛੋਲੇ ਘੋੜਾ ਖਾਂਦਾ ਉਹੀ ਉਹ ਖਾਂਦੇ ਤੇ ਲੰਬਾ ਹੁੰਦਾ ਪੈਰਾਂ ਦੇ ਵਿਚਾਲੇ ਅਸੀਆਂ ਵੀ ਨੇ ਪਰ ਜਿਹੜਾ ਨਾ ਪੈਂਟ ਦੇ ਔਰ ਸਾਡਾ ਨੌ ਹੈ ਅਸੀਂ ਕੀ ਕੀ ਨਹੀਂ ਕੀਤੇ ਪਰ ਜਿੱਥੇ ਹੁਣ ਅਸੀਂ ਖੜੇ ਆ ਜਦ ਜਮਾ ਹੀ ਸੌਖੇ ਹੋ ਗਏ ਨਾ ਅਸੀਂ ਸਾਰਾ ਕੁਝ ਛੱਡ ਰਹੇ ਨਾਲ ਦੇ ਇਹਨੂੰ ਰੋੜ ਤੋਂ ਤੇ ਆਪਣੀਆਂ ਕਰਵਾ ਕੇ ਕੰਮਗਾਹ ਹੋਵਾਂਗੇ ਇਹਨੂੰ 200 ਫੁੱਟ ਕਹਿ ਕੇ ਬੇਸ਼ਬਾਦ ਚ ਫਿੰਗ ਪਤਾ ਆਪਾਂ ਤੋਂ 100 ਫੁੱਟ ਰਹਿ ਜਾਣੀਆਂ 100 ਇਹਦੇ ਪੱਲੇ ਪੈ ਜੂ ਖਤਮ ਕਹਾੜ ਇਹਨੂੰ ਆਹ ਕਰ ਦੋ ਇਹਨੂੰ ਆਹ ਕਰ ਦੋ ਡਿਸਪੈਚਰਾਂ ਨੂੰ ਸ਼ਰਾਬ ਦੇ ਦੋ ਮੈਨੂੰ ਵਧੀਆ ਰੋੜ ਦੇ ਦੀ ਮੈਂ ਇੱਕ ਉਹ 8000 ਦਿੰਦਾ ਕੰਮ ਦਾ ਮੈਂ ਉਹਦਾ 4 ਦਊਂ ਮੈਂ 3 ਦਊਂ ਇੱਕ ਦੂਜੇ ਦੇ ਉੱਪਰ ਇੱਕ ਦੂਜੇ ਦੇ ਉੱਪਰ ਕਦੇ ਵੀ 브ਦਰਹੁੱਡ ਨਹੀਂ ਸੋਚਿਆ ਔਰ ਕਦੇ ਵੀ ਕਿਸੇ ਨੂੰ ਜਾ ਕੇ ਅਸੀਂ ਉਸ ਕਹਾੜੇ ਦਾ ਬਣਦੇ ਵੱਢ ਲੈ ਅਸੀਂ ਤੇਰੇ ਨਾਲ ਔਰ ਸਾਰਿਆਂ ਨੂੰ ਪਤਾ ਹੁੰਦਾ ਸਾਡੇ ਸਿਰ ਤੇ ਰਾਜ ਹੋ ਰਿਹਾ ਸਾਨੂੰ ਵਰਤ ਕੇ ਬੰਦਿਆਂ ਨੇ ਪੂੰਝ ਕੇ ਸਰਦਣ ਪਰ ਫੇਰ ਵੀ ਅਸੀਂ ਕਹਿੰਦੇ ਨਾ ਨਾ ਨਾ ਨਾ ਮਾਫਰ ਕਲਿਨੈਕਸ ਨਾਲ ਆਪਾਂ ਚੰਗੇ ਤੇ ਮਾੜੇ ਦਾ ਜੇ ਅਸੀਂ ਫਰਜ਼ ਹੈ ਜਿਹੜਾ ਸਾਡਾ ਚੰਗੇ ਤੇ ਮਾੜੇ ਦਾ ਜੇ ਫਿਰ ਫਿਰ ਗੁਰੂ ਨੂੰ ਵੀ ਕਾਹਨੂੰ ਫਿਰ ਹਫ਼ਤੇ ਦੀ ਰਿਚੁਅਲ ਕਰਨ ਜਾਂਦੇ ਹਾਂ ਉੱਥੇ ਮੱਥਾ ਟੇਕਿਆ 1 ਡਾਲਰ ਦਾ 2 ਡਾਲਰ ਗ੍ਰੰਥੀ ਆਪਣੇ ਰਾਗੀ ਨੂੰ ਸਿਰ ਝੁਕਾ ਕੇ ਆ ਜਾਣਾ ਉੱਥੇ ਬੈਠੇ ਇਉਂ ਕਹਿਣਾ ਵੀ ਇਹ ਕਹਿੰਦਾ ਕੀ ਹੈ ਇਹਦਾ ਆਦੇਸ਼ ਕੀ ਹੈ ਕਿ ਤੇ ਝੂਠ ਦੀ ਬਿਨਾਂ ਨੂੰ ਕਿਵੇਂ ਕਹਿੰਦਾ ਇਹ ਕੁਆਲਿਟੀ ਦੀ ਗੱਲ ਕਿਵੇਂ ਕਰਦਾ ਉਹ ਕਹਿੰਦਾ ਜਦ ਸਾਰੇ ਵਸੀਲੇ ਮੁੱਕ ਜਾਣ ਫਿਰ ਤੂੰ ਕੀ ਕਰਨਾ ਕਿੱਥੇ ਵਿਦਵਤਾ ਵਰਤਣੀ ਆ ਕਿੱਥੇ ਜਰਵਾਣੇ ਨੂੰ ਤੂੰ ਕਿੱਥੇ ਬਾਬਰ ਕੇ ਕਿੱਥੇ ਬਾਬੇ ਤੇ ਆ ਦਾ ਡਿਫਰੈਂਸ ਕਿੱਥੇ ਆ ਬਸ ਉਹ ਬੰਨੇ ਬਣਾਏ ਜਾਣਾ ਹੈ ਗੱਡੀ ਐਤਵਾ ਨੂੰ ਖੜਾਉਣੀ ਆ ਪ੍ਰਸ਼ਾਦਾ ਛਕਿਆ ਚਾਹ ਜਲੇਬੀਆਂ ਛਟੀਆਂ ਹਾ ਹਾ ਬਾਹਰ ਖੜੇ ਨੇ 10 ਅੰਦਰ ਖੜੇ ਨੇ ਉੱਥੋਂ ਬਸ ਖਤਮ ਕਹਾਣੀ ਗੁਰਦਵਾਰੇ ਆਇਆ ਬਸ ਉਹਨੇ ਆ ਹੋਣਾ 2 ਘੰਟੇ ਸੌ ਲੇ ਬਸ ਕਹਾਣੀ ਖਤਮ ਰਿਚੁਅਲ ਹੋ ਸਾਰੀ ਗੱਲ ਅਸੀਂ ਬਸ ਆਪਣੇ ਪਾਪ ਬਖਸ਼ਣ ਵੇਦਾ ਤੇਆ ਕਿਰਪਾ ਰੱਖੀ ਬਸ ਇਹਨਾ ਕਹਿ ਉਹਨੇ ਬੰਦ ਜਦੋਂ ਨੂੰ ਪੜ ਕੇ ਉਹ ਜੇ ਅਮਲ ਨਹੀਂ ਕਰਦੇ ਉਹ ਕਿਰਪਾ ਨਹੀਂ ਕਰਦਾ ਇਸ ਤਰ੍ਹਾਂ ਐਸ ਤਰ੍ਹਾਂ ਕਿਰਪਾ ਨਹੀਂ ਹੁੰਦੀ ਦੁੱਧ ਪੀਣਿਆ ਮਜਨੂਆ ਦੇ ਵਿੱਚ ਨਹੀਂ ਬਾਪੂ ਸਾਡਾ ਸਾਨੂੰ ਅਸੀਂ ਸਾਰੀਆਂ ਚੀਜ਼ਾਂ ਬਲ ਪਿੱਠ ਕਰਦੇ ਆਂ ਔਰ ਅਸੀਂ ਸਾਨੂੰ ਪਤਾ ਹੁੰਦਾ ਦਸਕਤ ਕਿਹਦੇ ਤੇ ਕਰ ਰਹੇ ਆਂ ਅਸੀਂ ਵਿਰੋਧੀ ਬਿਲਕੁਲ ਖਾੜੇ ਚ ਖੜਦੇ ਆਂ ਸਾਨੂੰ ਪਤਾ ਹੁੰਦਾ ਸਾਨੂੰ ਟਕੇ ਟਕੇ ਨੂੰ ਇਹ ਬੰਦੇ ਵੇਚ ਰਹੇ ਨੇ ਸਾਨੂੰ ਛੱਜ ਚ ਪਾ ਕੇ ਛੱਟ ਰਹੇ ਨੇ ਫੇਰ ਵੀ ਅਸੀਂ ਕਹਿੰਦੇ ਆ ਨਾ ਨਾ ਅਸੀਂ ਤੁਹਾਡੇ ਨਾਲ ਔਰ ਗਾਂਹ ਕਹਿਣ ਵਾਲੇ ਫੇਰ ਸਾਡੇ ਤੇ ਜੋਕ ਬੰਦਿਆ ਵੀ ਜਿੰਨਾ ਵੱਢੋਂਗੇ ਓਨੇ ਹੀ ਭੱਜ ਕੇ ਤੁਹਾਡੇ ਕੋਲ ਆਉਣਗੇ ਜਿੰਨਾ ਹੱਥ ਜੋੜਨਗੇ ਜੋੜੂਗੇ ਤੁਹਾਡੇ ਨਾਲ ਨੂੰ ਪੈਣ ਫੀਲਡ ਕੋਈ ਦੱਸੇ ਆ ਕੇ ਬਈ ਆਹ ਫੀਲਡ ਦੇ ਵਿੱਚ ਪੜਾ ਮਾਰੂ ਸਾਡੀ ਜੰਗ ਹੈ ਨਹੀਂ ਇੱਕ ਵੀ ਦੱਸੇ ਕੋਈ ਆ ਕੇ ਬਿਜ਼ਨਸ ਚ ਕੰਸਟਰਕਸ਼ਨ ਕਿਤੇ ਰਾਜੀ ਧਾਰਮਿਕ ਸਾਰੇ ਕਿਤੇ ਵੀ ਇੱਕ ਚੀਜ਼ ਦੱਸੋ ਅਸੀਂ ਸਾਰੀਆਂ ਚੀਜ਼ਾਂ ਸਰੈਂਡਰ ਕਰ ਰਹੇ ਕਰ ਰਹੇ ਹਾਂ ਅਸੀਂ ਅਸੀਂ ਤਾਂ ਤੁਰ ਜਾਣਾ ਮੂਹਰ ਜਿਹੜੇ ਜਰਵਾਣੇ ਇੰਨੇ ਜ਼ੋਰ ਫੜ ਜਾਣਗੇ ਜਿੱਥੇ ਉੱਥੇ 7 8 10 ਤਬਰਾਂ ਦੀ ਗੱਲ ਕਰ ਰਹੇ ਆ ਇੱਥੇ ਵੀ ਇਹੀ ਗੱਲ ਹੋਊ ਤੁਸੀਂ ਯਾਦ ਰੱਖਿਓ ਸਰੀ ਚੈਤ ਤੋਂ 20 ਸਾਲਾਂ ਨੂੰ 50 100 ਤਬਰ ਹੋਣਗੇ ਜਿਹੜੇ ਰਾਜ ਕਰਿਆ ਕਰਨਗੇ ਹੁਣ ਵੀ ਕਰ ਰਹੇ ਨੇ ਮਰ ਨਾਲੋਂ ਲਸਟਾ ਜਿ ਬੈਠ ਕੇ ਆਲੇ-ਦਾਲੇ ਝਾਕ ਕੇ ਰਾਜਨੀਤੀ ਚ ਕੌਣ ਆ ਸਮਾਜਿਕ ਪਾਸੇ ਕੌਣ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਲੱਭ ਲੋ ਆਸ ਪਰਿਵਾਰਾਂ ਚੋਂ ਅੱਖੀਆਂ ਨਾ ਹੋਵੇ ਮੈਨੂੰ ਕੱਲੂ ਦੱਸ ਦਿਓ ਆ ਕੇ ਵਪਾਰ ਸੁਨੇਸ਼ 1:53 ਮਿੰਟ ਹੋਏ ਜੀ ਅੱਜ ਕਾਲ ਆਣੀ ਪਤਾ ਸੀ ਇਕੱਲਾ ਹੀ ਬੋਲੂ ਜੈਰੀ ਬਰਾ ਸਰਬਿੰਦਰ ਸਿੰਘ 604 828 7213 ਮੈਂ ਲਸ਼ਕਰ ਨਹੀਂ ਕਰਦਾ ਤੁਹਾਨੂੰ ਕੋਈ ਮੈਂ ਤੁਹਾਡੇ ਵਿੱਚੋਂ ਹੀ ਆ ਮੈਂ ਆਪਣੇ ਆਪ ਨੂੰ ਵੀ ਨਾਲ ਤੁਹਾਡੇ ਵੇਖ ਰਿਹਾ ਪਰ ਗੱਲ ਇਹ ਹੈ ਕਿ ਅਸੀਂ ਪਿੱਠ ਮੋੜ ਰਹੇ ਹਾਂ ਆਪਾਂ ਕਰੜੇ ਹੋਈਏ ਪਲੀਜ਼ ਕਿਰਜੂਗਾ ਸਾਰਾ ਕੁਝ ਜੇ ਇਸ ਤਰ੍ਹਾਂ ਕੀਤਾ ਮੈਂ ਇਹ ਨਹੀਂ ਕਹਦਾ ਕੋਈ ਮਹਿਮ ਬੱਢ ਲੋ ਕੋਈ ਵੱਡ ਟੱਕਰ ਲਓ ਪਰ ਅਕਲ ਜਿਹੜੀ ਥੋੜੀ ਬਹੁਤੀ ਗੁਰਦਾ ਤੇ ਥੋੜੀ ਬਹੁਤੀ ਅਣਖ ਤੇ ਥੋੜੀ ਬਹੁਤੀ ਸੱਚ ਤੇ ਖੜੋ ਬੈਲੈਂਸ ਕੇੰਦਰ ਲਾਈਫ ਬੈਲੈਂਸੇ ਕਰ ਲੋ ਪਤਾ ਗੀਦੀ ਹੋਗੇ ਜਮਾਈ ਲੋਕ ਹੱਸਦੇ ਆ ਤਾਰ ਦੇ ਵਿੱਚ ਸਾਡੀਆਂ ਗੱਲਾਂ ਸੁਣ ਕੇ ਉਹ ਕਹਿੰਦੇ ਵੀ ਫਲਾਣੀ ਜਗ੍ਹਾ ਆ ਰਾਜਬਰਾੜ ਦੀ ਮੌਤ ਤੋਂ ਬਾਅਦ ਉੱਥੇ ਹੁਣ ਘੱਠੀ ਪੱਟੀ ਗੱਲਾਂ ਹੋ ਰਹੀਆਂ ਉਹ ਕਹਿੰਦੇ ਰਲੇ ਸ਼ੇਰੋ ਜਿੱਥੇ ਕੋਈ ਵੀ ਇਸ ਦਾ ਜ਼ਿੰਮੇਵਾਰ ਹੋ ਸਕਦਾ ਮੈਂ ਤਾਂ ਕਿਹਾ ਸੀ ਸ਼ਾਇਦ ਨਾ ਮਰਦਾ 2014 'ਚ ਵਾਅਦਾ ਕਰਕੇ ਕਹਿੰਦਾ ਕੱਲ ਨੂੰ ਆਉਂ ਦੱਸੂ ਮੁੜਕੇ ਨਹੀਂ ਆਇਆ ਇਸ ਗੱਲ ਕਰਕੇ ਮੈਨੂੰ ਦੁੱਖ ਵੀ ਸੀ ਇਹ ਗੱਲ ਕਿਤੇ ਉਹਦਾ ਸ਼ਰਾਬ ਪੀਣ ਤੋਂ ਪਹਿਲਾਂ ਲਿਵਰ ਦੀ ਬਰਬਾਦੀ ਤੋਂ ਪਹਿਲਾਂ ਦੱਸ ਜਾਂਦਾ ਕਿ ਕੋਈ ਹੀਲਾ ਹੁੰਦਾ ਕਿਸੇ ਦੇ ਬਰਾਬਰੀ ਨਹੀਂ ਹੈ ਕਿਸੇ ਦੀ ਕਿਸੇ ਦੇ ਅਗੇਂਸਟ ਨਹੀਂ ਹੈ ਅਸੀਂ ਆਪਣਾ ਕੰਮ ਕਰਦੇ ਹਾਂ ਬਿਨਾਂ ਡਰ ਤੋਂ ਕਰਦੇ ਓਏ ਇਹ ਗੱਲ ਪਰ ਅਸੀਂ ਜਰਵਾਨਿਆਂ ਦੇ ਨਾਲ ਬਾਬਰ ਜੀ ਨਾਲ ਆਹਾ ਬਹੁਤ ਵੱਡੀ ਕਿਰਪਾਲ ਸਿੰਘ ਜੀ ਲਾਈਨ ਨੰਬਰ 2 ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਮੀਰ ਵਿੱਚ ਜੋੜ ਕੇ ਰੱਖਦੇ ਆ ਤੇ ਇਹ ਗੱਲ ਜਿੱਦਾਂ ਵੀ ਉਹ ਬਹਿਰ ਦੇ ਤੋਂ ਕਹਿ ਰਹੇ ਆ ਕਿ ਅਸੀਂ ਆਪਣੇ ਆਪ ਨੂੰ ਨਿਸ਼ਾਨੀਏ ਤੇ ਅਸੀਂ ਕਿੱਥੇ ਖੜੇ ਆ ਸਾਨੂੰ ਕੀ ਕਰਨੀ ਚਾਹੀਦਾ ਜਦੋਂ ਤੁਸੀਂ ਮੇਵਾਤ ਸਿੰਘ ਗੱਲ ਕੀਤੀ ਆ ਇਹਨਾਂ ਦਿਨਾਂ 'ਚ ਉਹਨਾਂ ਦੀ 915 ਵਿੱਚ ਮਲ ਸ਼ਹੀਦੀ ਹੋਈ ਆ ਉਹਨਾਂ ਆਪਣੇ ਬਿਆਨ 'ਤੇ ਜਦੋਂ ਕੋਰਟ 'ਚ ਜਾ ਕੇ ਬੋਲੇ ਆ ਤੇ ਮੈਂ ਕਿਸੇ ਮਲ ਦੇ ਖਿਲਾਫ ਨਹੀਂ ਪਰ ਮੈਂ ਜ਼ੁਰਮ ਦੇ ਖਿਲਾਫ ਹਾਂ ਗਲਤ ਗਲਤ ਦੇ ਮੈਂ ਖਿਲਾਫ ਹੈਗਾ ਸੋ ਉਹ ਗੱਲਾਂ ਸਾਡੀਆਂ ਜਿਹੜੀਆਂ ਸਾਡੇ ਜ਼ਿਹਨ ਚੋਂ ਆ ਲੋਕੋ ਆਪਣੀਆਂ ਆਪਣੇ ਫਰਜ਼ ਨੂੰ ਪਛਾਣੋ ਗੱਲਾਂ ਕੁਛ ਨਹੀਂ ਥੋੜੀਆਂ ਗੱਲਾਂ ਬਹੁਤ ਸੋਹਣੀਆਂ ਮੈਂ ਤਾਂ ਕਹਿੰਦਾ ਅਸੀਂ ਜੇ ਇਹਦੇ ਅੱਧੀਆਂ ਤੇ ਵੀ ਅਮਲ ਕਰ ਜਾਈਏ ਤੇ ਅਸੀਂ ਚੰਗੇ ਸ਼ਹਿਰੀ ਬਣ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਪਰ ਅਪ ਇਨ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਰਮੇਂਦਰ ਥਿੰਦ 600 428 72 13 thinkinsurance.ca ਇੱਥੇ ਤੇ ਐਲਰਟ ਸਮਾਵਾ ਦਿੰਦੇ ਲਾਈਫ ਇੰਸ਼ੋਰੈਂਸ ਇਸ ਤੋਂ ਅੱਗੇ 5 ਰਿਵਰ ਪੰਜ ਆਪ ਦੇ ਨਾਮ ਤੇ ਐਕਸਕੇਵੇਸ਼ਨ ਕੰਪਨੀ ਹਰਪ੍ਰੀਤ ਸਿੰਘ ਕੰਗ 6647270424 ਗੁਰਪ੍ਰੀਤ ਸਿੰਘ ਗਰੇਵਾਲ 7788469942 ਲਾਟ ਪਟਾਉਣੀਆਂ ਕੋਈ ਘਟ ਹੋਣਾ ਰੇਤਾ ਵਰੀ ਚਾਹੀਦੀ ਐਕਸਕੇਵੇਟਰ ਚਾਹੀਦਾ ਟਰੱਕ ਕਚਾਈ ਦੇ ਤਾਂ ਹਰਪ੍ਰੀਤ ਸਿੰਘ ਕੰਗ 6647270424 Green Indian Cuisine 6045033535 ਨੰਬਰ ਹੈ ਜੁਨਟ ਇਕਸਟੋ 1216288th avenue Walmart ਵਾਲੇ ਪਲਾਜ਼ੇ ਦੇ ਵਿੱਚ ਵੀਜ਼ਾ ਮਠਿਆਈਆਂ ਤੇ ਭਾਰਤੀ ਖਾਣੇ ਆਰਡਰ ਕਰ ਸਕਦੇ ਤੇ ਬਹਿ ਕੇ ਖਾ ਸਕਦੇ ਹੋ 6045033535 Green Indian Cuisine ਸਭਾ ਮੇਰੇ ਕੋਲ ਘਟਦਾ ਜਾਂਦਾ ਜੀ ਹੁਣ ਪੰਜਾਬ ਬੈਂਕਟ ਹਾਲ 6549876 ਕਾਰ 11 ਸ਼ਾਮਾ ਗਿਲ ਵਧੀਆ ਪਾਰਟੀ ਕਰਨੀ ਪੰਜਾਬ ਬੈਂਕਟ ਹਾਲ ਦੇ ਵਿੱਚ ਪਾ ਇਚਾਰੇ ਦਾ ਵਧੀਆ ਬੈਂਕ ਪਹਾਲ ਹੈ ਰੈਨੋਵੇਟ ਕੀਤਾ ਹੋਇਆ ਤੇ ਵਧੀਆ ਤੇ ਵਧੀਆ ਪਾਰਟੀ ਸ਼ਾਮਾਗਲ 645987611 ਜਸਵਿੰਦਰ ਸਿੰਘ ਦੀ ਲਾਈਨ ਨੰਬਰ 3 ਫੇਰ ਦਿਓ ਚਲੋ ਮੈਂ ਕਰ ਦਣਾ ਧੰਨਵਾਦ ਬਹੁਤ ਬਹੁਤ ਜਿਹੜੇ ਤੁਸੀਂ ਲੈਂਦਾ ਹੈ ਮਸਲਾ ਮੈਂ ਬੇਨਤੀ ਕਰਦਾ ਆਪਣੇ ਸਾਰੇ ਪੀੜਾਂ ਭੈਣਾਂ ਮੇਰੇ ਤੁਹਾਡੇ ਕੋਲ ਜਿਹੜੀ VOTING ਪਾਵਰ ਆ ਜਿਹੜੇ ਤੁਹਾਨੂੰ ਸਭ ਹੱਥ ਮਿਲੇ ਹੋਇਆ ਇਸ ਕੰਟਰੀ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਆ ਉਹਨਾਂ ਦੀ ਬਰਤਾਂ ਕਰੋ ਔਰ ਆਪਾਂ ਨੂੰ ਜਿਹੜੀ ਵੀ ਪ੍ਰੋਬਲਮ ਆਉਂਦੀ ਆ ਭਰਾਓ ਉਹਨਾਂ ਲੋਕਾਂ ਵੱਲ ਨਾਲ ਦੇਖੀ ਜਾਓ ਜਿਨ੍ਹਾਂ ਨੇ ਮਲਟੀ ਮਿਲੀਅਨ ਬਣਾ ਲਏ ਤੇ ਉਹਨਾਂ ਨੇ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੀ ਚਮਚਾਗਰੀ ਕਰਕੇ ਸਾਨੂੰ ਵੇਚ ਦੇ ਸਾਥੀ ਰੇਡੀਓ ਵੱਲੋਂ ਕੋਈ ਗੱਲਬਾਤ ਸਵੇਰੇ ਕੀਤੀ ਗਈ ਹੈ ਧੰਨਵਾਦ ਉਹਨਾਂ ਦਾ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਮੇਰੇ ਯਾਦ ਆ ਅਗਸਤ 2014 ਦੇ ਵਿੱਚ ਕਿਸੇ ਪ੍ਰੋਗਰਾਮ ਸੰਬੰਧੀ ਰਾਜ ਬ੍ਰਾਡਸ਼ੀਅਰ ਪੰਜਾਬ ਤੇ ਆਏ ਸੀ ਮੈਨੂੰ ਉਹਨਾਂ ਨੇ ਦੱਸੀ ਕਿ ਮੇਰੀ ਜ਼ਿੰਦਗੀ ਬਾਈ ਜੀ ਹੱਥੋਂ ਨਿਕਲ ਜਾਣੀ ਮੈਂ ਬਹੁਤ ਦੁਖੀ ਹਾਂ ਮੇਰਾ ਟੱਬਰ ਪਰਿਵਾਰ ਖਰਾਬ ਹੋ ਜਾਣਾ ਮੈਂ ਕਿਹਾ ਆ ਜਾ ਦੱਸਦਾ ਚਵਾਰੇ ਚੜਚੇ ਬੋਲ ਲਾ ਰੌਲਾ ਪਾ ਲੈ ਕੋਈ ਹੀਲਾ ਬਣ ਜਾਏ ਲੋਕ ਅਵੇਅਰ ਹੋ ਜਾਣ ਤੇਰਾ ਸਰੀ ਜ਼ਿੰਦਗੀ ਵੱਜਵੇ ਹੁਣ ਗੱਲ ਹੱਥੋਂ ਨਿਕਲ ਇਸਦੇ ਅਗੇਂਸਟ ਨਹੀਂ ਪੈਸੇ ਸਭ ਨੂੰ ਪਿਆਰੇ ਨੇ ਪਰ ਤੱਕਾ ਨਾ ਕਰੋ ਕਿਸਦਾ ਹੱਕ ਨਾ ਮਾਰੋ ਔਰ ਵੀ ਕੋਈ ਨਹੀਂ ਸੱਚ ਦੀ ਬਿਨਾ ਤੇ ਮੁੰਡੇ ਜੇ ਕੋਈ ਵੀ ਹਲੇ ਕੋਈ ਵੀ ਥਿਊਰੀ ਨਹੀਂ ਪਰ ਹੋਰ ਉਹਦਾ ਰੌਲਾ ਕੋਈ ਨਹੀਂ ਗੱਲ ਜੇ ਉਹ ਸੱਚ ਤੇ ਖੜ ਗਿਆ ਤਾਂ ਹੁਣ ਜੇ ਅਭੀ ਨਵੀ ਹੋ ਜਾਂਦੀ ਅਸੀਂ ਜਾ ਕੇ ਉੱਥੇ ਰੋ ਕੇ ਹਫ਼ਤਾ 10 ਦਿਨ ਬਾਅਦ ਤੰਬਰ ਛੱਡ ਦੇਣਾ ਸੀ ਇੱਕ ਤੰਬਰ ਪੰਜਾਬ ਦੇ ਵਿੱਚ ਬਹੁਤ ਨੇ ਜਿਨ੍ਹਾਂ ਦੀਆਂ ਕੋਠੇ ਜਿੰਨੇ ਜਿੰਨੀਆਂ ਦੁਨੀਆਂ ਫਿਰਦੀਆਂ ਤੇ ਖੱਬਲ ਘਰ ਚੁਗਿਆ ਹੋਇਆ ਸਾਡੀ ਕੌਮ ਲਈ ਕੱਪੜਾ ਬੰਨ੍ਹ ਕੇ ਘਰੋਂ ਤੁਰੇ ਅਸੀਂ ਕਿਸੇ ਵੀ ਬਾਤ ਨਾ ਪੁੱਛੀ ਅਖੀਰ ਚ ਕਦੀ ਮਾਨ ਕਦੀ ਗੱਲ ਤੇ ਕੱਲ ਨੂੰ 11 ਵਜੇ ਫੇਰ ਮੁਰਦਾ ਰੱਬ ਰੱਖਾ